ਨਾ ਰੌਹ ਹੈ ਨਾ ਰੰਗ ਹੈ ਨਾ ਸਿੰਘ ਹੈ ਨਾ ਸਿਆਰ ਹੈ ਨਾ ਰੌਹ ਹੈ ਨਾ ਰੰਗ ਹੈ ਨਾ ਸਿੰਘ ਹੈ ਨਾ ਸਿਆਰ ਹੈ ਨਾ ਰੌਹ ਹੈ ਨਾ ਰੰਗ ਹੈ ਉਹ ਸਿੰਘ ਛਲ ਕਤ ਜਾਈਏ ਜੇ ਜੰਮੂ ਗਰਾਸਾ ਕਿਹਾ ਹੋਇਆ ਹੈਗਾ ਦਰਸਨ ਅਵਤਾਰ ਵੀ ਕਿਹਾ ਹੋਇਆ ਹੈ ਜਿਹੜਾ ਦੇ हों ਆ ਨਾ ਸ਼ੇਰ ਦੀ ਉਹ ਵੀ ਸ਼ੇਰ ਦਾ ਗੁੱਲ ਦੋਥੇ ਹੈਗਾ ਸ਼ੇਰ ਦੇ ਗੁੱਲ ਦੀ ਗੱਲ ਹੈ ਸਿਆਰ ਗੱਦੜ ਦੇ ਅਗੁੱੜ ਦੀ ਗੱਲ ਹੈ ਆ ਕਿ ਸ਼ੇਰ ਦੀ ਸ਼ਕਲ ਦੀ ਗੱਲ ਹੈ ਹੁਣ ਜਿਆਦਾ ਅਸੀਂ ਕਹਿੰਦੇ ਸਿੰਘਾ ਅਸੀਂ ਸ਼ਕਲ ਨੂੰ ਲਾ ਲੈਨੇ ਆ ਸ਼ਕਲ ਤਾਂ ਮਿੱਟੀ ਦੀ ਹੈ ਉਹ ਇਹ ਕਹਿ ਰਹੇ ਜੋ ਸ਼ੇਰ ਦਾ ਗੁਣ ਹੈ ਉਹ ਤਾਂ ਤੂੰ ਹੈ ਸਰੀਰਕ ਤੌਰ ਤੇ ਸ਼ੇਰ ਦੀ ਨਾ ਸਿੰਘ ਨਾ ਸਿੰਘ ਦਾ ਮਤਲਬ ਹੈ ਸਰੀਰਕ ਤੌਰ ਤੇ ਸ਼ੇਰਰੀਆਂ ਦਾ ਤੂੰ ਸ਼ੇਰ ਦੀ ਸਵਾਰੀ ਹੈ ਠੀਕ ਹੈ ਤਤ ਗਿਆਨ ਨੂੰ ਪ੍ਰਭ ਗਿਆਨ ਨੂੰ ਇਹ ਬ੍ਰह्म ਨੂੰ ਸ਼ੇਰ ਦੀ ਉਪਮਾ ਦਿੱਤੀ ਗਈ ਹੈ ਦੇਰ ਦਾ ਮਤਲਬ ਹੈ ਇੱਥੇ ਨਗਾ ਸੱਚੀ ਮੁੱਚੀ ਦਾ ਸ਼ੇਰ ਉਹ ਸੱਚੀ ਮੁੱਚੀ ਦਾ ਸ਼ੇਰ ਬਣਾ ਲਿਆ ਨਾ ਉਹਨਾਂ ਨੇ ਕੁੱਤੇ ਪਿਠਾਣਤੀ ਜਨਾਨੀ ਦੇਵੀ ਉਹ ਗੱਲ ਕੱਟੀਆ ਨਹੀਂ ਆ ਸ਼ੇਰ ਜਿਹੜੇ ਰੌਲਾ ਪਾਉਂਦੇ ਨੇ ਨਾ ਚੰਡੀ ਆ ਉਹਨਾਂ ਦੇ ਉਹ ਦਾ ਤਾਂ ਸਮੋ ਕਹਿੰਦੇ ਨੇ ਵੀ ਤੂੰ ਸ਼ੇਰ ਹੈ ਨਹੀਂ ਤੇ ਸ਼ੇਰ ਹੈ ਨਹੀਂ ਗਿਆਨ ਦੀ ਸ਼ਕਤੀ ਤੇ ਕਮ ਕਰਦੀ ਹੈ ਬੁੱਧੀ ਬੁੱਧੀ ਚੜਦੀ ਹੈ ਦਿਮਾਗ ਦੇ ਵਿੱਚ ਕੰਮ ਕਰਦੀ ਹੈ ਬੋਲਦੀ ਹੈ ਜੇ ਚਰਚਾ ਕਰਦੇ ਆ ਉੱਤੇ ਚੜਦੀਆਂ ਨਾ ਗਿਆਨ ਥੱਲੇ ਗਿਆਨ ਦੇ ਲ ਦੀ ਸ਼ਕਤੀ ਨਾਲ ਬੁੱਧੀ ਕੰਮ ਕਰਦੀ ਹੈ ਇਹ ਕਹ ਅਸੀਂ ਬੋਲਦੇ ਹਾਂ ਗਾਲ ਗੁਪਤਾ ਉਹ ਤਾਂ ਪ੍ਰਗਟ ਹੈ ਗਿਆਨ ਬੁੱਧ ਦੇ ਰੂਪ ਚ ਪ੍ਰਗਟ ਹੁੰਦਾ ਬੁੱਧ ਦੇ ਰੂਪ ਚ ਪ੍ਰਗਟ ਹੋ ਉਹ ਪਕਾਣਾ ਦਾ ਬੇਅਕਲ ਹੈ ਬੇਅਕਲ ਗਿਆਨੀ ਨਹੀਂ ਹੈ ਅਕਲ ਵਾਲਾ ਗਿਆਨਵਾਨ ਹੈ ਅਕਲ ਤੋਂ ਹੀ ਉਹਦਾ ਗਿਆਨ ਦਾ ਨਜ਼ਰ ਲੱਗਦਾ ਅਕਲ আর ਗਿਆਨ ਦੋਰੀ ਹਲ ਪਰਗਟੇ ਜਾਂਦਾ ਗਿਆਨ ਉਹਦਾ ਤਾਂ ਅਕਲ ਦੇ ਰੂਪ ਚ ਹੁੰਦਾ ਹੈ ਕਹ ਲੋ ਅਕਲ ਦੇ ਰੂਪ ਚ ਉਹ ਪ੍ਰਦਰਸ਼ਨ ਜੋ ਗਿਆਨ ਕਰਦਾ ਨਾ ਪ੍ਰਦਰਸ਼ਨ ਅਕਲ ਦੇ ਰੂਪ ਚ ਕਰਦਾ ਜਿਵੇਂ ਆਦਮੀ ਦੀ ਇਸ ਰੇੜਕ ਸ਼ਕਤੀ ਕੱਦ ਖਪਗਾਦੀ ਹੈ ਜਿਆਦਾ ਕੋਈ ਕੱਪ ਕਰਕੇ ਦਿਖਾਉਂਦਾ ਵਜ਼ਨ ਚੱਕ ਕੇ ਦਿਖਾਉਂਦਾ ਸਮਝ ਜੀ ਜਾਂ ਆਪਣੀ ਸ਼ਕਤੀ ਦਾ ਇਸਤੇਮਾਲ ਕਰਕੇ ਕੁਝ ਵੀ ਕਰਦਾ ਚਾਹੇ ਹੋ ਤਾਂ ਹੀ ਪ੍ਰਗਟ ਹੋਊਗੀ ਤੂੰ ਪ੍ਰਗਟ ਬੁੱਧ ਕਾਹਦੇ ਹੁੰਦੇ ਬੁੱਧ ਦੇ ਰੂਪ ਚ ਗਿਆਨ ਪ੍ਰਗਟ ਹੁੰਦਾ ਸ਼ੇਰ ਕੀ ਹੈ ਗਿਆਨ ਨੂੰ ਵੇਖ ਨੂੰ ਵਵੇਕ ਬੁੱਧੀ ਨੂੰ ਕਿਹਾ ਚੱਡੀ ਗੱਲ ਕੋਈ ਹੈ ਉਹ ਤਾਂ ਪ੍ਰਗਟ ਹੁੰਦਾ ਜਬ ਤੇਲ ਹੈ ਤੇਲ ਦੇ ਜੋਤ ਪ੍ਰਗਟ ਹੁੰਦੀ ਹੈ ਜੋਤ ਪ੍ਰਗਟ ਹੁੰਦੀ ਹੈ ਨਾ ਤੇਲ ਦਾ ਹੀ ਰੂਪ ਹੈ ਨਾ ਉਹ ਜੋਤ ਲਾਈਟ ਵੀ ਹੈ ਉਹ ਚ ਹੀਟ ਵੀ ਹੈ ਦੋ ਚੀਜ਼ਾਂ ਜਗ ਜਲਦੀ ਹੈ ਜੋ ਜਲਦੀ ਹੈ ਤਾਂ ਦੋ ਚੀਜ਼ਾਂ ਦੀ ਹੀਟ ਵੀ ਹੈ ਲਾਈਟ ਵੀ ਹੈ ਇਸੇ ਤਰੀਕੇ ਨਾਲ ਹੋਇਆ ਉੱਥੇ ਤਾਂ ਬੱਤੀ ਹੈ ਤੇਲ ਦੀ ਬੱਤੀ ਕਹਿੰਦੇ ਨੇ ਨਾ ਪਾ ਵੱਟੀ ਵੀ ਕਹਿੰਦੇ ਨੇ ਕਿ ਜਗ੍ਹਾ ਪਰਸਾਣ ਵਾਲੇ ਵੱਟੀ ਕਹਿੰਦੇ ਵੱਟ ਕੇ ਪਾਈ ਹੁੰਦੀ ਹੈ ਨਾ ਅਸੀਂ ਬੱਤੀ ਕਹਿੰਦੇ ਤਾਂ ਭਗਤਾਂ ਨੇ ਬਾਤੀ ਲਿਖਿਆ ਬਾਤੀ ਬਾਤੀ ਦਾ ਮਤਲਬ ਬਾਤ ਬੋਲ ਆਵਾਜ਼ ਆਵਾਜ਼ ਦੇ ਥਰੂ ਹੀ ਬੱਤੀ ਦਾ ਪ੍ਰਗਟ ਹੁੰਦੀ ਹੈ ਗੱਲਬਾਤ ਰੱਖੀ ਕਾਇ ਕੋਈ ਗਹਿਰਬ ਕਹਿਵੇ ਮਾਹੇ ਬਵੇਕ ਚਲ ਬੁੱਲੂ ਕਾ ਬਵੇਕ ਦਾ ਜਦੇ ਪਤਾ ਲਗੂ ਸਿਆਣੇ ਦਾ ਗਿਆਨਵਾਨ ਦਰ ਅਗਿਆਲੀ ਦਾ ਪਤਾ ਲਗੂ ਉਹ ਅੱਜ ਤੋਂ ਬੋਲੇ ਤੂੰ ਬੋਲੇ ਤਾਂ ਮੈਨੂੰ ਨਹੀਂ ਪਤਾ ਲਗੂ ਬੋਲੇ ਤਾਂ ਬੁੱਲੂ ਹੀ ਪਤਾ ਲਗ ਲਿਖੇ ਹੋਇਆ ਬੋਲੂ ਉਹ ਜਿਹੜੇ ਗ੍ਰੰਥ ਲਿਖੇ ਪਏ ਨੇ ਆ ਬੋਲੀਆਂ ਜਾਂ ਗੱਲਾਂ ਨੇ ਉਹਨਾਂ ਦਾ ਜੇ ਲਾਇਏ ਨੇ ਉਹਨਾਂ ਦਾ ਗਿਆਨ ਕਿੰਨਾ ਸੀ ਰਿਸ਼ੀਆ ਬੁਰੀਆ ਦਾ ਗਿਆਨ ਕਿੰਨਾ ਸੀ ਉਹਨਾਂ ਦੇ ਗਰੰਤਾਂ ਦੇ ਪਤਾ ਲੱਗੂਗਾ ਗੁਰਬਾਣੀ ਦਾ ਕਿੰਨਾ ਗਿਆਨ ਸੀ ਸਾਡੇ ਕੋ ਲਿਖਿਆ ਪਿਆ ਉਦੋਂ ਪਤਾ ਲੱਗੂਗਾ ਕੱਚੀ ਪੱਕੀ ਬੰਲੀ ਦਾ ਐਵੇਂ ਪਤਾ ਲੱਗਦਾ ਭਗਤਾਂ ਦਾ ਕਦੇ ਪਤਾ ਲੱਗਿਆ ਗੁਰਬਾਣੀ ਜੋ ਲਿਖੀ ਪਈ ਹੈ ਅਸਲ 'ਚ ਨਾਨਕ ਦੀ ਬਾਣੀ ਹੀ ਨਾਨਕਾ ਸਾਡੇ ਵਾਸਤੇ ਕਰਮਕਾਂ ਵਾਸਤੇ ਕਹੀ ਹੋਈ ਗੱਲ ਨਹੀਂ ਉਹਦੀ ਬੁੱਧੀ ਹੁੰਦੀ ਹੈ ਉਹਦਾ ਗਿਆਨ ਹੁੰਦਾ ਉਹ ਗਿਆਨ ਹੀ ਉਹ ਆਪ ਹੈ ਕਾਇ ਕਹਿਆ ਦਸਾਂ ਪਾਸ਼ਾਹੀਆਂ ਦਾ ਜੋਤ ਸਰੂਪ ਜੋਤ ਕੀ ਉਹਦੀ ਖੂਰ ਉਹ ਗਾਨ ਹਨ ਉਹ ਕਰਨ ਦੇ ਵਿੱਚ ਗਾਨ ਨਾਲੇ ਸਾਡਾ ਸੁਖ ਹੁੰਦਾ ਗੁਰ ਕੀ ਉਹਦਾ ਗੁਰ ਗਿਆਨ ਹੁੰਦਾ ਗੁਰ ਗਿਆਨ ਹੁੰਦਾ ਅਸੀਂ ਸਾਡੀ ਨਿਗਾਹ ਸ਼ਰੀਰ ਤੇ ਚਲੀ ਜਾਂਦੀ ਇੱਥੇ ਗਲਤੀ ਹੁੰਦੀ ਹੈ ਸ਼ਰੀਰ ਦੇ ਥਰੂ ਤਾਂ ਗਿਆਨ ਪ੍ਰਗਟ ਹੁੰਦਾ ਜੋ ਕੋਈ ਕਲਾਕਾਰ ਹੈ ਕਲਾਕਾਰ ਨਹੀਂ ਚਲੋ ਰਗੀ ਹੈ ਰਗੀ ਆਪਣਾ ਬਾਜਾ ਤਾਂ ਲਿਆਇਆ ਜੀ ਆਪਣਾ ਤਬਲਾ ਤਾਂ ਲਿਆਇਆ ਜੀ ਕੋਈ ਭੰਗ ਕੇ ਤਪਲਾ ਉਹ ਵਜਾ ਕੇ ਆਪਣਾ ਵੀ ਉਹ ਕੰਪੀਟੀਸ਼ਨ ਦੀ ਫਰਸਟ ਪ੍ਰਾਈਜ਼ ਲੈ ਲੈਂਦਾ ਐ ਉੱਥੇ ਬਾਬਾ ਖਟਾ ਲੈਂਦਾ ਵੀ ਹਾਂ ਵੀ ਸਾਰਿਆਂ ਨੂੰ ਵਧੀਆ ਰਗੀ ਤੋ ਬਾਜਾ ਨਹੀਂ ਕਰਾਵਾਤਾ ਨਹੀਂ ਹੈ ਤਬਲੇ ਦੀ ਕਰਾਵਾਤਾ ਰਹੀ ਹੈ ਗੱਲ ਉਹਦੇ ਵਿੱਚ ਹੀ ਹੈ ਤਬਲਾ ਕੋਈ ਹੋਵੇ ਸਰੀਰ ਕੋਈ ਹੋਵੇ ਸਰੀਰ ਦਾ ਕੀ ਫਰਕ ਹੈ ਸਰੀਰ ਅਵਦਾਸ ਦਾ ਸੀ ਅਗਰ ਨਾਨਕ ਦਾ ਸੀ ਅਕਬੀਰ ਦਾ ਸੀ ਉਹਨਾਂ ਦਾ ਕੀ ਫਰਕ ਗੱਲ ਦਾ ਕੋਈ ਹੈ ਗੱਲ ਦਾ ਸਟੈਂਡਰਡ ਇੱਕ ਹੈ ਚਾਹ ਪੱਟ ਵੀ ਸੀ ਸੱਤਾ ਬਲਵੰਡ ਵੀ ਸੀ ਤਾਰਕ ਲੈ ਇੱਕ ਗੱਲ ਜਾਂ ਗੱਲ ਇੱਕ ਰਹਿ ਜਾਂਦੀ ਹੈ ਨਾ ਦੋ ਗੱਲਾਂ ਨਹੀਂ ਰਹਿੰਦੀਆਂ ਅੰਦਰ ਉੱਧਰ ਸਾਡੇ ਦੋ ਜਿੱਤੀ ਹੈ ਨਾ ਦੋ ਗੱਲਾਂ ਨੇ ਜਦ ਇਹ ਕਗਾ ਲੈ ਜਾਂਦੀ ਐ ਚੇਤਰ ਮੰਦੀ ਇਹ ਕੋ ਸੋਚ ਰਹਿ ਜਾਂਦੀ ਐ ਉਹ ਲੇਖੇ ਚ ਆ ਉਹ ਦਰਗਾਹ ਦੇ ਵਿੱਚ ਪਰਵਾਨ ਨਾਨਕ ਲੇਖੇ ਇੱਕ ਰਖ ਲੰਨ ਹੁਣ ਚੇਤਰ ਮੰਦੀਆ ਦੌਰਿਆਂ ਨੇ ਦੋ ਗੱਲਰ ਕਈ ਵਾਰਕ ਇਕੱਠੇ ਵੀ ਹੋ ਜਾਂਦੇ ਨੇ ਕਈ ਵਾਰ ਰਹੀ ਵੀ ਹੁੰਦੇ ਕਈ ਵਾਰ ਜਤਮਨ ਕੈਸੇ ਗਲਤੇ ਖਮਤ ਵੀ ਹੋ ਜਾਂਦੇ ਨੇ ਕਈ ਵਾਰ ਰਹੀ ਵੀ ਹੁੰਦੇ ਜਦ ਇੱਕ ਮਤ ਹੀ ਰਹਿਣ ਫਿਰ ਕਗਲੋ ਨਾ ਫਿਰ ਜਿਆਦਾ ਕਮਤ ਹੁੰਦੇ ਨੇ ਫਿਰ ਕੀ ਹੁੰਦਾ ਫਿਰ ਇਹ ਹਰ ਨਾਲ ਜੁੜੇ ਹੋਏ ਹੁੰਦੇ ਨਾਨਕ ਇਹ ਵਿਧੀ ਹਰਪਜੋ ਹਰਪਜੋ ਇਹ ਵਿਧੀ ਹੈ ਹਰ ਨਾਲ ਜੁੜਦੀ ਇੱਕ ਮਨ ਹੋਇ ਇੱਕ ਚਿੱਤ ਚਿੱਤ ਇੱਕ ਮਨ ਇੱਕ ਚਿੱਤ ਹੋਣਾ ਹੀ ਵਿਧੀ ਹੈ ਹਰ ਦੇ ਨਾਲ ਜੁੜਦੀ ਭਜਨ ਦਾ ਮਤਲਬ ਜੁੜਨਾ ਹੁੰਦਾ ਹਾਏ ਨਾ ਸਿੰਘ ਹੈ ਨਾ ਸਿਆਰ ਹੈ ਨਾ ਰੌ ਹੈ ਨਾ ਰੰਕ ਹੈ ਨਾ ਤੂ ਰਾਜਾ ਹੈ ਨਾ ਰੰਗ ਕੰਗਾਲ ਹੈ ਤੇ ਸ਼ੇਰ ਹੈ ਰਾਜਾ ਦਾ ਮਤਲਬ ਕੀ ਗਿਆਨਵਾਨ ਕੁਸਬਸਾਰੀ ਰਾਜੰਤਰ ਰਾਜਾ ਸੀ ਬੁੱਧ ਦੇ ਜੀ ਹੋ ਨਾ ਤਾ ਤੂੰ ਭਗਤਾਂ ਭਗਤੇ ਰਾਜਾ ਉਧਰ ਨਾ ਤੋ ਗਿਆਨੀ ਹੋ ਜੇ ਅਜੋ ਜਿਹਨੂੰ ਗਿਆਨ ਹੈ ਜੀ ਰੰਗ ਰੰਹ ਹਸੀਏ ਕੋਏ ਅਗਿਆਨੀ ਦੇ ਹਸਣ ਨਹੀਂ ਚਾਹੀਦਾ ਗਾਨ ਉਹਨਾ ਹੈ ਤਾਂ ਰਾਜ ਹੈ ਗਨ ਹੀਨਾ ਤਾਂ ਰੰਕ ਹੈ ਗਨ ਹੀਨਾ ਸਭ ਕੋਈ ਵਰੀ ਕਿਸੇ ਦਾ ਖਜ਼ਾਨਾ ਤਾਂ ਉਹਨੂੰ ਮਿਲਿਆ ਨਹੀਂ ਘਰ 'ਚ ਦੱਬਿਆ ਹੋਇਆ ਜਿਹੜਾ ਕਿਸੇ ਨੂੰ ਮਿਲ ਗਿਆ ਖਜ਼ਾਨਾ ਸਾਰਿਆਂ ਕੋਲੇ ਹੈ ਖਜ਼ਾਨਾ ਸਾਰਿਆਂ ਦੇ ਕੋਲੇ ਹੈ ਕਿਸੇ ਦਾ ਖਜ਼ਾਨਾ ਤੈਨੂੰ ਲੱਭ ਗਿਆ ਘਰ 'ਚ ਦੱਬਿਆ ਹੋਇਆ ਸੀ ਜਿਹੜਾ ਉਹਨੇ ਤੇ ਅਵਰਤ ਪ੍ਰਭ ਕਾ ਨਾਮ ਦੇ ਵਿੱਚ ਆ ਉਹਦਾ ਖਿਆਲ ਉਹਨੇ ਨਹੀਂ ਲੱਭਿਆ ਉਹ ਤੁਰਿਆ ਫਿਰਦਾ ਸੰਤਾ ਕੋਲ ਇੱਕ ਰੂਲਾ ਲੱਭ ਗਿਆ ਆਪਣਾ ਸਭ ਕੁਝ ਘਰ ਵਿੱਚ ਬਾਹਰ ਨਹੀਂ ਉਹ ਬਾਹਰ ਕੇ ਢੋਲਦਾ ਤੇਰੇ ਅੰਦਰ ਸਭ ਕੁਝ ਹੈ ਬਾਹਰ ਢੋਲਣ ਨਾਲ ਪਰਪਲਾਈ ਉਹਨੇ ਆਪਣੇ ਅੰਦਰ ਲੱਭ ਲਿਆ ਖਜਾਨਾ ਇੱਕ ਦਾ ਸ਼ਬਦ ਗੁਰੂ ਨਾਲ ਅੰਦਰ ਜੁੜ ਗਿਆ ਇੱਕ ਜੁੜਿਆ ਦੀ ਜਿਹੜਾ ਝੁੜ ਗਿਆ ਉਹ ਖਜ਼ਾਨੇ ਤੱਕ ਪਹੁੰਚ ਗਿਆ ਲੱਭ ਗਿਆ ਜਿਹੜਾ ਨਹੀਂ ਯੋੜੇ ਉਹ ਵਰ ਛੋੜਦਾ ਫਿਰਦਾ ਔਰੰਗ ਹੈ ਕਹਦੇ ਤੂੰ ਰੋਵ ਨਹੀਂ ਰੰਗ ਕੋ ਬਲੀ ਰਾਜਾ ਵੀ ਨਹੀਂ ਹੈ ਰੰਗ ਕੋ ਬਲੀ ਸਾਰੇ ਹੀ ਰਾਜੇ बस ਇਹ ਕਿਸੇ ਨਾਲ ਗਿਆਨ ਗਵਾਇਆ ਹੋਇਆ ਕਿਸੇ ਦੇ ਗਿਆਨ ਆਪਣੇ ਹੱਕ ਕਬਜੇ ਗਿਆਨ ਗਵਾਇਆ ਕਿਉਂ ਗਵਾਇਆ ਦੂਜੇ ਪਾਇਆ ਉਹ ਵਾਇਆ ਟੋੜਦਾ ਫਿਰਦਾ ਤਾਂ ਕੋਇਆ ਹੋਇਆ ਉਧਰਲੇ ਪਾਸੇ ਗਿਆ ਨਹੀਂ ਆਪਣਾ ਖਜ਼ਾਨਾ ਨਹੀਂ ਪਟਿਆ ਉਹ ਕੰਮ ਨਹੀਂ ਲੱਗਿਆ ਜਿਹੜਾ ਖਜ਼ਾਨਾ ਅੰਦਰ ਪਿਆ ਹੋਇਆ ਬਾਹਰ ਮਾਇਆ ਪਿੱਛੇ ਤੋੜਿਆ ਫਿਰਦਾ ਗਿਆਨ ਗਵਾਇਆ ਦੂਜੇ ਪਾਇਆ ਗਰਭ ਗਲੇ ਵਿਖ ਖਾਇਆ ਬਿਖ ਮਾਇਆ ਦੇ ਤੁਹਾਨੂੰ ਤੁਹਾਨੂੰ ਬੋਲਦਾ ਦਾਵਤਾਂ ਵਾਲੀਆਂ ਪੜਦਾ ਨਹੀਂ ਪਟੀਆਂ ਅੰਦਰ ਉਹ ਪਰਪਦੇ ਪਰਦਿਆਂ ਦੇ ਥੱਲੇ ਟਕਿਆ ਹੋਇਆ ਆਹ ਥੱਲੇ ਪਰਪਦੇ ਪਰਦੇ ਨੇ ਉੱਤੇ ਉਹ ਟਕਿਆ ਹੋਇਆ ਪਰਪਦੇ ਪਰਦੇ ਖੁੱਲ੍ਹੇ ਸੀ ਪਰਪਦੇ ਗੁਰਬਾਣੀ ਦੇ ਖੁੱਲ੍ਹੇ ਸੀ ਮਰਕਤੋ ਗੋਲਣ ਜੀ ਸਤਗੁਰੂ ਕੇ ਪਾਣੀ ਨਾ ਖੋਲਣ ਜੀ ਭਰਮ ਕੇ ਪੜਦੇ ਸਤੂਰ ਖੋਲੇ ਇਹ ਜੇ ਪੜਦੇ ਚੱਕਲੇ ਤੇ ਥੱਲੇ ਹੈਗਾ ਰੰਗ ਪਿਆ ਇਸ ਕਰਕੇ ਕੋਈ ਰੌ ਰੰਗ ਕਤਲੀ ਹੈ ਰੌ ਰੰਗ ਕਤਲੀ ਹੈ ਇਹ ਸਮਝਣਾ ਥੋੜਾ ਜਿਹਾ ਔਖਾ ਸੀ ਪਰ ਕੱਚੀ ਬਾਣੀ ਵਾਲੇ ਕਹਿੰਦੇ ਜੀ ਤੈਨੇ ਰਾਜਾ ਰੰਕ ਬਣਾਏ ਤੈਨੇ ਭਿਖਸ਼ੁਕ ਰਾਜ ਬਿਠਾਏ ਪੁਖਾਰੀਆਂ ਨੂੰ ਰਾਜ ਤੇ ਬਿਠਾਇਆ ਤੇਰੀ ਲੀਲਾ ਹੈਸ਼ ਮਹਾਰ ਬਣਾ ਮਨ ਮੰਦਰ ਅਲਿਸ਼ਾਨ ਤੇਰੇ ਪੂਜਣ ਕੋ ਭਗਵਾਨ ਹਾਲਾਂਕਿ ਬੜੇ ਬੜੇ ਸੰਤ ਗਣ ਗਉਂਦੇ ਨੇ ਅਚੰਗਾ ਵੀ ਸਮਝਦੇ ਨੇ ਤਾਰਕ ਲੋਕ ਆਉਂਦੇ ਨੇ ਪਰ ਗੁਰਮਤ ਦੀ ਕਸੂਰਤੀ ਤੇ ਗੁਰੂ ਇਹ ਬਾਣੀ ਕੱਚੀ ਹੈ भजन संता दा बनायो है तेरी लीला ईश महान हे भगवान ईश्वर तेरी लीला अपरंपार है बना वन बुद्र आली शान बुद्र आली शान हैगा बल बुद्र आली शान है बाले बुद्रन दी की लोड़ा देखो गल ओ भी बाले बुद्रन उ कटदा है तेरे पूजण को भगवान बना बन बुद्र आली शान आली शान बुद्र माने बाल लोड़ नहीं बदल दी फिर भी वाली कची ਰਾਜਾ ਰਾਮ ਦਾ ਜੋ ਮੰਦ ਹੈ ਇਹ ਗੱਲ ਇਦੋਂ ਔਖੀ ਹੈ ਗਾਲ ਦੀ ਹੈ ਗੁਰਵਾਲੇ ਘਾਂ ਖੜੀ ਹੈ ਕੋਈ ਰਾਜਾ ਨਹੀਂ ਹੈ ਕੋਈ ਰਾਮਕਰ ਨਹੀਂ ਹੈ ਐ ਆ ਕੇ ਕਹਤੀ ਹਾਲਾਂਕਿ ਬਾਹਰ ਲੈ ਨੂੰ ਕੱਟਦੇ ਹੋ ਵੀ ਹੱਲੇ ਪਖਣ ਬਾਦ ਨੂੰ ਨਹੀਂ ਮਿਲਦਾ ਬੁੱਧਟਾ ਦੇ ਮੱਧਟਾ ਦੇ ਉਸੇ ਲੈਵਲ ਦਾ ਗਰਦਰ ਕਬੀਰ ਆਏ ਹੋਏ ਹੋਰ ਹੋਏ ਇਸ ਲੈਵਲ ਦੀ ਗੱਲ ਹੈ ਗੁਰਬਾਣੀ ਉਦੋਂ ਉੱਚੀ ਲੈਵਲ ਦੀ ਗੱਲ ਹੈ ਇੱਕ ਲੈਵਲ ਵਿਚਾਲੇ ਹੋਰ ਵੀ ਹੈ ਜੋ ਇਹ ਨਾਲੋਂ ਵੀ ਉੱਚਾ ਗੁਰਬਾਣੀ ਉਦੋਂ ਵੀ ਉੱਚੀ ਖੜੀ ਹੈ ਨਾ ਰੰਕ ਹੈ ਨਾ ਮਾਨ ਹੈ ਨਾ ਮੌਤ ਹੈ ਨਸਾਕ ਹੈ ਨਾ ਸ਼ੰਕ ਹੈ ਨਾ ਮਾਨ ਹੈ ਨਾ ਮੌਤ ਤੋ ਸਲਮਾਨ ਵੀ ਨਹੀਂ ਹੈ ਜਿਹੜਾ ਸਲਮਾਨ ਬਲਦਾ ਸੰਸਾਰ ਦੇ ਵਿੱਚ ਸਰਮਾਨ ਨਹੀਂ ਬੰਦਾ ਸਰਮਾਨ ਨਹੀਂ ਹੈ ਸਰਮਾਨ ਦੇ ਨਾਲ ਤਾਂ ਵਹਾਨ ਹੋ ਜਾਂਦਾ ਤੇ ਸਮਾਨ ਤੇ ਸਭ ਈਮਾਨ ਫਿਤੂਮੇ ਉਹ ਤਾਂ ਵਹਾਨ ਦਾ ਰੂਪ ਧਰਨ ਕਾਲਾ ਦਾ ਦੁੱਧ ਜੇ ਪਹਿਲਾਂ ਮਿੱਠਾ ਨਾ ਜਾਂ بگੜਦਾ ਫਿਰ ਫਿਰ ਦੇਖੇ ਹਲਕਤੇ ਥੱਲੇ ਜਾਂਦੀ ਸਾਰੀ ਖਰਾਬ ਹੋ ਜਾਂਦਾ ਉਹ ਤਾਂ ਭਰੀ ਹਲਕਾ ਤਾਂ ਥੱਲੇ ਚਲਾ ਗਿਆ ਜਾਂ ਉਲਟੀ ਆਉਂਦੀ ਜਦ ਖੱਟਾ ਹੁੰਦਾ ਿਤਕ ਮਿਲਟਵ ਨਹੀਂ ਲੱਗਦਾ ਖੱਟਾ ਹੋਣ ਨੂੰ ਇਹਨੂੰ ਟੇਸਟ ਬਦਲ ਨੂੰ ਵਾਹਨ ਮਿਲਿਆ ਵਾਹਨ ਜੀ ਬਦਲਿਆ ਵਾਹਨ ਜੀ ਨੂੰ ਜਾਂਦਾ ਨਾ ਸਨਮਾਨ ਕਾਰ ਜਦ ਬਦਲ ਦਿੰਦਾ ਜਿਵੇਂ ਦੁੱਧ ਦੀ ਕੋਟ ਹਲਕਾ ਤੋਂ ਥੱਲੇ ਗਈ ਜਦ ਹੀ ਖਰਾਬ ਹੋ ਗਈ ਜੇ ਵਾਹ ਨਿਕਲੂਗਾ ਬਸ ਛਟਿਆ ਹੋਇਆ ਨਿਕਲੂਗਾ ਇੱਕ ਤਾਂ ਇੱਕ ਜਾਰ ਬਣ ਹੀ ਹੋਊ ਖਟਿਆਲ ਜਦ ਇਹ ਯਾਰ ਬਣ ਗਈ ਉਹ ਵਿਖਿਆ ਬਣ ਗਈ ਬਾਣ ਇਸ ਕਰਕੇ ਨਹੀਂ ਆ ਬਾਣ ਤਾਂ ਵਿਗੜਨ ਵਾਲੀ ਚੀਜ਼ ਹੈ ਬਗਾੜਨ ਵਾਲੀ ਚੀਜ਼ ਹੈ ਬਾਣ ਆਤਮਾ ਨੂੰ ਬਗਾੜਨ ਵਾਲੀ ਚੀਜ਼ ਹੈ ਤੂਸ ਬਾਣ ਵਾਲੀ ਚੀਜ਼ ਹੈ ਬਾਣ ਤਾਂ ਮੋਹ ਹੈ ਅਸਲ ਚ ਗਰਭ ਪਰ ਨਮਾਤਾ ਕਾਰਿਆ ਸੁਮਾਰਿਆ ਕੇ ਕਾਬ ਚਲਦੀ ਹੈ ਹੰਕਾਰਿਆ ਸੁਮਾਰਿਆ ਸੁਮਾਰਿਆ ਬੰਦੀ ਮਾਤ ਕਿਉਂ ਹੰਕਾਰ ਹੈ ਕਾਰ ਦਾ ਪ੍ਰਤੀਕ ਬੁਰੂ ਕਾਰ ਦਾ ਮੂਜਸਮਾ ਹੈ ਇੱਕ ਕਾਰ ਦੀ ਭੂਰਤਾ ਬੁਰੂ ਹਾਂ ਵਰ ਮਾ ਉਹ ਕੀ ਹੈ ਨਹੀਂ ਮਰ ਨਹੀਂ ਤਾ ਤੂ ਮਾਣਾ ਨੋਤਾ ਬਹੁਤ ਨਹੀਂ ਇਹ ਤੂ ਬਹੁਤ ਨਾਉ ਦੀ ਕੋਈ ਚੀਜ਼ ਹੈ ਜੀ ਇਸ ਸੰਸਾਰ ਚ ਇਹ ਤਾਂ ਅਵੜ ਜਾਣ ਅਵੜ ਜਾਣ ਅਵੜ ਜਾਣ ਅਦ੍ਰਿਸ਼ਟ ਅਦ੍ਰਿਸ਼ਟ ਅਗਿਆਕਾਰ ਇਹ ਤਾਂ ਆਤਮਾ ਵਰਦੇ ਨਹੀਂ ਮਾਇਆ ਦਾ ਵੀ ਕੁਝ ਨਹੀਂ ਵਰਦਾ ਹੈ ਮਾਇਆ ਨਾਲ ਕੁਝ ਨਹੀਂ ਵਰਦਾ ਨਾ ਕਿਛ ਕੀ ਦੁਹਾਈ ਉਹ ਤੱਤ ਵੀ ਇੱਥੇ ਹੀ ਰਹਦ ਨੇ ਤੱਤ ਵੀ ਵਰਦੇ ਤੱਤ ਮਰਦਾਨੀ ਚੀਜ਼ ਨਹੀਂ ਹੁੰਦੀ ਹਾਂ ਪਰਦਾ ਕੀ ਹੈ ਮਰਦ ਦਾ ਰੂਪ ਰੂਪ ਵਰਦਾ ਬਸ ਰੂਪ ਕੋਈ ਚੀਜ਼ ਹੁੰਦੀ ਹੋਣੀ ਰੂਪ ਤਾਂ ਘੜ ਦਦਾ ਨਾ ਪਰਦਾ ਰੂਪ ਹੈ ਕਿਹਦਾ ਮਰਦ ਰੂਪ ਰੂਪ ਵੀ ਝੂਠਾ ਵਰਦਾ ਸੱਚਾ ਨਹੀਂ ਮਰਦਾ ਜਿਹੜਾ ਰੂਪ ਘਰੂਪ ਹੋ ਗਿਆ ਉਹੀ ਮਰਦਾ ਬੁੱਧੀ ਦੇ ਹੁਣ ਜਿਹੜੇ ਰੂਪ ਬਦਲਦੇ ਨੇ ਬਦਲਦੇ ਨੇ ਬਦਲਦੇ ਨੇ ਕਰੂਪ ਰੂਪ ਨੇ ਤਾਂ ਬਦਲਦੇ ਨੇ ਜਾਂ ਸਰੂਪ ਹੋ ਜਾਣੇ ਫੇਰ ਹੀ ਬਦਲ ਬਬੇ ਹੁਦੀ ਬਦਲ ਜਣੀ ਫਿਰ ਮਰਨਾ ਆਂਦੀਆਂ ਨੇ ਉਹ ਵਾਰਨਾ ਜਦੋਂ ਨਾਲ ਕੁਝ ਨਹੀਂ ਹੈਗਾ ਰੂਪ ਦਾ ਬਦਲਣਾ ਮਰਨਾ ਹੈ ਫਲ ਮਰਦਾ ਆਦਮੀ ਸ਼ਕਲ ਬਦਲਦੀ ਹੈ ਵਰਦਾ ਆਖਰੀ ਸ਼ਕਲ ਦੀ ਫੋਟੋ ਰੱਖ ਲੈਣਿਆ ਸੀ ਸਾਹਿਬ ਜਾਤਾ ਦੀ ਫੋਟੋ ਰੱਖਾਂਗੇ ਕਦੇ ਦਾੜੀ ਵਾਲਿਆਂ ਦੀ ਨਹੀਂ ਰੱਖ ਸਕਦੇ ਛੋਟੇ ਸਾਹਿਬ ਜਾਤਾ ਦੀ ਫੋਟੋ ਕਦੇ ਦਾੜੀ ਵਾਲਿਆਂ ਦੀ ਬਣਦੀ ਹੋਣੀ ਹੈ ਸਰੀਰ ਜੋ ਝੜ ਗਏ ਬਿਨਾਂ ਦਾੜੀ ਤੇ ਬਚ ਪੜਦੇ ਇਹੀ ਰੂਪ ਦੀ ਫੋਟੋ ਆਖਰੀ ਫੋਟੋ ਸੀ ਆਖਰੀ ਰੂਪ ਵੀ ਫਾਈਨਲ ਰੂਪ ਰਹਿ ਜਾਂਦਾ ਹੁੰਦਾ ਇਹਨਾਂ ਦੀ ਕਿਵੇਂ ਬਣ ਜੂਗੀ ਦਾੜੀ ਜਿਹੜੀ ਫੋਟੋਆਂ ਹੋਈ ਹੋਈ ਦੀ ਇਸ ਕਰਕੇ ਰੂਪ ਬਦਲਦਾ ਰਹਿੰਦਾ ਉਹ ਮਰਦਾ ਰਹਿੰਦਾ ਨਾ ਉਹਦਾਰ ਪਹਿਲਾ ਰੂਪ ਨਹੀਂ ਪਹਿਲਾ ਭੁੱਲ ਜਾਂਦੇ ਲੋਕ ਆਖਰੀ ਰੂਪ ਜਿਹੜਾ ਹੁੰਦਾ ਉਹੀ ਉਸੇ ਦੀ ਇੰਪੋਰਟੈਂਸ ਰਹ ਜਾਂਦੀ ਹੈ ਦਸਮ ਪਾਸ਼ਾ ਦੀਆਂ ਬਚਪਨ ਦੀਆਂ ਫੋਟੋਆਂ ਹੁੰਣ ਗਈਓ ਸਕਦੇ ਨੇ ਪਰ ਉਹਦੇ ਸ਼ਰਧਾ ਦੀ ਲੋਕਲ ਦੀ ਆਖਰੀ ਤੇ ਉਹ ਤਾਂ ਨਹੀਂ ਜਾਂਦਾ ਹੈ ਬਿਲਕੁਲ ਵੀ ਸ਼ਰਧਾ ਅਖੀਰੀ ਵੋਟ ਉਹ ਦੇਉਗੇ ਐਵੇਂ ਕੋ ਨਾਨਕ ਦੀਆਂ ਹੋਣਗੀਆਂ ਉਹ ਫੋਟੋ ਨੂੰ ਨਹੀਂ ਕੋਈ ਕੋਈ ਦਾ ਆਖਰੀ ਫੋਟੋ ਨੂੰ ਕੋਈ ਤੇ ਆਖਰੀ ਫੋਟੋ ਦੀ ਰੂਪ ਤਾਂ ਰੇਖਾ ਬਦਲ ਨਹੀਂ ਬੱਚੇ ਤੇ ਬਦਲ ਨਹੀਂ ਰਹਿਦਾ ਰੂਪ ਇਹ ਆਖਰੀ ਦੀ ਜਾਂਦੀ ਹੈ ਜੋルダー ਰੂਪ ਬਦਲਦੇ ਨੇ ਸੱਚ ਤਾਂ ਨਹੀਂ ਬਦਲਦਾ ਉਹ ਮਾਇਆ ਸਰੀਰ ਝੂਠ ਹੈ ਮਾਇਆ ਹੈ ਮਾਇਆ ਬੋ ਸਭ ਕੂੜ ਮਾਇਆ ਕੂੜ ਹੈ ਝੂਠੀ ਮਾਇਆ ਇਹਦੇ ਰੂਪ ਬਦਲਦੇ ਨੇ ਰੋਜ਼ੇ ਬਦਲਦੇ ਨੇ ਬਦਲਣਾ ਹੀ ਮਰਨਾ ਹੈ ਬਦਲਣਾ ਮਰਨਾ ਇਹ ਦੂਰ ਰੂਪ ਦੁਬਾਰਾ ਹੋਣਾ ਨਹੀਂ ਹੁਣ ਮੋਢਾਪਾ ਆ ਗਿਆ ਜਵਾਨੀ ਮੁੜ ਕੇ ਨਹੀਂ ਆਉਣੀ ਨਹੀਂ ਆਉਣੀ ਵਰ ਗਈ ਫਿਰ ਉਹ ਜਵਾਨੀ ਵਾਲੇ ਰੂਪ ਵੀ ਮਰ ਗਏ ਜਵਾਨੀ ਮਰ ਗਈ ਤੇ ਰੂਪ ਵੀ ਮਰ ਗਏ ਹੋ ਇਹ ਤਾਂ ਰੋਜ਼ ਬਰਦਾ ਸਰੀਰ ਤਾਂ ਸਿਰ ਦਾ ਰੂਪ ਵਰਦਾ ਰੂਪ ਦਾ ਰੋਜੇ ਵਰਦਾ ਹੈ ਇਹ ਚੀਜ਼ ਹੈ ਬਲ ਨਾਲ ਹੀ ਹੈ ਰੂਪ ਫਿਰ ਕੁਛ ਨਹੀਂ ਵਰਦਾ ਵਰਦਾ ਸਿਰ ਰੂਪ ਵਿਦਸੇ ਗਉ ਰੂਪ ਵੇਖਿਆ ਦੁਨੀਆ ਦੁਨੀਆ ਦੇਖਦੇ ਰੂਪ ਨੂੰ ਰਹੂਗਾ ਔਰ ਬਿਰਸਦਾ ਰਹਿੰਦਾ ਬਹੁਤ ਨਹੀਂ ਆਇਆ ਤੂੰ ਤੂੰ ਤਾਂ ਜੀਵਨ ਹੈ ਮੌਤ ਕਾ ਨਹੀਂ ਉਹ ਜੀਵਨ ਮੌਤ ਨਹੀਂ ਹੁੰਦੀ ਜਗ ਜੀਵਨ ਹੈ ਤੂੰ ਬਹੁਤ ਘਤ ਹੈ ਬਹੁਤ ਨਹੀਂ ਹੈ ਕੋਈ ਵੀ ਚੀਜ਼ ਬਹੁਤ ਤਾਂ ਸੌਣ ਦਾ ਨਾਮ ਓਏ ਵੇ ਉਹ ਜੀ ਦਾ ਨਾਮ ਹੁੰਦਾ ਹੈ ਮੋਤੀ ਵੀ ਹੁੰਦੀ ਸੌ ਗਿਆ ਉਹ ਨਾ ਮਰ ਗਿਆ ਇੱਕ ਦਿਨ ਸੋਬਣ ਹੋਏ ਕੋ ਲਾਂਬੇ ਕੋੜ ਸੌ ਫਸਾ ਬ ਸੌਦਾ ਕਿਉਂ ਹੂੰ ਕਿਉਂ ਸੌਂਦਾ ਜਿਹਨਾਂ ਜਿਹਨਾਂ ਦੇ ਸਿਰ ਤੇ ਭਾਰ ਹੈ ਤਾਂ ਸੌਂਦਾ ਥੱਕ ਕੇ ਸੌਂਦਾ ਜਿਹਨਾਂ ਜਰ ਹੋਵੇਂ ਮੋਹ ਪਰਮਾ ਉਹ ਪੈਦਾ ਭਾਰ ਹੈ ਉਹਨਾਂ ਜਰ ਸੌਂਦਾ ਜਾਂਦੇ ਲੈ ਜੂ ਇਹਨੂੰ ਸੌਣੇ ਦੀ ਨੀਂਦ ਆਉਣੀ ਉਹਦੀ ਭਾਰ ਟੋਦਾ ਸੌਂਦਾ ਥੱਕਦਾ ਉਹਨਾਂ ਜਰ ਸੌਂਦਾ ਜੇ ਭਾਰ ਰਹਿਣਾ ਨਹੀਂ ਇਹਨੇ ਥਕਣਾ ਨਹੀਂ ਦੀ ਨੌੜੀ ਨੀਂਦ ਦਾ ਇਹ ਜਿਹੜਾ ਭਾਰ ਢੋਣਾ ਨਾ ਬੋਝ ਹੋਵੇ ਸਿਆਣੇ ਬੰਦੇ ਨੇ ਬਜ਼ੁਰਗ ਜਦ ਹੋ ਜਾਂਦੇ ਨੇ ਕੰਮ ਨਹੀਂ ਕਰਦੇ ਨੀਂਦ ਕਿੱਥੋਂ ਆਉਣੀ ਹੈ ਕੰਮ ਤਾਂ ਕੋਈ ਕਰਦੇ ਸੀ ਸਾਲਾ ਬੈਠੇ ਰਹਿੰਦੇ ਕੰਮ ਨਾ ਹੋਵੇ ਚਿੰਤਾ ਨਾ ਹੋਵੇ ਫਿਕਰ ਨਾ ਹੋਵੇ ਨੀਂਦ ਕਦੋਂ ਆਉਣੀ ਹੈ ਚਿੰਤਾਲੇ ਨੂੰ ਨਹੀਂ ਆਉਂਦੀ ਘਟ ਹੁੰਦੀ ਹੈ ਇਸ ਕਰਕੇ ਆਤਮਾ ਨੂੰ ਨੀਂਦ ਖਾਦੀ ਜਾਂਦੀ ਹੈ ਹਮੇ ਵੋ ਪਰ ਪਰ ਤਾਉ ਦੀ ਨਾਸਾਕ ਹੈ ਨਾ ਸੰਕ ਹੈ ਹਾਂ ਨਾਸਾਕ ਹੈ ਨਾ ਸੰਕ ਹੈ ਦਾਦਾ ਤੂੰ ਕਿਸੇ ਦਾ ਸਾਖ ਹੈ ਕਿਸੇ ਜਿਆਦਾ ਨੇੜੇ ਹੈ ਸਾਖੂ ਨਾ ਕੋਈ ਤੇਰਾ ਸਾਖ ਹੈ ਦੋਹੀ ਪਾਸੇ ਹੋਊ ਦੋਈ ਪੱਸੀ ਗੱਲ ਹੈ ਜੇ ਉਹ ਸਾਖਾ ਉਹ ਹੋਦਾ ਸਾਖਾ ਤਾ ਸ਼ੰਕ ਹੈ ਤਨੂ ਨਾ ਸ਼ੰਕ ਹੈ ਸ਼ੰਕਾ ਕੋਈ ਸ਼ੱਕ ਨਹੀਂ ਤੇਰੇ ਮਨ 'ਚ ਕੋਈ ਸ਼ੱਕ ਨਹੀਂ ਤੇ ਤੇ ਸ਼ੰਕਾ ਨਹੀਂ ਕਦੇ ਨਹੀਂ ਹੁੰਦੀ ਦਾ ਸ਼ੰਕ ਹੈ ਨਾ ਜਚ ਹੈ ਨਾ ਗੰਧਰਮ ਹੈ ਨਾ ਨਲ ਹੈ ਨਾ ਨਾਰ ਹੈ ਨਾ ਜਚ ਹੈ ਨਾ ਤਜਲ ਗਧਰ ਪਹਿਲ ਨਾ ਨਾਰ ਹੈ ਨਾ ਨਾਰ ਹੈ ਨਾਰ ਹੈ ਨੋ ਨਾਰ ਹੈ ਸ਼ੱਕ ਹੈ ਸਭ ਦਾ ਹੈ ਸਭ ਕਾ ਵੀ ਤੋ ਨਹੀਂ ਹੈ ਸ਼ੱਕ ਤੇ ਤੋ ਹੀ ਬੇਦਰਦੀ ਤੂੰ ਸ਼ੱਕ ਦਾ ਨਾਸ ਕਰਦਾ ਮੌਤ ਨਹੀਂ ਹੈ ਤੂੰ ਤੂੰ ਬਹੁਤ ਦਾ ਨਾਸ ਕਰਨ ਵਾਲਾ ਹੈ ਤੇ ਬਹੁਤਾ ਹੈ ਬਹੁਤਾ ਤਾਂ ਤੂੰ ਅਲਾਜ ਹੈ ਮੌਦੀ ਦੇ ਦਵਾਈਆਂ ਤੂੰ ਨਾ ਉਹਦਾ ਮੌਦੀ ਦਵਾਈ ਹੈ ਬਹੁਤ ਕਿਤੇ ਹੈ ਬਹੁਤੀ ਦਵਾਈਤ ਬਹੁਤ ਨਹੀਂ ਹੁੰਦੇ ਬਹੁਤ ਦਾ ਇਲਾਜ ਹੈ ਨਾ ਤੇਰਾ ਜੁੜਕੇ ਦਾ ਬਹੁਤ ਆਉਦੀ ਨਹੀਂ ਰੇੜੇ ਸ਼ੰਕਾ ਵੀ ਨਹੀਂ ਦਰਿਆ ਨਾੜੇ ਸ਼ੰਕਾ ਹੀ ਮੋਦਾ ਕਾਰਨ ਪਰ ਮੋਦਾ ਕਾਰਨ ਜੋਦ ਦਾ ਪਰਮ ਦਾ ਜੋਦਦਰ ਪਰਮ ਦਾ ਦਾ ਵਿੱਚ ਵਿਰੋਧ ਹੈ ਬਰਬਕੀ ਹੱਦ ਘਰ ਨੇਰਾ ਜੋਤ ਕੀ ਲਾਈਟ ਲੈਟਰ ਨੇ ਰੱਖਾ ਠੇਕੇ ਮਰੇ ਸੋ ਤੇ ਤੋ ਸ਼ੱਕਾ ਵੀ ਨਹੀਂ ਹੈ ਰੋਤ ਵੀ ਨਹੀਂ ਹੈ ਕਿਹਦਾ ਸਾਖ ਰਿਸ਼ਤੇਦਾਰ ਵੀ ਨਹੀਂ ਹੈ ਹੁਣ ਰਿਸ਼ਤੇਦਾਰ ਨੇ ਪਰਮਭਿਸ਼ਰੂ ਸ਼ਿਵ ਜੀ ਸਾਰਿਆਂ ਦੇ ਦੇਵਤਿਆਂ ਦੇ ਅਸਲ ਚ ਸਾਰੀ ਭਰਮਸ ਕੱਟੀ ਜਾ ਰਹੀ ਹੈ ਲੋੜ ਬਤਾਂ ਦੀ ਸਪੈਸ਼ਲ ਬਤਾਂ ਦੀ ਫਲਸਫੀ ਤੇ ਕੋਹੜਾ ਚੱਲ ਰਿਹਾ ਸ਼ਿਵੀ ਦੇ ਰਿਸ਼ਤੇਦਾਰ ਵਿਸ਼ਨੂ ਦੇ ਰਿਸ਼ਤੇਦਾਰ ਹਨ ਬ੍ਰਹਮ ਦੇ ਰਿਸ਼ਤੇਦਾਰ ਸਾਰੇ ਦੇਵੀ ਦੇਵਤਿਆਂ ਦੇ ਰਿਸ਼ਤੇਦਾਰ ਤੇਰਾ ਕੋਈ ਹੈ ਨਹੀਂ ਤੂੰ ਅਲੱਗਾਇਨਾ ਤੇ ਜ਼ੋਰ ਚੀਜ਼ ਇਹ ਨਹੀਂ ਆਲੇ ਤਾਂ ਇਹ ਤਾਂ ਹੈ ਜੇ ਆਦਮੀ ਨੇ ਜਾਈ ਜੀ ਅਸੀਸੀ ਉਹ ਸਾਰੀ ਗੱਲ ਕੱਟੀ ਜਾ ਰਹੀ ਆ ਪਿੱਛੇ ਉਹ ਦਿਨ ਤੇ ਆਣ ਗਿਆ ਇਹਨਾਂ ਦੁਗ ਦਵਾਨਾਂ ਦਾ ਵੀ ਇਹ ਗੱਲ ਕੀ ਹੈ ਇਹਦੀ ਬੈਕਗ੍ਰਾਉਂਡ ਕੀ ਹੈ ਜੋ ਕਾਹ ਰਹੇ ਨੇ ਸਾਖ भी ਹੈ ਜਿਨ੍ਹਾਂ ਦੇ है साकता है ਕੌਣ ਨੇ ਤਾਂ ਸੂਪਰ ਜਪਤੀਆ ਸਾਰਿਆਂ ਨੂੰ ਆਪਣੀਆਂ ਕੁੜੀਆਂ ਦਿੱਤੀਆਂ ਸਾਰਿਆਂ ਦਾ ਰਿਸ਼ਤੇਦਾਰ ਧਾਇ ਹੈ ਨਾ ਕੋਈ ਤਾਂ ਸਾਰਾ ਤਾਲਾ ਬਾਣਾ ਹੀ ਸਾਖ ਦੇ ਵਿਚੁਰਜਿਆ ਹੋਏ ਇਹ ਤਾਂ ਐਰੀ ਹੈ ਇਹ ਸਾਰਾ ਡਰਾਮਾ ਉਲਟਾ ਹੈ ਉਧਰ ਆਮਚਦ ਦੇ ਲੈ ਲੋ ਉਹਦੇ ਵੀ ਸਾਧ ਦੇ ਕ੍ਰਿਸ਼ਨ ਦੇ ਵੀ ਸਾਧ ਨੇ ਕੋਈ ਚੋਵੇਂ ਉਤਾਰਾਂ ਦੇ ਸਾਰਿਆਂ ਦੇ ਸਾਧ ਨੇ ਕੋਈ ਬਜਿਆ ਹੀ ਨਹੀਂ ਬਣੋ ਸਾਖ ਤੇ ਨਾ ਜਾਚੇ ਹਨ ਨਾ ਗੰਧਰ ਬਹਿਣ ਜਾਚੇ ਦਾ ਨਾਰ ਬਨੇ ਭਗਤੀ ਕਰਨ ਵਾਲੇ ਆਪਣੇ ਆਪ ਨੂੰ ਮੰਦਰ ਇਹ ਵੀ ਨਹੀਂ ਹੈ ਇਹਨਾਂ ਦੀ ਕੁਲਜ ਵੀ ਨਹੀਂ ਹੈ ਨਾ ਨਰ ਹੈ ਨਾ ਹੈ ਨਾ ਆਦਮੀ ਹੈ ਆਦਮੀ ਉਹਦਾ ਸਾਖ ਹੋਣਗੇ ਆਦਮੀ ਹੁੰਦਾ ਮਾਂਗਾ ਫੋੜਗੇ ਅਰਦਾ ਉਹਦਾ ਮਾਂਗਾ ਫੋੜਗੇ ਰਿਸ਼ਤੇਦਾਰ ਹੋਣਗੇ ਦੋ ਜੀ ਜੀ ਦੀ ਦਾਰ ਨਾਰ ਬਰੀ ਨਾ ਨਾ ਰਹੇ ਨਾ ਨਾਰ ਹੈ ਮਾਤਾ ਜੋਨੀ ਚ ਹੈ ਹੋਰੀ ਜਾਂ ਜੋਨੀ ਚ ਹੈ ਨਹੀਂ ਬਾਵਜੂਹ ਦੇ ਨਾ ਕੁਝ ਕਰਨ ਦੇ ਨਾਨਕ ਗੁਰੂ ਫੇਰ ਬਣਾਤਾ ਨਿਰੰਕਾਰ ਨਾਨਕ ਗੁਰੂ ਫੇਰ ਨਿਰੰਕਾਰ ਕਰਤਾ ਬੁੱਧੀ ਹੀ ਗੱਲ ਹੈ ਫਿਰ ਇਹਨਾਂ ਸਾਰੀ ਗੁਰਬਾਣੀ ਕਹੀ ਕਹਾਈ ਹੋਈ ਛੇਕੇ ਡੰਗ ਦੀ ਜਾ ਕੇ ਸਾਰੀ ਗੱਲ ਉਹਨਾਂ ਵਾਲੀ ਗੱਲ ਮੰਨ ਲਈ ਫਿਰ ਤਾਂ ਉਹਨਾਂ ਦੇ ਲੈਵਲ 'ਚ ਆ ਗਏ ਸੀ ਉਹਨਾਂ ਨੂੰ ਉਂਗਲੀ ਉਹਨਾਂ ਵੱਲ ਕਿਵੇਂ ਕਰਾਂਗੇ ਜਿਹੜੀ ਉਂਗਲੀ ਉਹਨਾਂ ਵੱਲ ਉੱਠਦੀ ਥੀ ਸਾਡੇ ਵੱਲ ਉੱਠਣ ਲੱਗੀ ਸਿਰਫ ਇਹੀ ਗਲਤੀ ਅਸਲ ਚ ਉਹ ਕਰਕੇ ਉਹਨਾਂ ਨੂੰ ਉਠਾਈ ਉਹਨਾਂ ਨੂੰ ਪਤਾ ਸੀ ਵੀ ਉਂਗਲੀ ਫੇਰੇ ਸਾਡੇ ਵੱਲ ਉੱਠਣ ਤੇ ਆਪੇ ਹਟ ਜੂ ਨਾਂ ਬਣਾ ਲਓ ਇਹ ਸਾਡਾਂ ਦੀ ਚਲਾਕੀ ਸੀ ਪੰਡਤ ਦੀ ਸਹਾਇਤ ਸੀ ਸਾਨੂੰ ਜੱਗੀ ਲੱਗੀ ਉਹ ਵੀ ਚਲ ਉਹਨਾਂ ਦੇ ਤਾਂ ਖੰਡੂਨ ਕੀਤਾ ਇਹਨਾਂ ਸਾਡੇ ਨੂੰ ਇਹ ਮੰਨਦੇ ਕੁਝ ਸਾਡੇ ਆ ਲੋ ਲੋਗੇ ਉਹਨਾਂ ਦੇ ਆਪੇ ਜਿਉਂਦੇ ਹੋ ਜਾਣੇ ਨੇ ਬਰੇ ਹੋਏ ਵੀ ਉਹ ਬਰੇ ਹੋ ਜਉਂਦੇ ਹੋਗੇ ਸਾਰੇ ਹੀ ਇਹ ਨਹੀਂ ਇਹਨਾਂ ਨੂੰ ਪਤਾ ਸੀ ਵੀ ਇਹ ਮੰਨਾਂਗੇ ਜਿਉਂਦੇ ਹੋ ਜਾਣਗੇ ਸਾਰੇ ਸਾਰੇ ਜਿਉਂਦੇ ਕਰ ਲੈ ਹਰ ਘਰ ਘਰ ਗੁਰੂ ਬਣਾ ਬੈਠਾ ਨਾਨਕ ਨੂੰ ਗੁਰੂ ਬਣਾਓਗੇ ਘਰ ਘਰ ਗੁਰੂ ਬਣੋ ਤੁਸੀਂ ਬਦਲ ਨਹੀਂ ਕਰ ਸਕਦੇ ਫਿਰ ਆਦਮੀ ਗੁਰੂ ਹੋ ਗਿਆ ਡਿਕਲੇਅਰ ਹੋ ਗਿਆ ਤੂੰ ਸਾਬਤ ਕਰੋ ਬੇ ਦੁਆ ਕਰੋ ਨਹੀਂ ਤੂੰ ਸਾਬਤ ਕਰੋ ਨਾਨਕ ਗੁਰੂ ਸੀ ਉਹ ਗੁਰੂ ਹੈ ਜੀ ਸਾਬਤ ਕਰੋ ਸਭੇ ਜਾਣ ਕਰੋ ਪੱਕੀ ਬਾਣੀ ਦਾ ਪਤਾ ਹੋਊ ਪੱਕੀ ਬਾਣੀ ਦਾ ਪਤਾ ਲੱਗੂ ਨਾਨਕ ਗੁਰੂ ਸਭ ਤਰੀ ਉਦੋਂ ਸਿਆਪਾਏ ਜਦ ਤੂੰ ਗੁਰਬਾਣੀ ਨਹੀਂ ਸਮਝ ਆ ਗਈ ਉਦੋਂ ਸਾਬਤ ਹੋ ਜਾਊਗਾ ਬਿਨਾਂ ਨਾਨਕ ਗੁਰੂ ਹੈ ਜੀ ਝੂਠੇ ਤੁਸੀਂ ਸਾਬਤ ਹੋਵੋਗੇ ਫਿਰ ਵੀ ਫਿਰ ਵੀ ਝੂਠੇ ਸਾਬਤ ਹੋ ਜਾਓਗੇ ਆਪਣੇ ਜਾਲ ਚਾਪੇ ਫਸ ਗਏ ਸਿੱਖ ਆਪਣੇ ਜਾਲ ਆਪਣੇ ਅਗਲ ਨਾਲ ਆਪੇ ਫਸ ਗਏ ਹਈ ਨਾ ਚੋਰ ਹੈ ਨਾ ਦੇ ਨਾਲ ਆਪਾਂ ਸਾਹ ਦੇ ਇਸਤੇਮਾਲ ਕਰਦੇ ਆਂ ਫੇ ਸਾਹ ਹੁੰਦਾ ਜੀ ਸਾਹ ਦੇ ਨਹੀਂ ਕਰਦਾ ਹੁੰਦਾ ਸ਼ਾਹ ਦੇ ਕਰਦਾ ਹੁੰਦਾ ਸਾਹ ਦੇ ਕੋ ਕੀ ਹੋ ਤਾਂ ਆਪੇ ਵਿਚਾਰਾ ਚੋਰ ਬਣ ਪਹਿਲਾਂ ਹੀ ਨਾ ਚੋਰ ਹੈ ਨਾ ਸ਼ਾਹ ਹੈ ਦੇਖੋ ਚੋਰ ਦਾ ਉਲਟ ਸ਼ਾਹ ਹੈ ਨਵੀਂ ਗੱਲ ਆ ਇਹ ਸਿੰਸਾਰ ਤੋਂ ਆਪਾਂ ਚੋਰ ਹਰ ਸਾਥ ਕਹਿੰਦੇ ਉਸ ਸਾਥ ਕੋ ਕੀ ਹੈ ਸਾਧੇ ਚੋਰੀ ਕਰਨ ਉਹਦੇ ਕੋ ਕੀ ਹੈ ਸਾਧ ਕੋ ਚੋਰ ਕੋ ਦਾ ਜੋ ਕੁਝ ਹੋਊ ਸਾਧ ਕੋ ਤਾਂ ਕੱਪੜੇ ਵੀ ਨਹੀਂ ਹੁੰਦੇ ਇਸ ਕਹ ਕੇ ਨਾ ਚੋਰ ਹੈ ਨਾ ਸ਼ਾਹ ਹੈ ਸਾਧਾ ਜਿਹੜਾ ਕੋਈ 10 4 ਪੈਸੇ ਵਾਲਾ ਉਸੇ ਤੇ ਜਾਊ ਚੋਰ ਤਾਂ ਸ਼ਾਹ ਹੈ ਨਾ ਸ਼ਾਹ ਗੋਕੁਮਾਰ ਹਨ ਨਾ ਸ਼ਾਦਾ ਕੋਈ ਲੜਕਾ ਹੈ ਕੁਮਾਰ ਹਨ ਸ਼ਾਦਾ ਕੁਮਾਰਾਂ ਨੇ ਕਹਾਣੀਆਂ ਯੋਯੋਦੂ ਸ਼ਾਦਾ ਕੁਮਾਰ ਭਲਾ ਕੌਣ ਸੀ ਸ਼ਾਦੇ ਕੁਮਾਰ ਬਹੁਤ سارے ਆਏ ਹੋਏ ਜੇ ਸ਼ਾਹ ਕੌਣ ਸੀ ਪਹਿਲਾਂ ਸ਼ਾਹ ਬੁੱਬੂਦ ਸ਼ਾਹ ਜਿਹੜਾ ਹੈ ਨਾ ਸ਼ਾਹ ਨੇ ਸਾਰੇ ਇੰਨੇ ਨਾਲ ਕਿਹਾ ਆ ਤਾਂ ਸ਼ਾਹ ਗੋਕੁਮਾਰ ਉਸ ਹਰਮਾਨ ਨੇ ਸ਼ਾਹ ਲੱਗਿਆ ਹੋਇਆ ਸਾਰਿਆਂ ਦੇ ਨਾਲ ਬਹੁਤ ਬਰੀਕੀ ਨਾਲ ਕੱਟੀ ਹੋਈ ਹੈ ਗੱਲ ਸ਼ਾਹ ਕੋ ਕੁਮਾਰ ਕਹਿ ਕੇ ਨਾ ਕੋ ਮਮਾ ਜਹਾ ਦਾ ਲੜਕਾ ਹੈ ਉਹ ਦਾ ਉਤਰਾ ਅਧਿਕਾਰੀਏ ਸਾਰੇ ਮੁਸਲਮਾਨਾਂ ਦੇ ਸ਼ਾਹ ਲੱਗੇ ਹੋਏ ਨੇ ਨਾ ਨੇ ਹੈ ਨਾ ਗੇ ਹੈ ਨਾ ਹੈ ਨਾ ਹੈ ਨਾ ਗੇ ਹੈ ਨਾ ਦੇ ਕੋ ਨਾ ਦੇ ਕੋ ਬਣਾਓ ਨਾ ਤੇਰਾ ਕੋਈ ਘਰ ਹੈ ਨਾ ਤੇਰਾ ਘਰ ਨਾਲ ਕੋਈ ਪ੍ਰੇਮ ਹੈ ਲਗਾਓ ਹੈ ਦੇ ਲਗਾਓ ਹੁੰਦਾ ਨਾ ਘਰ ਹੈ ਨਾ ਉਹਦੇ ਨਾਲ ਲਗਾਓ ਨਾ ਕੋਈ ਸਰੀਰ ਹੈ ਤੇ ਨਾ ਦੇ ਕੋ ਬਣਾਓ ਹੈ ਨਾ ਦੇ ਨਾ ਕੋਈ ਦੇਦੀ ਬਣਾਵਟ ਵੀ ਕੋਈ ਨਹੀਂ ਨਾ ਛਲ ਹੈ ਨਾ ਛਦਰ ਹੈ ਨਾ ਛਲ ਕੋ ਮਿਲਾਓ ਹੈ ਨਾ ਛਲ ਹੈ ਨਾ ਛਦਰ ਹੈ ਨਾ ਛਲ ਕੋ ਬਲਾਓ ਹੈ ਕਹ ਕੋਣ ਕ੍ਰਿਸ਼ਨ ਦੇ ਵਾਰੀਆ ਛੜੀਆ ਨਾ ਕ੍ਰਿਸ਼ਨ ਛੜੀਆ ਕਹਿੰਦਾ ਨਾ ਕ੍ਰਿਸ਼ਨ ਤੂੰ ਨਾ ਛੜਾ ਹੈ ਨਾ ਚਿੱਧਾ ਨਾ ਛੜੂਪ ਨਹੀਂ ਆ ਤੂੰ ਬਿਲਕੁਲ ਵੀ ਅ ਤੇਰੇ ਜ ਕੋਈ ਕਮੀ ਵੀ ਨਹੀਂ ਹੈ ਜੀ ਛੜ ਕਰਨ ਵਾਲੀ ਨਾ ਛੜ ਕੋ ਮਲਾਉ ਹੈ ਤੇ ਤੇਰੇ ਵਿੱਚ ਛੜ ਦੀ ਤਾਂ ਬਲਾਵਟ ਵੀ ਨਹੀਂ ਹੈ ਛੜ ਤਾਂ ਛੜ ਬਲਾਵਟ ਵੀ ਨਹੀਂ ਉਹਦਾ ਛੜ ਦੀ ਬਲਾਵਟ ਵੀ ਨਾ ਤੰਤਰ ਹੈ ਨਾ ਮੰਤਰ ਹੈ ਨਾ ਜੰਤਰ ਕੋ ਸਰੂਪ ਹੈ ਉਹ ਜਿਹੜੇ ਤੰਤਰ ਮੰਤਰ ਵਾਲੇ ਜਿੰਨੇ ਵੀ ਨੇ ਨਾ ਤੰਤਰ ਹੈ ਨਾ ਮੰਤਰ ਹੈ ਨਾ ਜੰਤਰ ਕੋ ਸਰੂਪ ਹੈ ਨਾ ਜੰਤਰ ਕੋ ਸਰੂਪ ਹੈ ਜੰਤਰ ਦੇ ਸਰੂਪ ਨੇ ਕੋਈ ਚੀਜ਼ ਜਿਵੇਂ ਉਹ ਦਦੇ ਰ ਰੂਦਰਾਕਸ਼ਾ ਜੰਤਰ ਦੇ ਸਭ ਕੋਈ ਅੰਗੂਠੀ ਦਾ ਨਾਗਦਦਾ ਕੋਈ ਕੁਸ਼ ਇਹ ਜੰਤਰ ਨਹੀਂ ਸਭ ਇਹ ਕੋਈ ਜੰਤਰ ਕੋ ਹੈ ਨਾ ਰਾਗ ਹੈ ਨਾ ਰੰਗ ਹੈ ਨਾ ਰਗ ਹੈ ਨ ਰਗ ਹੈ ਨ ਰਾਗ ਦੇ ਵਿੱਚ ਕੋਈ ਰਗਤ ਹੈ ਤੂੰ ਰਾਗ ਨਹੀਂ ਹੈ ਰਾਗ ਰੂਪ ਨਹੀਂ ਹੈ ਨ ਰਾਗ ਦਾ ਰੰਗ ਹੈ ਰਾਗ ਦਾ ਰੰਗ ਆਵਾਜ਼ ਦਾ ਰੰਗ ਹੁੰਦਾ ਹੈ ਸ਼ਬਦ ਦਾ ਰੰਗ ਰਾਗ ਦਾ ਰੰਗ ਹੁੰਦਾ ਹੈ ਸ਼ਰੀਰ ਦਾ ਰੰਗ ਅੱਖਾਂ ਨਾਲ ਦੀਦੇ ਸ਼ਬਦ ਦਾ ਰੰਗ ਕੰਨਾਂ ਨਾਲ ਸੁਣਿਆ ਜਾਂਦਾ ਹੈ ਸ਼ਬਦ ਵਿੱਚ ਵੀ ਤਾਂ ਰੰਗ ਹੁੰਦਾ ਹੈ ਸ਼ਬਦ ਬਾਣੀ ਆਪਣਾ ਰੰਗ ਝੜ ਲਈ ਹੈ ਨਾ ਸ਼ਬਦ ਦਾ ਰੰਗ ਸ਼ਬਦ ਦਾ ਗਿਆਨ ਹੁੰਦਾ ਸ਼ਬਦ ਦੇ ਵਿੱਚ ਜੋ ਗਿਆਨ ਚਾਹੇ ਉਹ ਰਾਗ ਦਾ ਗਿਆਨ ਹੋਵੇ ਚਾਹੇ ਕਾਸੇ ਦਾ ਗਿਆਨ ਹੋਵੇ ਸ਼ਬਦ ਦੇ ਵਿੱਚ ਜੋ ਗਿਆਨ ਚਾਹੇ ਸੁਰ ਦਾ ਗਿਆਨ ਹੋਵੇ ਸੁਰ ਦੀ ਵੀ ਸਮਝ ਉਦਿਆ ਕੋਈ ਵੀ ਗਿਆਨ ਹੋਵੇ ਸ਼ਬਦ ਦੇ ਵਿੱਚ ਉਹ ਰੰਗ ਮਤ ਨਾ ਰੂਪ ਹੈ ਨਾ ਰੇਖ ਹੈ ਨਾ ਰੂਪ ਹੈ ਨਾ ਰੇਖ ਤੇਰਾ ਕੋਈ ਰੂਪ ਨਹੀਂ ਕੋਈ ਰੇਖਾ ਨਹੀਂ ਤੇਰੀ ਨਾ ਕਰਮ ਹੈ ਨਾ ਧਰਮ ਹੈ ਨਾ ਕਰਮ ਹੈ ਕੋਈ ਤੂੰ ਕਰਮ ਨਹੀਂ ਹੈ ਕੋਈ ਨਾ ਕੋਈ ਕਰਮ ਕਰਦਾ ਨਾ ਤੂੰ ਕਰਮ ਰੂਪ ਹੈ ਨਾ ਧਰਮ ਹੈ ਕਰਮ ਵੀ ਕੋਈ ਨਹੀਂ ਤੇਰਾ ਧਰਮ ਤਾਂ ਸਾਡਾ ਹੁੰਦਾ ਧਰਮ ਤਾਂ ਉਹਦਾ ਹੁੰਦਾ ਜਿਹੜਾ ਪੌੜੀਆਂ ਚੜ੍ਹ ਰਿਹਾ ਤੂੰ ਤਾਂ ਸਿਰੇ ਤੇ ਖੜਾ ਧਰਮ ਉਹਦਾ ਪੌੜੀਆਂ ਚੜ੍ਹਦੀਆਂ ਜਿਹੜਾ ਥੱਲੇ ਡਿਗੇ ਪੌੜੀਆਂ ਉਹਨੇ ਚੜ੍ਹ ਨਹੀਂ ਜਿਹੜੇ ਖੜੇ ਉੱਤੇ ਉਹਨੇ ਪੌੜੀਆਂ ਕੀ ਚੜ੍ਹਦੀਆਂ ਤਾਰੇ ਬਤਾ ਤਾਰਨ ਕਰਕੇ ਤੇਰੇ ਵੱਲ ਨੂੰ ਜਾ ਰਹੇ ਨੇ ਲੋਕ ਜਿਹੜੇ ਤੇਤੋਂ ਵਿਛੜੇ ਹੋਏ ਨੇ ਉਹ ਜਾ ਰਹੇ ਨੇ ਥੱਲੇ ਡਿੱਗ ਪਏ ਉੱਤੇ ਨੂੰ ਰਹੇ ਨੇ ਉੱਤੇ ਨੂੰ ਜਾਣਾ ਧਰਮ ਉਹਦਾ ਜਿਹੜੀ ਚਾਹੀ ਤੋ ਥੱਲੇ ਡਿੱਗੇ ਨਾ ਉਹ ਚਾਹੀ ਤੇ ਨੂੰ ਜਾ ਰਹੇ ਨੇ ਧਰਮ ਇਹ ਹੈ ਤੇਨੂੰ ਧਰਮ ਦੀ ਕੀ ਲੋੜ ਹੈ ਤੇਰਾ ਕੋਈ ਧਰਮ ਨਹੀਂ ਆ ਸਾਰੇ ਧਰਮ ਤੇਰੇ ਹੀ ਨੇ ਤੇਰੇ ਬਾਲੂਆਂ ਜਾ ਰਹਾ ਹੈ ਨਾ ਤੇਰੂ ਲੋਹਦੇ ਨੇ ਸਾਰੇ ਧਰਬ ਸਮਝ ਜਹੇ ਜੀ ਆ ਆਪਣੀ ਉਪੜੀ ਸਮਝ ਆਪਣੀ ਆਪਣੀਆਂ ਜਾਂਦੇ ਤੇਰੇ ਬਾਲੂ ਦੇ ਸਾਰੇ ਚਾਹੁੰਦੇ ਸਾਰੇ ਤੈਨੂੰ ਇਹਨੇ ਆਪ ਆਪਣੀ ਬੁੱਧ ਹੈ ਜੇਤੀ ਬੜਨਦ ਫਿਰ ਫਿਰ ਤੋਏ ਤੇਤੀ ਫਿਰ ਫਿਰ ਧਰਬ ਨੇ ਤੇਰਾ ਉਹ ਜਾਵਲੂ ਕਰਤਾ ਉਹ ਜੀ ਸੋਜੀ ਦੇਤੀ ਜਿੰਨੀ ਕੋਨਾ ਕੋ ਬੁੱਧੀ ਸੀ ਆ ਜਨਮ ਹੈ ਹੈ ਜਨਮ ਤੇਰਾ ਹੁੰਦਾ ਹੀ ਨਹੀਂ ਇਸ ਕਰਕੇ ਤੇਰਾ ਕੋਈ ਸਰੀਰ ਵੀ ਹੈ ਨਹੀਂ ਉਹ ਵੇਖ। ਵੇਖ ਵੀ ਕੋਈ ਨਹੀਂ। ਸਰੀਰ ਤੇ ਵੇਖਦਾ ਲੋੜ। ਜਿੰਨੇ ਸੰਸਾਰ ਦੇ ਧਰਮ ਦੇ ਵੇਖਨੇ ਕੋਈ ਵੀ ਵੇਖ ਤੇ ਨਹੀਂ। ਇਹ ਭਲੇਕਾ ਕਰਦਾ ਵੀ ਖਾਲਸਾ ਕਹੇ ਸਾਡਾ ਵੇਖ ਹੈ ਇਹ ਵੀ ਉਹਦਾ ਵੇਖ ਰਹੀ ਹੈ ਇਹ ਤਾਂ ਵਰਦੀ ਹੈ। ਇਹਦਾ ਸਰਪ੍ਰਸਤ ਹੈ ਬਈ ਅਸੀਂ ਸੱਚ ਦੇ ਝੰਡਾ ਬਰਦਾਰ ਹਾਂ। ਬਸ ਸੱਚ ਨੂੰ ਹਾਈਲਾਈਟ ਕਰਨਾ ਸੀ ਸੱਚੇ ਧਰਮ ਨੂੰ ਹਾਈਲਾਈਟ ਕਰਨਾ ਸੱਚੀ ਮਾਤਾਂ ਨੂੰ ਨਾਨਕ ਦੀ ਇਹ ਜਿਹੜੀ ਵੀ ਮਾਤਾਂ ਗੁਰਮਾਤਾਂ ਨਾਨਕ ਦੀ ਮਾਤਾਂ ਕਰ ਰਹੀ ਹੈ ਲੋਹਾਰ ਕਣਾਂ ਮਤ ਲਈ ਹੈ ਮਤ ਪਰਮੇਸ਼ਰ ਦੀ ਹੈ ਨਾਨਕ ਨੇ ਮਤ ਧਾਰਨ ਕੀਤੀ ਹੈ ਕਬੀਰ ਨੇ ਵੀ ਧਾਰਨ ਕੀਤੀ ਹੈ ਸਾਰਿਆਂ ਨੇ ਮਤ ਲਈ ਹੈ ਜੇ ਮਾਤਾ ਲਈ ਜਾਇਦੇਵ ਮਤਲਬ ਨਹੀਂ ਹੈ ਨਾ ਉਸ ਜੇ ਨਾ ਤਾਤ ਹੈ ਨਾ ਮਾਤਾ ਹੈ ਨਾ ਤਾਤ ਹੈ ਨਾ ਮਾਤਾ ਨਾ ਕਿਸੇ ਦਾ ਪਿਓ ਨਾ ਕਿਸੇ ਦੀ ਮਾਂ ਹੈ ਨਾ ਤੇਰਾ ਬਾਪ ਹੈ ਕੋਈ ਤੇਰਾ ਵੀ ਮਾਂ ਪਿਓ ਨਹੀਂ ਤੂੰ ਵੀ ਕਿਸੇ ਦਾ ਬਾਪ ਪਿਓ ਨਹੀਂ ਇਹ ਜਾ ਵਾਹ ਪਿਓ ਜਾਇਜਾ ਸੰਸਾਰ ਹੁੰਦਾ ਅਸਲ ਦੇ ਵਿੱਚ ਜੇ ਕਿਸੇ ਨੂੰ ਕਹੀਏ ਨਾ ਆਤਮਾ ਦੂਏ ਦਾ ਵਾਪੇ ਹੋਣੀ ਹੁੰਦੀ ਕੋਈ ਵੀ ਪਰਮੇਸ਼ਰ ਵੀ ਕਿਸੇ ਆਤਮਾ ਦਾ ਵਾਪੇ ਹੋਣੀ ਇਹ ਵੀ ਗਲਤ ਹੈ ਜੋ ਸਭ ਦੀ ਬਰਾਬਰ ਹੈ ਜੇ ਅਸੀਂ ਨੂੰ ਕਹਿੰਦੇ ਤੂੰ ਮੇਰਾ ਪਤਾ ਤਾ ਤੂੰ ਉहां पे ਰਹਾਤਾ ਆਪਣੇ ਅੰਦਰਲੇ ਨੂੰ ਕਹਿੰਦੇ ਇਹ ਗੱਲ ਕਿਸ ਬਾਹਰ ਦੀ ਕਹਿੰਦੇ ਦਾੜ ਜਿਹਾ ਹੋਈ ਏ ਜੇ ਤਾ ਦਾੜ ਹੋਈ ਏ ਉਹ ਹੀ ਪਤਾ ਇਹਦਾ ਬੂੜ ਇਹਦਾ ਪਤਾ ਮਤਾ ਇਹ ਭਲੇਖਾ ਨਹੀਂ ਹੋਣਾ ਚਾਹੀਦਾ ਕਿ ਪਰਮੇਸ਼ਰ ਪਿਤਾ ਮਾਤਾ ਹੈ ਇਹ ਗਲਤ ਹੈ ਪੁਰਦਾ ਸੋਚੀ ਦਿੱਤੀ ਹੈ ਪਰਮੇਸ਼ਰ ਨਾਲ ਤਾਂ ਵੀ ਤੇਰਾ ਮਾਤਾ ਪਿਤਾ ਕੌਣ ਸੰਸਾਰੀ ਮਾਤਾ ਪਿਤਾ ਹੈ ਨਹੀਂ ਆਪਣਾ ਮੂਲ ਪਛਾਣ ਦੇਖੋ ਕਿਸੇ ਵੀ ਟਾਣੀ ਦਾ ਸ਼ਾਖਾ ਦਾ ਮਾਤਾ ਪਿਤਾ ਕੌਣ ਦਾ ਮੂਲੇ ਹੁੰਦਾ ਨਾ ਉਹਦਾ ਮੂਲੇ ਮਾਤਾ ਪਿਤਾ ਹੁੰਦਾ ਜਿਹੜੀ ਉਹਦੀ ਜੜ ਹੈ ਉਹੀ ਮਾਤਾ ਪਿਤਾ ਹੈ ਜਰ ਤੂੰ ਬੁੱਟਿਆ ਰ ਕੋਈ ਪਸਬੂਲ ਹੈ ਮਾਤਾ ਪਿਤਾ ਪਰਮੈਸ਼ਾ ਦੀ ਮਾਤਾ ਪਿਤਾ ਹੋ ਸਕਦਾ ਕਿਸੇ ਦਾ ਉਹ ਹੋਰ ਫਕਸ਼ਾ ਨਾਲਾ ਇੱਥੇ ਅੱਗੇ ਵੀ ਫਰਕ ਪੈ ਜੂਗਾ ਤੇ ਮਾਤਾ ਪਿਤਾ ਕਹੀਏ ਕਿਵੇਂ ਮਾਤਾ ਪਿਤਾ ਕਿਵੇਂ ਜੋਤ ਪੈਦਾ ਕੀਤੀ ਇਹ ਤਾਂ ਕੁਝ ਪਾਸੇ ਜਾਗੇ ਨਹੀਂ ਉਹਨਾਂ ਨੂੰ ਜਗਾ ਰਹੇ ਨੇ ਬਾਕੀ ਉਹਨਾਂ ਦੀ ਜਿਹੜੀ ਇਕੱਠੀ ਕਵਾਜ ਸਮੁੱਚੀ ਹੁਕਮ ਉਹਦਾ ਨੂੰ ਪਰਮੈਸ਼ਾ ਔਰ ਗਾਨਿਆ ਪਰਮ ਈਸ਼ਵਰ ਈਸਰ ਕੱਲੇ ਕੱਲੇ ਨੇ ਸਾਰੇ ਵਕਤ ਲੈ ਈਸਰ ਲਬਦਾ ਗਾਵੜ ਤੋਂ ਤੂੰ ਈਸਰ ਵਰਤੂ ਦੇਵੀ ਸੋਣ ਤੇਰੇ ਸਦਾ ਸਵਾਰੇ ਜਿਹੜੇ ਸਵਾਰੇ ਹੋਏ ਨੇ ਉਹੀ ਤੇਨੂੰ ਕਹਉਂਦੇ ਨੇ ਬਾਕੀ ਦੀ ਗੌਂਦੇ ਭਗਤ ਸਾਰੇ ਈਸਰ ਨੇ ਭਗਤ ਸਾਰੇ ਬ੍ਰਹਮਾਨ ਨੇ ਭਗਤੇ ਸਾਰੇ ਦੇਵੀ ਨੇ ਦੇਵੀ ਆਪਕੋ ਅਤੀ ਦੇਵੀ ਹੋਰ ਕੀ ਹੈ ਲਾਵਣ ਤੋਂ ਨੂੰ ਈਸ਼ਰ ਬ੍ਰਹਮਾ ਦੇਵੀ ਈਸ਼ਰ ਕਹ ਲੋ ਬ੍ਰਹਮਾ ਕਹ ਲੋ ਚਾਹੇ ਦੇਵੀ ਕਹ ਲੋ ਕੋਈ ਗੱਲ ਹੈ ਸੋਹਣ ਤੇਰੇ ਸਦਾ ਸਮਾਰੇ ਜਿਹੜੇ ਸੋਹ ਰਹੇ ਨੇ ਸੱਚਖੰਡ ਦੇ ਵਿੱਚ ਤੇ ਸਦਾ ਹੀ ਸਮਾਰੇ ਹੋਏ ਨੇ ਜਿਹੜੇ ਤੇਰੇ ਸਦਾ ਵਾਸਤੇ ਸਮਾਰਦੇ ਆਹ ਹਰ ਤੇ ਦਾ ਉਹ ਦੇਵੀ ਨਾਲ ਆਇਆ ਹੋਇਆ ਜਬਜੀ ਸਾਹਿਬ ਦੇ ਇਹਨਾਂ ਨੂੰ ਨਹੀਂ ਪਤਾ ਵੀ ਦੇਵੀ ਘਰ ਆ ਗਿਆ ਕੀ ਹੋ ਗਿਆ ਕੀ ਨਹੀਂ ਹੋ ਗਿਆ ਦੇਵੀ ਤਾਂ ਪਹਿਲਾਂ ਆ ਗਿਆ ਉਹ ਦੇਵੀ ਨੂੰ ਕਿੱਥੇ ਲੈ ਕੇ ਜਾਓਗੇ ਉਹ ਦੇਵੀ ਆ ਆਵਰ ਤੋਂ ਨੂੰ ਈਸਰ ਬਰਮਾ ਦਾ ਨਾ ਨਾ ਰਹਣਾ ਨਾ ਰਹੇ ਉਹਦਾ ਨਾਮ ਹੈ ਦੋਏ ਨਾਉਰੇ ਦੇ ਵੀ ਵੀਰ ਉਹ ਈਸਰ ਬਰਮਾ ਵੀ ਉਹਦੇ ਹੀ ਲੋਕ ਦੇਵੀ ਕਾ ਦਾ ਸਰਫ ਈਸਰ ਬਰਮਾ ਕਾ ਈਸਰ ਬਰਮਾ ਤਾਂ ਆਇਆ ਕਿਸੇ ਨੂੰ ਕੋਈ ਤੇਰ ਹੀ ਰਿਆ ਜਾਂ ਕਿਸੇ ਨੂੰ ਗਾਲ ਦੇ ਰਿਆ ਦੇਵੀਏ ਠੀਕ ਦੇ ਵੀ ਦੇਣ ਵੇਲੇ ਆਨ ਦੇਣ ਵੇਲੇ ਦੇ ਵੀ ਹੈ ਦੇਵਾ ਦੇਵੀ ਦੇਵਾ ਬਕਰ ਦੇਣ ਵਾਲਾ ਦੇਵੀ ਦੇਣ ਵਾਲੀ ਪਰਵਾਨ ਦਾ ਮਿੱਟੀ ਕਾ ਲਾ ਲੈ ਮਿੱਟੀ ਮਾਟੀ ਕਾ ਕਰਦੇਵਾ ਦੇ ਤੁਸੀਂ ਤਾਂ ਮਿੱਟੀ ਦੇ ਬਣਾ ਲੈ ਮਿੱਟੀ ਦਾ ਤੁਹਾਨੂੰ ਕੀ ਦੱਸਦੇਵਾ ਦੇ ਵੀ ਉਹਨਾਂ ਨੂੰ ਤਾਂ ਬਹੂ ਵੀ ਤੁਹਾਨੂੰ ਕਾਫੇ ਲਾਉਣਾ ਪੂਰਾ ਉਹਨਾਂ ਨੂੰ ਖੋਖਣ ਅਕਿਆਲ ਅਖੰਡ ਰੂਪ ਹੈ ਅਖਿਆਲ ਅਖੰਡ ਰੂਪ ਹੈ ਅਖਿਆਲ ਅਪੂਰ ਰੂਪ ਹੈ ਅਪੂਰ ਅਖਿਆਲ ਦੇ ਕੋ ਖਿਆਲ ਨਾ ਲੱਗੇ ਕੁੜਦੂ ਨਾਲ ਲੱਗਦਾ ਖਿਆਲ ਉਹ ਖਿਆਲ ਖਿਆਲ ਜਦੋਂ ਰਹਤ ਹੋਣਾ ਨਾ ਤੇਰੇ ਕੋਈ ਕਲਪਨਾ ਹੁੰਦੀ ਹੋਈ ਨਹੀਂ ਸੁੱਨ ਸਮਾਧ ਹੋਣਾ ਅਖੰਡ ਰੂਪ ਹੈ ਅਖੰਡ ਰੂਪ ਹੈ ਉਹ ਵੀ ਤੂੰ ਦੇ ਤੋਰ ਦੌਰੂਪ ਨੇ ਤੇਰੇ ਅਕੇ ਹਲਗਨਡ ਰੂਪੀ ਗਾਂ ਖਿਆਲ ਵੀ ਆ ਜਾਣਾ ਸਹਿਜ ਸਮਾਦ ਦੇ ਵਿੱਚ ਖਿਆਲ ਰੂਪ ਹੈ ਅਖੰਡ ਰੂਪ ਹੈ ਸੋਨ ਸਮਾਦ ਦੇ ਵਿੱਚ ਉਹ ਖਿਆਲ ਅਖੰਡ ਰੂਪ ਸਹਿਜ ਸਮਾਦ ਦੇ ਵਿੱਚ ਖਿਆਲ ਹੈ ਪਰ ਖਿਆਲ ਪਰ ਪੁਕਾਰਦਾ ਕਿਸੇ ਵਾਸਤੇ ਹੈ ਪਰ ਵਾਸਤੇ ਆਪਣੇ ਵਾਸਤੇ ਨਹੀਂ ਸਾਡੇ ਜਿਹੜੇ ਖਿਆਲ ਨੇ ਖੁਦਗਰਜ਼ੀ ਦੇ ਆਦਮੀ ਦੇ ਉਹਦਾ ਖੁਦਗਰਜ਼ੀ ਦਾ ਖਿਆਲ ਨਹੀਂ ਹੈ ਖੁਦਗਰਜ਼ੀ ਦੇ ਖਿਆਲ ਖੰਡਤ ਹੁੰਦੇ ਨੇ ਪਰ ਦਾ ਖਿਆਲ ਖੰਡਤ ਨਹੀਂ ਹੁੰਦਾ ਹੁੰਦਾ ਅੱਗੇ ਆਉਗਾ ਹਾਂ ਅਸ਼ੇਧ ਹੈ ਅਪੇਧ ਹੈ ਅਸ਼ੇਧ ਹੈ ਅਪੇਧ ਹੈ ਬ੍ਰਿਕੀਆਂ ਬਹੁਤਿਆਂ ਜ਼ਿਆਦਾ ਨੇ ਦੇ ਵਿੱਚ ਉੱਥੇ ਨਾ ਖਿਆਲ ਨਬਜ਼ ਨੂੰ ਆ ਗਿਆ ਆ ਅਖੰਡ ਰੂਪ ਹੈ ਜਦ ਖਿਆਲ ਹੈ ਉਹ ਵੀ ਖੰਡ ਰੂਪ ਹੈ ਦੋ ਆਗੇ ਖਿਆਲ ਵੀ ਆ ਖਿਆਲ ਵੀ ਛੋਟੇ ਜਿਹੇ ਆਦਮੀ ਸਹਿਜ ਆਦਮੀ ਛੋਟੇ ਜਿਹੇ ਸਮਾਧਾ ਖਿਆਲ ਹੈ ਜਸਾ ਸਬਾਦ ਸਸਾਏ ਸਭ ਜਗ ਸਹਜ ਉਪਾਇਆ ਜਸਾ ਇਹ ਰੂਪ ਇਹ ਵਿਚ ਸੰਸਾਰੋਂ ਪਾਇਆ ਫੇ ਤਾਂ ਖਿਆਲ ਹੈ ਸਾਰਿਆਂ ਦਾ ਖਿਆਲ ਨਹੀਂ ਰੱਖਦਾ ਸਾਰਿਆਂ ਦਾ ਖਿਆਲ ਨਹੀਂ ਰੱਖਦਾ ਪਰ ਉਹ ਖਿਆਲ ਰੂਪ ਚ ਹੈ ਉਹ ਵੀ ਅਖੰਡ ਹੈ ਜਿਹੜਾ ਉਹਦੀ ਸੋਚ ਨੂੰ ਕੋਈ ਖੰਡਨਤ ਨਹੀਂ ਕਰ ਸਕਦਾ ਜੋ ਚਾਹਦਾ ਹੋ ਜਾਂਦਾ ਹੈ ਜਦ ਖਿਆਲ ਨਹੀਂ ਹੁੰਦਾ ਜਾਦੂ ਦੀ ਜੋਤ ਜਾਦੂ ਦਾ ਧਿਆਨ ਕੋਈ ਤੋੜ ਨਹੀਂ ਸਕਦਾ ਹੁਣ ਜੋ ਕਰਨਾ ਚਾਹੁੰਦਾ ਉਹਨੂੰ ਕੋਈ ਰੋਕ ਨਹੀਂ ਸਕਦਾ ਹੁਣ ਜੋ ਚ ਕਰਨਾ ਚਾਹੁੰਦਾ ਉਹਨੂੰ ਕੋਈ ਰੋਕ ਨਹੀਂ ਸਕਦਾ ਜਦੋਂ ਸਤੂ ਸਬਾਜ ਹੋ ਜਾਂਦਾ ਉਹਨੂੰ ਫਿਰ ਕੋਈ ਜਗਾ ਨਹੀਂ ਸਕਦਾ ਅਛੇਦ ਹੈ ਅਭੇਦ ਹਨ ਅਜਿਹੜੇ ਹੁਣ ਸੋਨੇ ਦੇ ਬਾਦ ਨੂੰ ਜਗਾਵੇ ਕੌਣ ਤੈਨੂੰ ਜਗਦੇ ਨਹੀਂ ਦੋ ਰੂਪ ਹੁੜ ਵੀ ਹੈ ਜੇ ਨਾ ਉਹ ਸੋਨੇ ਵੀ ਨੇ ਸੈਜ ਵੀ ਨੇ ਅਛੇਦ ਹੈ ਅਭੇਦ ਹਨ ਅਛੇਦ ਹਨ ਅਭੇਦ ਹਨ ਅਛੇਦ ਹਨ ਨਹੀਂ ਅਛੇਦ ਜਾ ਸਕਦਾ ਤੈਨੂੰ ਤੇਰੇ ਚ ਸੁਰਾਖ ਨਹੀਂ ਕੀਤਾ ਜਾ ਸਕਦਾ ਤੇਰੇ ਤੇ ਕੋਈ ਅਸਰ ਨਹੀਂ ਪਾਇਆ ਜਾ ਸਕਦਾ ਜੇ ਮ ਬਾਹਰ ਤੈਨੂੰ ਬਾਹਰ ਕੋਈ ਵੰਨ ਲਵੇਰੀ ਹੋ ਸਕਦਾ ਸੱਚ ਤੇ ਕੋਈ ਤਰਕ ਨਹੀਂ ਕੰਮ ਕਰਦਾ ਕੋਈ ਤੀਲ ਨਹੀਂ ਕੰਮ ਕਰਦਾ ਕੋਈ ਹਥਿਆਰ ਨਹੀਂ ਕੰਮ ਕਰਦਾ ਨ ਰੰਗ ਹੈ ਨ ਭੂਪ ਹੈ ਨ ਰੰਗ ਹੈ ਨ ਤੂੰ ਰਾਜਾ ਹੈਂ ਪਰ ਰੰਗ ਕਰਗਾਲ ਹੈ ਪਰੇ ਹੈ ਪਵਿੱਤਰ ਹੈ ਪਰੇ ਹੈ ਪਵਿੱਤਰ ਹੈ ਗੁਰੂ ਕੀ ਬੁੱਧੀ ਤਾਂ ਪਰਿਆ ਤੂੰ ਉਹ ਲੋਕ ਕੀ ਬੰਦੇ ਨੇ ਜੋ ਸਭ ਔਰ ਪਵਿੱਤਰ ਹੈ। ਐਨਾ ਪਵਿੱਤਰ ਆਂਖ ਮਨੁੱਖੀ ਬੁੱਧੀ ਉਹਨੇ ਪਵਿੱਤਰ ਹੋਏ ਨਹੀਂ ਸਕਦੀ। ਹੈ ਨਹੀਂ। ਹੋ ਸਕਦੀ ਹੈ ਹੈ ਨਹੀਂ। ਕਿਹੜੀ ਪਵਿੱਤਰ ਹੋ ਜਾਂਦੀ ਹੈ ਉਹ ਵੀ ਨਹੀਂ ਸਮਝ ਸਕਦੀ ਉਹ ਵੀ ਪੁਨੀਤ ਹੋ ਕੇ ਸਮਝਦੀ। ਪੁਨੀਤ ਹੈ, ਪੁਰਾਣ ਹੈ। ਆਹ। ਪਵਿੱਤਰ ਹੈ, ਪਵਿੱਤਰ ਦੇ ਨਾਲ ਪੁਨੀਤ ਹੈ। ਫਿਰ ਪੁਰਾਣੇ ਪੁਰਾਣ ਦਾ ਮਤਲਬ ਪੁਰਾਣਾ ਨਹੀਂ ਹੁੰਦਾ ਪੁਰਾਣ ਦਾ ਮਚਰੰਕਾਲ ਤੋਂ ਪੁਰਾਣਾ ਹੁੰਦਾ ਜੋ ਆਦ ਤੋਂ ਲੈ ਕੇ ਕਹਾਣੀਆਂ ਚੱਲੀਆਂ ਆਉਂਦੀਆਂ ਨੇ ਪੁਰਾਣਾ ਕਹਾਣੀਆਂ ਕਹਿੰਦੇ ਨੇ ਵੇਦਾਂ ਵਿੱਚ ਦੇ ਜਿਹੜੀਆਂ ਉਹਨਾਂ ਨੇ ਪੁਰਾਣ ਲਿਖ ਲੈਣ ਉਹ ਕਿਤਾਬਾਂ ਦਾ ਪੁਰਾਣ ਲਿਖ ਲਿਆ ਐ ਲਿਖ ਲਿਆ ਵੀ ਜਿਹੜਾ ਪੁਰਾਣੇ ਟਾਈਮ ਦੀਆਂ ਸਾਖੀਆਂ ਸੁਣਦੇ ਆਏ ਸਾਡੇ ਪੁਰਾਣਾ ਲੋਕੀ ਦੀ ਲਿਖਿਆ ਹੋਇਆ ਪੁਰਾਣਾ ਹੋ ਜਾਂਦਾ ਜਿਹੜਾ ਉਹ ਹੋਰ ਹੁੰਦਾ ਚਿਰੰਕਾਲ ਲਿਖਿਆ ਚਿਰੰਕਾਲ ਤੋਂ ਜਿਹੜੇ ਆਦੋਂ ਤੋਂ ਲੈ ਕੇ ਚੱਲੀ ਹੋਦੀ ਹੈ ਅਗਾਂਜ ਤੋੜਿਆ ਜਾ ਸਕਦਾ ਤੈਨੂੰ ਨਹੀਂ ਭੰਨਿਆ ਜਾ ਸਕਦਾ ਤੈਨੂੰ ਕਰੀਮ ਹੈ ਕੁਰਾਨ ਹੈ ਕਰੀਮ ਹੈ ਕੁਰਾਨ ਉਕਰੀਵੇ ਸਾਰਿਆਂ ਤੇ ਕਿਰਪਾ ਕਰਨ ਵਾਲਾ ਕੁਰਾਨ ਕਹਿੰਦੇ ਨੇ ਅਸਲ ਦੇ ਵਿੱਚ ਬਜ਼ੂਰ ਗੁਰੂ ਜਿਹੜਾ ਸਿਆਣਾ ਸਿਆਣੇ ਨੂੰ ਬੈਦ ਰਸ ਸਿਆਣੇ ਨੂੰ ਉਹ ਉਵਰ ਦੀ ਗੱਲ ਨਹੀਂ ਹੈ ਅਕਲ ਦੀ ਗੱਲ ਹੈ ਕੁਰਾਨ ਦੇ ਜਿਹੜੇ ਨੇ ਲੋ ਐਸੀ ਸਿੱਖਿਆ ਜਿਹਦੇ ਮੁਕਾਬਲੇ ਦੀ ਸਿੱਖਿਆ ਕੋਈ ਹੋਵੇ ਨਹੀਂ ਉਹ ਕੁਰਾਨ ਕਹਿੰਦੇ ਐਸਾ ਗਿਆਨ ਕੁਰਾਨ असल ਦੇ ਵਿੱਚ ਬੋਲਣ ਤੋਂ ਬੜਿਆ ਹੈ ਕੂ ਬੜੇ ਹੁੰਦਾ ਬੋਲੋ ਕੁੜਾ ਕੁੜਾ ਨਾ ਬੋਲੋ ਤੂੰ ਬੋਲ ਕੇ ਦੱਸਦਾ ਹੈ है ਆਵਾਜ਼ ਹੈ ਕੁੜਾ ਹੁੰਦਾ है। ਸੰਸਾਰ 'ਚ ਤੇਰੀ ਆਵਾਜ਼ ਆਉਂਦੀ ਹੈ ਤੇਰੇ ਗਉਣ ਦੇ ਬੋਲਣ ਦੀ ਆਵਾਜ਼ ਸੰਸਾਰ 'ਚ ਫੈਲਦੀ ਫੈਲੀ ਹੋਈ ਹੈ ਕੁਰਾਨ ਹੈ ਦਾ ਮਤਲਬ ਇਹ ਜਿਹੜੀ ਆਵਾਜ਼ ਸੰਸਾਰ ਦੇ ਵਿੱਚ ਫੈਲ ਕੇ ਸੰਸਾਰ ਨੂੰ ਗਿਆਨ ਦੇ ਰਹੀ ਹੈ ਉਹ ਕੁਰਾਨ ਕੁਰਾਨ ਦੀ ਆਵਾਜ਼ ਵੀ ਇਹੀ ਹੈ ਉਹ ਵੀ ਕਹਿੰਦੇ ਵੀ ਉਤਰੀ ਹੋਈ ਹੈ ਹੈ ਅਪਾਲ ਹੈ ਅਕਾਲ ਹੈ ਕਾਲ ਤੋਂ ਪਰੇ ਹੈ ਅਪਾਲ ਹੈ ਅਪਾਲ ਤੇਰੀ ਕੋਈ ਪਾਲਣਾ ਨਹੀਂ ਕਰਦਾ ਖਿਆਲ ਹੈ ਅਖੰਡ ਹੈ ਆ ਦੇਖੋ ਖਿਆਲ ਉਡ ਖਿਆਲ ਆ ਗਿਆ ਖਿਆਲ ਹੈ ਖਿਆਲ ਕਿਹਾਂ ਕੁਰਾਨ ਹੈ ਖਿਆਲ ਹੈ ਅਖੰਡ ਹੈ ਖੰਡ ਹੈ ਇਹ ਖਿਆਲ ਵੀ ਹੈ ਨਾ ਤੂੰ ਫਿਰ ਵੀ ਤੈਨੂੰ ਕੋਈ ਖੰਡਲੀ ਕਰ ਸਕਦਾ ਆ ਵੀ ਅਖੰਡ ਹੈ ਖਿਆਲ ਵੀ ਅਖੰਡ ਹੈ ਜੇ ਤੂੰ ਕੁਝ ਸੋਚਣਾ ਚਾਹਣਾ ਉਹਨੂੰ ਵੀ ਕੋਈ ਰੋਕ ਨਹੀਂ ਸਕਦਾ ਉਹਦਾ ਵੀ ਕੋਈ ਜਵਾਬ ਨਹੀਂ ਜੇ ਤੇਰੀ ਵਰਤੀ ਟਿੱਕੀ ਹੋਈ ਆ ਉਹਨੂੰ ਵੀ ਕੋਈ ਤੋੜ ਨਹੀਂ ਸਕਦਾ ਟਿੱਕੀ ਵਰਤੀ ਨੂੰ ਤੋੜ ਨਹੀਂ ਸਕਦਾ ਜੋ ਕੁਝ ਕਰਨਾ ਚਾਹਣਾ ਸੋਚਣਾ ਚਾਹਣਾ ਉਹਨੂੰ ਕੋਈ ਭਾਕ ਦੀ ਕਰਦਾ ਉਹਦੇ ਪੁਰੇ ਕੋਈ ਰਕਾਬ ਨਹੀਂ ਆ ਸਕਦੀ ਉਹਦੇ ਪੁਰੇ ਕੋਈ ਰਕਾਬ ਨਹੀਂ ਨਾ ਰੋਗ ਹੈ ਨਾ ਸੋਗ ਹੈ ਨਾ ਰੋਗ ਹੈ ਨਾ ਸੋਗ ਹੈ ਰੋਗ ਜੋ ਹੋ ਤੋ ਪਰੇ ਨਾ ਭੇਦ ਹੈ ਨਾ ਭੰਡ ਹੈ ਨਾ ਭੇਦ ਹੈ ਨਾ ਭੰਡ ਹੈ ਤੇਰੀ ਭੰਡੀ ਕੀਤੀ ਜਾ ਸਕਦੀ ਹੈ ਪੰਡਾਸਾਲ ਦੇ ਵਿੱਚ ਤੇਰੀ ਭੰਡੀ ਕੀਤੀ ਜਾ ਸਕਦੀ ਲਿਖਿਆ ਪੰਡਾ ਭੰਡੀ ਕਰਨ ਵਾਲਾ ਹੁੰਦਾ ਕਿਸੇ ਤੇ ਭੰਡੀ ਨਹੀਂ ਕਰਦਾ ਤੂੰ ਬੁਰਾ ਨਹੀਂ ਕਹ ਨਾ ਕਰ ਕੁਰਬਾਨੀ ਜਿਹੜਾ ਕੁਝ ਕਹਿੰਦੀ ਹੈ ਨਾ ਇਹਨੂੰ ਬੁਰਾ ਨਾ ਮੰਨਿਓ ਇਹ ਬੁਰਾ ਨਹੀਂ ਕਹਿੰਦੀ ਕਿਸੇ ਨੂੰ ਪੱਡੀ ਨਹੀਂ ਕਿਤੇ ਦੇ ਦੇਸ ਦੀ ਪੱਡੀ ਪ੍ਰਚਾਰ ਨਹੀਂ ਕਰਦਾ ਤੂੰ ਤੇਰਾ ਜਿਹੜਾ ਵਿਦੇਸ਼ ਹੈ ਪੱਡੀ ਪ੍ਰਚਾਰ ਨਹੀਂ ਕਰਦਾ ਕਿਸੇ ਦੀ ਪੱਡੀ ਪ੍ਰਚਾਰ ਨਹੀਂ ਆਇਆ ਹੈ ਕੁਰਮਾਨੀ ਕੁਰਮਾਨੀ ਦਾ ਸੇਧ ਦੇ ਰਹੀ ਉਹਨਾਂ ਨੂੰ ਭੁੱਲਿਆ ਹੋਇਆ ਨੂੰ ਭੁੱਲਿਆ ਨੂੰ ਸਹੀ ਰਸਤਾ ਦੱਸ ਰਹੀ ਹੈ ਪੱਡੀ ਪ੍ਰਚਾਰ ਨਹੀਂ ਹੁੰਦਾ ਰਾਹ ਉਹ ਨੂੰ ਰਾਹ ਦੱਸਣ ਈਮਾਨਦਾਰੀ ਨਾਲ ਜਿਹੜਾ ਚਾਹੁੰਦਾ ਹੈ ਪਰਮੇਸ਼ਰ ਨੂੰ ਮਿਲਣਾ ਔਰ ਜਾ ਰਿਹਾ ਥੋੜਾ ਜਿਹਾ ਰਸਤਾ ਠੀਕ ਨਹੀਂ ਉਹਨੂੰ ਪਤਾ ਜੇ ਉਹਨੂੰ ਠੀਕ ਰਸਤਾ ਦੱਸ ਦਿੱਤਾ ਜਾਵੇ ਵੱਡੀ ਪ੍ਰਚਾਰ ਨਹੀਂ ਹੁੰਦਾ ਜੋ ਵੱਡੀ ਪ੍ਰਚਾਰ ਬੰਦਾ ਹੈ ਤਾਂ ਫਿਰ ਮੂਰਖ ਫਿਰ ਉਹ ਫਿਰ ਉਹ ਮਿਲਣਾ ਨਹੀਂ ਜਾਂਦਾ ਫਿਰ ਉਹ ਕੁਝ ਹੋਰੇ ਜਾਂਦਾ ਫਿਰ ਉਹਦੀ ਇੱਛਾ ਵੀ ਕੁਝ ਹੋਰ ਹੈ ਜੇ ਭੋਲੇ ਨੂੰ ਰਾਹ ਦੱਸੀਏ ਔਰ ਆਓ ਕਹਿੰਦਾ ਮੈਂ ਤਾਂ ਐਸੇ ਜਾਣਾ ਜਿੱਧਰ ਜਾਂਦਾ ਤੈਨੂੰ ਕੀ ਲੱਗੇ ਗਲਤ ਵੀ ਇਹ ਮੈਂ ਤਾਂ ਜਾਊਗਾ ਫਿਰ ਉਹ ਮਿਲਣਾ ਨਹੀਂ ਜਾਂਦਾ ਜਿਹੜੇ ਮਿਲਣਾ ਨਹੀਂ ਚਾਹੁੰਦੇ ਅਸਲੀ ਇਮਾਨਦਾਰ ਵੀ ਆਪਣੇ ਤਰਫ ਦੇ ਪ੍ਰਤੀ ਉਹ ਇਹਨੂੰ ਵੱਡੇ ਪ੍ਰਚਾਰ ਸਮਝਣਗੇ ਵੱਡੇ ਪ੍ਰਚਾਰ ਨਹੀਂ ਹੈ ਜਿਹੜੇ ਤਰਫ ਤੇ ਇਮਾਨਦਾਰ ਨਹੀਂ ਹੈਗੇ ਨਾ ਉਹ ਵੱਡੇ ਪ੍ਰਚਾਰ ਪਾਉਂਦੇ ਸਮਝਣ ਵੱਡੇ ਪ੍ਰਚਾਰ ਨਹੀਂ ਹੈ ਆਹ ਦਾ ਮਤਲਬ ਇਹ ਲਿਖਾਂ ਗਿਆ ਇਹਨੇ ਗਲਤ ਲਿਖਿਆ ਅਰਥ ਨਾ ਅੰਗ ਹੈ ਨਾ ਰੰਗ ਹੈ ਨਾ ਆਂਗ ਹੈ ਨਾ ਰੰਗ ਹੈ ਤੇਰਾ ਕੋਈ ਆਂਗ ਸਰੀਰ ਹੈ ਨਹੀਂ ਇਸ ਕਰਕੇ ਰੰਗ ਵੀ ਹੈ ਨਹੀਂ ਤੇਰਾ ਕੋਈ ਨਾ ਸੰਗ ਹੈ ਨਾ ਸਾਥ ਹੈ ਤੇਰੇ ਕੋਈ ਸੰਧ ਸਾਥ ਵੀ ਨਹੀਂ ਸੰਗ ਸਾਥ ਕੀ ਉਹਦਾ ਸਰੀਰ ਹੁੰਦਾ ਸਾਥ ਸਾਥ ਨਹੀਂ ਆ ਜੇ ਸੰਗ ਸੰਧ ਨਾਲ ਲੀਜੇ ਕੋਈ ਕਬੀਰ ਕਹਿ ਰਿਹਾ ਹੈ ਸਾਧੂ ਕੋ ਮਿਲਣਾ ਚਾਹੀਏ ਸੰਧ ਨਾਲ ਲੀਜੇ ਕੋਈ ਪੱਛੇ ਦੀ ਜੀ ਅੱਗੇ ਸੰਗ ਸਾਥ ਤਾਂ ਛੱਡਣੇ ਨੇ ਸਦੀ ਸਾਥੀ सगले ਤਜਾਈ ਹਰ ਕਾ ਨਾਮ ਰਦੇ ਨੇ ਸਾਥੀ ਸਗਲ ਤਰਾਈ ਜਿਹੜੇ ਤਰ ਜਾਣਗੇ ਤਰਨਾ ਚਾਹੁੰਦੇ ਨੇ ਉਹਦਾ ਠੀਕ ਹੈ ਸਭੀ ਸਾਥੀ ਨੇ ਨਹੀਂ ਉਹਨਾਂ ਨੂੰ ਛੱਡ ਦੇ ਫਿਰ ਆਇਆ ਨਾ ਕਹਿੰ ਸਾਰਿਆਂ ਨੂੰ ਲੈ ਕੇ ਜਾਣ ਉੱਤੇ ਖੜੀ ਮੈਂ ਤੂੰ ਵੀ ਮਾਂ ਫੜ ਕੇ ਕਿਸੇ ਵੀ ਸਭੀ ਸਾਥੀ ਸਗਲ ਤਰਾਈ ਜਿਹੜੇ ਤਰਨ ਵਾਲੇ ਨੇ ਉਹ ਸਭੀ ਸਾਥੀ ਨੇ ਪਰ ਉਹਦਾ ਸੰਗੀ ਸਾਥੀ ਕੋਈ ਨਹੀਂ ਉਹਦਾ ਤਰਿਆ ਹੋਇਆ ਆ ਇੱਕ ਤਨ ਰਹਿ ਇੱਕ ਤਰਿਆ ਹੋਇਆ ਤਨ ਵਾਲੇ ਦੇ ਸੰਗੀ ਸਾਥੀ ਹੈ ਤਰੇ ਹੋਏ ਦੇ ਨਹੀਂ ਉੱਤੇ ਉਹਦਾ ਸਾਰੇ ਕੋਈ ਨਹੀਂ ਸੰਗੀ ਸਾਥੀ ਉੱਤੇ ਕੋਈ ਸੰਗੀ ਸਾਥੀ ਨਾਲ ਦੁਆ ਹੁੰਦਾ ਸੰਗੀ ਸਾਥੀ ਨਾਲ ਹੁੰਦਾ ਤਾਂ ਦੁਆ ਨਹੀਂ ਹੈ ਕੋਈ ਪ੍ਰਿਆ ਹੈ ਪਵਿੱਤਰ ਹੈ ਪ੍ਰਿਆ ਹੈ ਪਵਿੱਤਰ ਹੈ ਸਭ ਦਾ ਪਿਆਰਿਆ ਤੂੰ ਸਾਰੇ ਤੈਨੂੰ ਪਿਆਰ ਕਰਦੇ ਨੇ ਪਵਿੱਤਰ ਹੈ ਕਿਉਂਕਿ ਤੂੰ ਪਵਿੱਤਰ ਹੈ ਪਵਿੱਤਰ ਜੀ ਨੂੰ ਸਾਰੇ ਪਿਆਰ ਕਰਦੇ ਹੀ ਉਹ ਤੇਰਾ ਹਿਰਦਾ ਪਵਿੱਤਰ ਹੈ ਇਸ ਕਰਕੇ ਤੇਰੇ ਨੂੰ ਸਾਰੇ ਲੋਕ ਪਿਆਰ ਕਰਦੇ ਪੁਨੀਤ ਹੈ ਪਰਮਾਤਮਾ ਹੈ ਪੁਨੀਤ ਹੈ ਪੁਨੀਤ ਹੁੰਦਾ ਚੌਥੀ ਡਿਗਰੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਪੁਨੀਤ ਕਦੋਂ ਹੁੰਦਾ ਪਵਿੱਤਰ ਹੁੰਦਾ ਜਿਆ ਪੂਰਾ ਹੋ ਜਵੇ ਪੁਰੀਤ ਹੁੰਦਾ ਜਾਂ ਸ਼ਬਦ ਪ੍ਰਗਟ ਹੋ ਜਵੇ ਪੁਰੀਤ ਦੇ ਵਿੱਚ ਬਰ ਸਰੂਪ ਹੈ ਉਹ ਕਿਆ ਹੈ ਪਵਿੱਤਰ ਦੇ ਵਿੱਚ ਆ ਜੋ ਪੂਰਾ ਹੈ ਕਿ ਤੀਜੀ ਡਿਗਰੀ ਦਾ ਪਵਿੱਤਰ ਹੈ ਪਵਿੱਤਰ ਪਵਿੱਤਰ ਪਵਿੱਤਰ ਹੋ ਗਿਆ ਨਾ ਪੂਰਨ ਬ੍ਰह्म ਹੈ ਪਰਮ ਬ੍ਰह्म ਨਹੀਂ ਹੈ ਪੁਰੀਤ ਪਰਮ ਹੁੰਦਾ ਹੈ ਦੇ ਵਿੱਚ ਲੀਨ ਹੋਇਆ ਹੋਇਆ ਪਰ ਬ੍ਰह्म ਰੂਪ ਪ੍ਰਾਤਮਾ ਪਰ रूप जब आत्मा पारब्रह्म का रूप हो जवे फिर प्रीत आत्मा जड़ी है ना पारब्रह्म का या रूप हो जवे फिर प्रीत हो जाती है पण ये तड़ाक का एदा खतरा है दुआ जन्म लेन दा प्रीत दा खतरा नहीं प्रीत खत्म प्रीत ज्योंदा ही सचखंड है साच्चिखांड ਨਿਰੰਕਾਰ ਪੂਰੀਤ ਨਿਰੰਕਾਰ ਹੈ ਪਵਿੱਤਰ ਨਿਰਆਕਾਰ ਹੈ ਉਹ ਜੋ ਨਿਰਆਕਾਰ ਹੈ ਨਿਰੰਕਾਰ ਨਹੀਂ ਨਿਰਆਕਾਰ ਤਾਂ ਹੋ ਗਿਆ ਸਿਰ ਤੋਂ ਤਾਂ ਵੱਖਰਾ ਹੋ ਗਿਆ ਸਿਰ ਤੋਂ ਮਨ ਨੂੰ ਕੱਢ ਕੇ ਆਪਣਾ ਇੱਕ ਹੋ ਗਿਆ ਨਿਰਆਕਾਰ ਹੈ ਉਹ ਕਰਦੀ ਨਿਰਆਕਾਰ ਵਾਲਾ ਹੁੰਦਾ ਹੈ ਨਿਰੰਕਾਰ ਨਹੀਂ ਹੋਇਆ ਉਹ ਗਿਆਨੀ ਗੁਰਨਾਹ ਦਰਕਾਰਾ ਦਰਕਾਰ ਨਹੀਂ ਬੜਿਆ ਦਰਕਾਰ ਸ਼ਬਦ ਰੂਪ ਚ ਗੁਰ ਸ਼ਬਦ ਸਮਾਵਾ ਵਰਨਾ ਜਾਣੇ ਕੋਈ ਇਹ ਸ਼ਬਦ ਦੇ ਵਿੱਚ ਲੀਨ ਹੋ ਗਿਆ ਦਰਕਾਰ ਪਰਮਾਤ ਹੈ ਪਰਮਾਤ ਦੋ ਅਸੰਲ ਦੇ ਵਿੱਚ ਪਰਮਾਰਥ ਰੂਪ ਪਰ ਪਰਬਾਰ ਧੁਕਦਾ ਦੂਜੇ ਦਾ ਭਲਾ ਕਰ। ਆਪਣਾ ਦਾ ਭਲੇ ਦੀ ਤਨ ਲੋੜੀ ਤੇਰਾ ਭਲਾ ਕੀ ਹੋਣਾ। ਪਰਪੁਕਾਰੀ ਪਰਪੁਕਾਰੀ ਹੈ ਇੱਕ ਹੈ। ਜੋ ਕੁਝ ਕਰ ਰਹੇ ਹੈ ਤੂੰ ਸਰਬ ਕੀ ਚਿੰਤਾ ਜਸਮਨ ਬਾਹੇ। ਦੂਜਿਆਂ ਦੀ ਚਿੰਤਾ ਤੈਨੂੰ ਪਰਵਾਰਤਾ ਦਰੇ। ਆਪਣੀ ਕੋਈ ਆਪਣਾ ਨਾ ਕੋਈ ਚਿੰਤਾ ਵਾਲੀ ਗੱਲ ਹੈ ਤੇ ਤੈਨੂੰ ਕਦੇ ਚਿੰਤਾ ਨਹੀਂ ਨਾ ਸੀਤ ਹੈ ਨਾ ਸੋਚ ਹੈ ਨਸੀਤ ਨਾ ਸੋਚ ਹੈ ਨਾ ਸੋਚ ਹੈ ਸੋਚ ਵੀ ਕੋਈ ਨਹੀਂ ਹੈ ਅਸੀਤ ਵੀ ਨਹੀਂ ਕੋਈ ਮਤਲਬ ਫਿਕਰ ਵੀ ਫਿਕਰ ਵੀ ਸੀਤ ਵੈਸੇ ਸੀਤਲਤਾ ਨੂੰ ਫਿਕਰ ਨੂੰ ਕਹਿੰਦੇ ਨੇ ਸੀ ਚਿੰਤਾ ਫਿਕਰ ਹੋਵੇ ਨਾ ਅੰਦਰ ਅੰਦਰ ਕਿਸੇ ਨੂੰ ਨਾ ਸੋਚ ਨਾ ਕੋਈ ਤੈਨੂੰ ਸੋਚ ਹੈ ਤੂੰ ਨਾ ਕਾਮ ਹੈ ਨਾ ਕਾਮ ਹੈ ਨਾ ਗਰਮੀ ਹੈ ਨਾ ਘਬਰਾਹਟ ਹੈ ਤੈਨੂੰ ਕੋਈ ਘਬਰਾਹਟ ਵੀ ਨਹੀਂ ਘਬਰਾਹਟ ਵੀ ਕੋਈ ਗਰਮੀ ਵੀ ਨਹੀਂ ਤੈਨੂੰ ਪ੍ਰੇਸ਼ਕ ਵੀ ਕੋਈ ਨਹੀਂ ਨਾ ਲੋਭ ਹੈ ਨਾ ਮੋਹ ਹੈ ਲੋਭ ਮੋਹ ਤੇ ਨਾ ਕਰੋਧ ਹੈ ਨਾ ਕਾਮ ਹੈ ਨਾ ਕਰੋਧ ਹੈ ਨਾ ਕਾਮ ਹੈ ਕਾਮ ਕਰੋਧ ਤੇ ਪਰੇ ਆ ਕਾਬਲੇ ਕੋਈ ਨਹੀਂ ਇੱਛਾ ਕੋਈ ਨਹੀਂ ਨਾ ਦੇਵ ਹੈ ਨਾ ਦੈਂਤ ਹੈ ਨਾ ਦੇਵ ਹੈ ਨਾ ਦੈਂਤ ਦੇਵ ਨਹੀਂ ਤੂੰ ਦੈਂਤ ਨਾ ਨਰਕੋ ਸਰੂਪ ਹੈ ਤਾ ਨਰਕੋ ਸਰੂਪ ਡਰ ਸਰੂਪ ਦੇ ਵਿੱਚ ਦੇਵ ਦੁੱਦ ਦੇ ਜਦ ਇਹ ਧੋ ਹੁੰਦੇ ਨਾ ਨਾਲ ਫਿਰ ਦੇਵ ਦੈਂਤ ਦੁੱਦ ਦਾਲ ਤਾਂ ਹੈ ਹੀ ਨਹੀਂ ਤੂੰ ਜਾਂ ਦਾਲ ਨਹੀਂ ਹੁੰਦੀ ਫਿਰ ਦੇਵ ਦੈਂਤ ਨਹੀਂ ਹੁੰਦੇ ਜਿੰਨਾ ਜਿਹੜਾ ਇੱਕਾਇਨਾ ਇੱਕ ਦੇਵਦਾਨ ਦੋ ਦੋ ਰ ਰਹਦੇ ਨੇ ਜਾਂ ਬਿਰਛ ਬਣ ਕੇ ਫਿਰ ਦੇਵਦਾਨ ਹੁੰਦੇ ਜਦ ਪੁਨੀਤ ਹੋ ਗਿਆ ਫਿਰ ਦੇਵਦਾਨਤ ਨਹੀਂ ਹੁੰਦੇ ਪੁਨੀਤ ਤੇ ਪਹਿਲਾਂ ਪਹਿਲਾਂ ਦੇਵਦਾਨ ਦੋਏ ਹੁੰਦੇ ਸਤੋਖੀ ਵਿੱਚ ਦੋਏ ਜੋ ਹੈਗੇ ਨੇ ਚੁੱਪ ਕਰੇ ਹੋਏ ਤੇ ਸ਼ਾਂਤ ਹੋਏ ਰਸੁਲਾ ਹੋਈ ਹੋਈ ਹੈ ਜੇ ਦਾਣਾ ਜਮਿਆ ਨਹੀਂ ਨਾ ਹੋਇਆ ਦੋਏ ਪੱਖ ਹੈਗੇ ਨੇ ਸੱਜਾ ਖਪਾ ਨਾ ਦਾਣਾ ਬੂਟਾ ਬਣ ਕੇ ਦੋਏ ਖਤਮ ਹੋ ਗਏ ਨਾ ਦੇਵ ਰਿਆ ਨਾ ਦੇਂਦ ਰਿਆ ਫੇਰ ਛੋ ਗਿਆ ਨਾ ਛਲ ਹੈ ਨਾ ਛਧਰ ਹੈ ਨਾ ਛੜਾ ਹੈ ਨਾ ਛਧਰ ਹੈ ਛਲ ਛਧਰ ਤੇਰੇ ਚ ਕੋਈ ਹੈ ਨਹੀਂ ਨਾ ਛਧਰ ਕੀ ਵਿਭੂਤ ਹੈ ਨਾ ਛਧਰ ਨਹੀਂ ਕੋਈ ਅਣਸਿਆ ਹੋਣ ਵਾਲੀ ਕੋਈ ਵਸਤੂ ਹੈ ਜੀ ਤੂੰ ਐਸੀ ਵਸਤੂ ਹੈ ਨਹੀਂ ਜੀ ਛਧਰ ਹੋ ਸਕੇ ਜਿਹੜੀ ਕੱਟੀ ਜਾ ਸਕੇ ਨਾ ਕਾਮ ਹੈ ਨਾ ਕਰੋਧ ਹੈ ਕਾਮ ਹੈ ਨਾ ਮੋਹ ਹੈ ਕਾਮ ਨਹੀਂ ਕਰੋਧ ਨਹੀਂ ਲੋਭ ਇਹਦਾ ਉਗਣ ਨੇ ਤੂੰ ਦਾ ਗੋਲਦ ਗੋਲ ਗੁਰਾਂ ਦਾ ਸਬੂਧਾ ਰਾਂ ਔਗਣ ਇਹ ਔਗਣ ਨਹੀਂ ਆਗੇ ਤੂੰ ਫਾਂ ਕਰ ਇਹ ਨਹੀਂ ਆਗਾ ਤੂੰ ਇਹ ਕਾਦੇ ਘੇਪਣ ਉਹ ਜਿਹੜੇ ਤਨੇ ਔਗਣ ਨੇ ਨਾ ਬ੍ਰਹਮਾ ਵਿਸ਼ਨੂ ਸ਼ਿਵ ਜਿਹੜੇ ਜੜਤੇ ਉਹ ਚੱਕ ਗੋਲੂ ਉਹਨਾਂ ਨੂੰ ਗੋਲ ਕਹਿੰਦਾ ਰਾਜ ਗੋਲ ਤਾਂ ਗੋਲ ਸਤ ਗੋਲ ਕਹੀਏ ਤੇਰੀ ਉਹ ਤਮਾ ਗੋਲ ਸ਼ਿਵ ਜੀ ਚਵਾੜਤਾ ਲਿਆ ਕੇ ਉਹਦਾ ਫਿਰ ਆਦਮੀ ਇਸ ਕਰਕੇ ਕਰੋਧ ਜਿਹੜਾ ਸ਼ਿਵਜੀ ਚ ਆਏਗਾ ਕਰੋਧ ਰੂਪ ਤੇਰੇ ਚ ਵੀ ਹੋਰੀ ਹੈਗਾ ਜੇ ਸ਼ਿਵਜੀ ਨੂੰ ਕਰੋਧ ਆਉਂਦਾ ਤੋਰੀ ਹੈਗਾ ਜੀ ਕਿ ਤੋਰੀ ਹੈਗਾ ਇਹ ਤਾਂ ਉਹ ਆਉਂਦਾ ਤੋਰੀ ਹੈਗਾ ਗਾਲਾਏ ਨਾ ਦਬੈ ਖਾਇ ਨਾ ਭੇਖ ਹੈ ਤੇਰੇ ਅੰਦਰ ਭੇਖ ਵੀ ਨਹੀਂ ਜੇ ਭੇਖ ਹੋ ਤਾਂ ਵੀ ਆਉਗੀ ਜਿਹਦਾ ਆਪਣਾ ਭੇਖ ਨਹੀਂ ਉਹਨੂੰ ਹੋਰ ਸਮਝਦਾ ਹੋ ਆਪਣੇ ਬਹਿਗਾਨਾ ਬਰੇਮਾ ਦੂਹਣਾ ਹੈ ਜਿੱਤੇ ਪੇਖਾ ਤਾਂ ਦੇਸ਼ ਹੈ ਸਿੱਖਾਂ ਦੇਸ਼ ਕਿਉਂ ਹੈ ਬੇਖਮਾਨ ਲੈ ਇਹਨਾਂ ਨੇ ਵਰਦੀ ਨਹੀਂ ਮੰਨੀ ਜੇ ਮੰਨਦੇ ਵਰਦੀ ਦੇਖੋ ਸਾਡੇ ਫੌਜ ਫੌਜਾਂ ਨੂੰ ਫੌਜੀ ਕਿਸੇ ਵੀ ਸੁਪੇ ਦਾ ਹੋਵੇ ਕੋਈ ਵੀ ਉਹਦਾ ਧਰਮ ਹੋਵੇ ਉਹ ਦੇਸ਼ ਵਾਸਤੇ ਲੜੂਗਾ ਸਾਰਿਆਂ ਵਾਸਤੇ ਲੜਦਾ ਸਾਰੇ ਦੇਸ਼ ਦੇ ਧਰਮ ਜਾਤੀਆਂ ਉਹਦੇ ਵਾਸਤੇ ਇਕ ਹੋ। ਅ ਸਾਰੀਆਂ ਜਾਤੀਆਂ ਵਾਸਤੇ ਫੌਜੀ ਇਕ। ਇਹ ਥੋੜੀ ਲੱਗਣਾ ਬਦਰਾਸੀ ਹੈ ਪੰਜਾਬੀ ਹੈ ਕੌਣ ਹੈ ਫੌਜੀ ਫੌਜੀ ਹੈ ਸਾਡੇ ਦੇਸ਼ ਦਾ ਫੌਜੀ ਹੈ। ਸੁਭਚਾ ਦੇਸ਼ ਉਹਦੇ ਨਾਲ ਸੁਭਚੇ ਦੇਸ਼ ਨੂੰ ਔਰ ਭੇਖ ਜੇ ਹੁੰਦਾ ਨਾ ਫੌਜੀ ਦਾ ਫਿਰ ਦੀ ਸ਼ੇਰ ਹੁੰਦੀ ਇਸ ਕਰਕੇ ਖਾਲਸਾ ਫੌਜ ਬਣਾਈ ਆ ਭੇਖ ਨਹੀਂ ਹੋਇਆ ਹੈ ਇਹ ਸਾਰੇ ਸੰਸਾਰ ਦਾ ਸਾਰਾ ਸੰਸਾਰ ਇਹਦਾ ਭੇਖ ਦੂਏ ਗੁਦਾ ਭੇਖ ਨਹੀਂ ਆ ਇਹਨੂੰ ਭੇਖ ਨਹੀਂ ਕਰ ਸਕਦੇ ਵਰਦੀ ਹੈ ਮੈਂ ਦਵਾਈ ਖਾਏ ਨਾ ਭੇਖਾ ਤੇ ਭੇਖ ਉਹ ਤੇ ਦਵਾਈ ਖੁੱਦਾ ਹੈ ਉਹ ਮੁਸਲਮਾਨ ਆਂ ਹਿੰਦੂ ਆਪਸ ਵਿੱਚ ਦੁਸ਼ਮਣ ਰੱਖਦੇ ਨੇ ਪਰ ਜਿਹੜਾ ਫੌਜੀ ਉਹ ਨਹੀਂ ਲੱਗਦਾ ਫੌਜੀ ਨਾ ਲੱਗਦਾ ਉਹ ਭੇਖ ਨਹੀਂ ਉਹ ਫੌਜ ਦੀ ਵਰਦੀ ਹੈ ਪਰ ਜਿਹੜਾ ਮੁਸਲਮਾਨ ਭੇਖ ਹੈ ਇਹ ਹਿੰਦੂ ਕਿਸੇ ਸਾਧ ਦਾ ਭੇਖ ਹੈ ਉਹ ਮੁਸਲਮਾਨ ਨਹੀਂ ਭੇਖਣਾ ਦੇਖ ਰੱਖੂਗਾ ਫੌਜੀ ਨਾ ਹੋ ਰਿਹਾ ਲੱਗਦਾ ਕਿ ਵਰਦੀ ਆ ਭੇਖ ਨਹੀਂ ਹੈ ਜੇ ਅਸੀਂ ਇਹਨੂੰ ਵਰਦੀ ਡਿਕਲੇਅਰ ਕਰਾਂਗੇ ਤਾਂ ਇਹ ਪੇਖ ਤੋਂ ਅਸੀਂ ਬਸਕਦੇ ਹਾਂ ਦੋ ਇਸ ਤੋਂ ਵਰਨਾ ਦੋ ਇਸ ਤੋਂ ਨਹੀਂ ਬਸਕਦੇ ਅਸੀਂ ਕਦੇ ਵੀ ਇਹਨਾਂ ਨੇ ਸਿੱਕ ਧਰਮ ਦੇ ਨਾਲ ਲੈ ਧਰਮ ਨਾਲ ਲੈਟਰ ਕਰ ਲਈਏਗਾ ਪੇਖ ਨਾਲ ਲੈਟਰ ਕਰ ਲੈ ਪੇਰ ਨਹੀਂ ਹੈ ਵਰਦੀ ਹੈ ਵਰਦੀ ਸਭ ਦੀ ਸਾਂਝੀ ਹੁੰਦੀ ਹੈ ਨਹੀਂ ਸਾਂਝਾ ਹੁੰਦਾ ਸਾਡੀ ਬਤ ਵੀ ਸਾਂਝੀ ਆ ਸਾਰਿਆਂ ਦੀ ਸਾਰੀਆਂ ਬਤਾਂ ਇਹਦੇ ਵਿੱਚ ਨੇ ਸਾਰੀਆਂ ਬਤਾਂ ਨੂੰ ਇਹ ਦੇ ਰਹੀ ਐ ਸਾਰੀਆਂ ਬਤਾਂ ਨੇ ਰੁਕ ਜਾਇਸ਼ ਕੋਈ ਆਪਣੀ ਬਤ ਛੱਡ ਕੇ ਚਾਜੇ ਜਿੱਤ ਦਵਾਰੇ ਉੱਪਰੇ ਤੇ ਤੇ ਤੇ ਰਸਾ ਹੀ ਇੱਕ ਹੈ ਅੱਗੇ ਤਾਂ ਰਸਾ ਹੀ ਇੱਕ ਹੈ ਫੁੱਦਰ ਤੱਕ ਜਿੰਨੇ ਵਰਜੀ ਚਲੇ ਜਾਓ ਕੋਈ ਰੇਲ ਚਲੇ ਜਾਵੇ ਕੋਈ ਸਾਈਕਲ ਤੇ ਚਲੇ ਜਾਵੇ ਕੋਈ ਪੈਦਲ ਚਲੇ ਜਾਵੇ ਕੋਈ ਕਿਵੇਂ ਜਾਇਆ ਜਾਵੇ ਉੱਥੋਂ ਜਾ ਕੇ ਤਾਂ ਫਿਰ ਸਮੁੰਦਰੀ ਜਹਾਜ਼ੇ ਚੱਲੂ ਨਾ ਇਹ ਹਵਾਈ ਜਹਾਜ਼ ਚੱਲੂਗਾ ਇਹ ਸਮੁੰਦਰੀ ਚੱਲੂਗਾ ਰੇਲ ਤਾਂ ਉੱਥੇ ਜਾਣੀ ਨਹੀਂ ਪਰ ਇਹ ਤਾਂ ਰਾਹ ਇੱਕੋ ਹੀ ਹੈ ਫਿਰ ਉहां ਜਾ ਕੇ ਹੋਰ ਤਾਂ 라 ਜਾਂਦੇ ਨੇ ਥੱਲੇ ਸਤੋਗ ਤੱਕ ਭੁੱਖ ਜਾਂਦੇ ਨੇ ਸਾਰੇ ਸਾਰੀਆਂ ਬੱਤਾਂ ਸਤੋ ਉਹ ਤਾਂ ਉहां ਕੋਈ ਨਹੀਂ ਜਾਂਦੀ ਅੱਗੇ ਤਾਂ ਇੱਕੋ ਹੀ ਰਾਹ ਹੈ ਫਿਰ ਇਸ ਕਰਕੇ ਕੋਈ ਵੀ ਆ ਸਕਦਾ ਸਾਰਿਆਂ ਵਾਸਤੇ ਕੋ ਨਾ ਹੈ ਨਾ ਦਰੋ। ਭੇਕ ਭਾਵੇਂ ਤਾਣ ਕਰੇ ਭਾਵੇਂ ਨਾ ਕਰੇ ਭੇਕ ਦੀ ਰੌਲਾ ਦੀਏ। ਸਾਡੇ ਵਾਲੀ ਵਰਦੀ ਚਾਹੇ ਬਾਵੇ ਵਰਦੀ ਵਾਲਾ ਹੋਰ ਗੱਲ ਹੈ। ਭਈ ਦੋਸਤਾਂ ਦਾ ਕੋਈ ਵੀ ਬਣ ਸਕਦਾ ਹੈ। ਦੀ ਫੌਜ ਭਰਤੀ ਹੋਵੇ ਜਾਂ ਨਾ ਹੋਵੇ। ਦੋਸਤਾਂ ਦੀ ਕੋਈ ਵੀ ਬਣ ਸਕਦਾ। ਕੋਈ ਆਉਂਦਾ ਇੱਥੇ ਨੈਸ਼ਨੈਲਿਟੀ ਬਦਲ ਨਹੀਂ ਲੈਂਦੇ ਲੋਕ। ਸਾਡੇ ਜਾ ਕੇ ਅਮਰੀਕਾ ਦੇ ਅਮਰੀਕਨ ਬਣ ਜਾਂਦੇ ਨੇ ਨੈਸ਼ਨੈਲਿਟੀ ਬਦਲੀ ਜਾਂਦੀ ਹੈ ਉਧਰ ਦੀ ਫੌਜ ਵਰਤੀ ਹੋਵੇ ਜਾਂ ਨਾ ਹੋਵੇ ਉਹ ਗੱਲ ਰੱਗ ਹੈ ਨੈਸ਼ਨੈਲਿਟੀ ਤਾਂ ਬਦਲੀ ਗਈ ਤਾਂ ਸਿੱਖ ਬਣ ਸਕਦਾ ਉਹ ਸਾਰੇ ਖਾਲਸਾ ਨਹੀਂ ਬਣ ਸਕਦਾ ਖਾਲਸਾ ਦਾ ਲਹੌਰ ਹੈ ਖਾਲਸਾ ਫਰਦੀ ਦਾ ਨਾਮ ਹੈ ਫੌਜੀ ਦਾ ਨਾਮ ਫੌਜੀ ਦਾ ਨਾਮ ਜੇ ਕੋਈ ਆਪਣੀ ਆਉਂਦੀ ਹੈ ਫਿਰ ਫੌਜੀ ਨੇ ਜਾਣਾ ਪੂਰੇ ਅਪੱਤੀ ਤੇ ਆਗੇ ਅਰਿਆਂ ਨੂੰ ਆਪੱਤੀ ਔਰ ਵਿਪੱਤੀ ਜਿਹੜੀ ਹੈ ਨਾ ਉਹ ਇਹਦਾ ਇਹਨੇ ਚਲਣੀ ਔਰ ਕੋਈ ਵਕਿਆ ਨਾ ਤਾਂ ਸਾਰੇ ਸੰਸਾਰ ਵਾਸਤੇ ਤਰ ਕੋਈ ਵਰਦੇ ਕੋਈ ਕਹੇ ਜੀ ਰੱਖੇ ਖਾਣ ਪੀਣ ਦੀ ਗੱਲ ਥੋੜਾ ਜਿਹਾ ਹੈ ਖਾਣ ਪੀਣ ਦਾ ਜਿਹੜਾ ਇਹਨੇ ਛੜਾਇਆ ਹੁਣ ਤਾਂ ਸਰਕਾਰ ਵੀ ਛਣਾਉਂਦੀ ਹੈ ਜਿਹੜਾ ਪਾਬੰਦੀ ਲਾਈ ਆ ਸਾਡੇ ਕੁਰਹਿਤਾਂ 'ਚ ਉਹਦਾ ਸਿਰਫ ਤਮਾਕੂ ਦਾ ਹੀ ਹੁਣ ਤਾਂ ਸਰਕਾਰ ਵੀ ਕਹਿੰਦੀ ਹੈ ਵੀ ਉਹ ਸਾਰੇ ਧਰਮ ਕਹਿੰਦੇ ਨੇ ਪਹਿਲਾਂ ਵੀ ਕਹਿੰਦੇ ਨੇ ਸਾਡੇ ਧਰਮ ਹੁਣ ਉਹਦਾ ਹੁਣ ਹੀ ਪਤਾ ਲੱਗਿਆ ਵੀ ਗੱਲ ਕੀ ਹੈ ਕੈਂਸਰ ਪੈਦਾ ਹੁੰਦਾ ਸਾਲਾ ਬੰਦਾ ਦਾ ਕੋਈ ਵਰਤਦਾ ਹੀ ਨਹੀਂ ਹੁਣ ਜਿਹੜੇ ਵਰਤਦੇ ਨੇ ਉਹ ਵੀ ਛੱਡੀ ਜਾਂਦੇ ਨੇ ਵੱਡੀ ਪਾਬੰਦੀ ਜਾਰੇ ਕੁਰਹਿਤਾਂ ਨੇ ਸਾਡੀਆਂ ਉਹਦੇ ਤਬਾਕੂ ਆ ਖਰਾਬੀ ਬਬਲ ਦੀ ਸਾਡੇ ਕੋਈ ਨਹੀਂ ਲਾਈ ਹੋਈ। ਸਰਾਬ ਹੈ ਜੇ ਦੇਸ਼ ਨੇ ਜਿੱਥੇ ਤੂੰ ਬਚ ਨਹੀਂ ਸਕਦੇ ਪੀਤੇ ਮਿਲੋ। ਇਹ ਹੈ ਜੋ ਵੀ ਦੇਸ਼ ਨੇ। ਉਥੇ ਪਹਾੜ ਚਲੇ ਜਾ ਮਰ ਜੂਗਾ ਤੂੰ ਰਾਤ ਨੂੰ। ਉਹ ਨਹੀਂ ਲਾ ਸਕਦੇ ਸੀ ਪਵੰਤੀ। ਉਹ ਤਾਂ ਬੰਦਾ ਮਰ ਰਾਤ ਨੂੰ। ਉਹ ਜਿੱਥੇ 14 15 ਡਿਗਰੀ ਥੱਲੇ ਜਾ ਟੈਂਪਰੇਚਰ। 0 ਤੋਂ ਰਾਤ ਨੂੰ ਬੰਦਾ ਮਰ ਜੂਗਾ ਤੇ ਸਾਡੇ ਫੌਜੀ ਨੇ ਕਿ ਕਿਸੇ ਵੀ ਧਰਮ ਦਾ ਹੋਵੇ ਕਿੰਨਾ ਹੀ ਖਲਾਫ ਹੋਵੇ ਉਹਦਾ ਧਰਮ ਜਿ ਸ਼ਰਾਬ ਤੇ ਜਦ ਆਪੀ ਉਹ ਮਰ ਜੂਗਾ ਤੂੰ ਉੱਥੇ ਉਹਦੇ ਬਾਅਦ ਤੇ ਸ਼ਰਾਬ ਸ਼ਰਾਬ ਨਹੀਂ ਦਵਾਈ ਹੈ ਉਹ ਉਹ ਜੀਵਨ ਦਾਣ ਦ੍ਰਿਸ਼ਟੀਕੋਣ ਬਦਲੇ ਦ੍ਰਿਸ਼ਟੀਕੋਣ ਦੀ ਗੱਲ ਹੈ ਸਿਰਫ ਅਸੀ ਜਿਹੜੀ ਚੀਜ਼ ਨੂੰ ਦੇਖਦਾਗਾ ਦ੍ਰਿਸ਼ਟੀਕੋਣ ਦੇਖਣਾ ਚਾਹੀਦਾ ਪਾੜੇ ਨਾ ਪਿਉ ਮੈਂ ਮਰ ਜੂਗਾ ਆਦਮੀ ਇਹ ਗਿਆਨ ਦਾੜਾ ਤੁਹਾਨੂੰ ਨਹੀਂ ਧਰਮ ਦੇ ਵਿੱਚ ਗਿਆਨ ਦੀ ਲੋੜ ਹੈ ਹਰੇਕ ਧਰਮ ਵਿੱਚ ਉਹ ਤਾਂ ਜੀਵਨ ਆ ਉਹਦਾ ਸ਼ਰਾਬ ਦੇ ਵਿੱਚ ਬਹੁਤ ਥੋੜੀ ਆ ਉੱਥੇ ਕਾਫੀ ਉਮਰ ਜੂਗਾ ਉਹ ਰਾਤ ਨੂੰ ਕੋਕਤ ਤਰ੍ਹਾਂ ਜਗਾ ਜਗਾ ਆਦਮੀ ਰਹਿੰਦੇ ਨੇ ਹਰ ਜਗ੍ਹਾ ਦੇ ਜਿਹੜਾ ਧਰਮ ਇੰਟਰਨੈਸ਼ਨਲ ਹੈ ਉਹ ਹਰ ਜਗ੍ਹਾ ਰਹਿਣ ਵਾਲੇ ਆਦਮੀ ਵਾਸਤੇ ਤੁਸੀਂ ਦੀ ਬਵਦਦੀ ਲਾ ਸਕਦੇ ਕਿਸੇ ਚੀਜ਼ ਖਾਣ ਪੀਣ ਦੇ ਬਾਣੀ ਕੁਰਬਾਨੀ ਦੇ ਬਵਦਦੀ ਲਾਈ ਵੀ ਹੈ ਰਗਾ ਜੇ ਖਾਦਾ ਤਾਂ ਪੀੜੀਏ ਮਨ ਵਿੱਚ ਚੱਲਣ ਵਕਾਰ ਬਸ ਇਹ ਬੋਲਦੀ ਹੈ ਵਕਾਰ ਤਾਂ ਝੂਠੇ ਚੱਲਦੇ ਨੇ ਬਦਰ ਉਹ ਛੱਡ ਦਿਓ ਅਸਲ ਤੇ ਜਿਹੜੇ ਘਰ ਨੂੰ ਜਾਣੇ ਨੇ ਨਾ ਪ੍ਰਚਾਰ ਇਹਨਾਂ ਨੇ ਵਕਾਰ ਛੱਡਣਾ ਤੇ ਹੋਰੇ ਪਾਸੇ ਗੱਲ ਲੌਲਾ ਪਾ ਲਿਆ ਜਿਹੜੀ ਚੀਜ਼ ਤਾਂ ਛਡਾਉਦਾ ਵਾਰ-ਵਾਰ ਸ਼ਰਾਬ ਦੀ ਕਦੇ ਗੱਲ ਹੀ ਆਈ ਆਈ ਇੱਥੇ ਤਾਂ ਸੁਪਾਸ਼ਰ ਕਾਮ ਹੈ ਕਰੋਧ ਹੈ ਨਲੋ ਬਹ ਨਮੋ ਨਲੋ ਬਹ ਨਮੋ ਨਦਵਾਖਾ ਨਦਵਾਖਾ ਇਹ ਛੱਡਣੀਆਂ ਆਂ ਦੀਆਂ ਚੀਜ਼ਾਂ ਇਹ ਆਂ ਦੀ ਗੱਲ ਨਹੀਂ ਕਰਦੇ ਸ਼ਰਾਬ ਤੇ ਆ ਕੇ ਨਸ਼ਾ ਤੇ ਆਉਂਦੇ ਅਸਾ ਇਹ ਛੱਡਣੇ ਨਹੀਂ ਐ ਨਾ ਜਾਵੇ ਕਿਸੇ ਦਾ ਤੁਸੀਂ ਜਿਹੜੇ ਉਹ ਚੀਜ਼ਾਂ ਨਹੀਂ ਖਾਦੇ ਨਸ਼ਾ ਤੁਸੀਂ ਆਏ ਤਾਂ ਛੱਡੋ ਜਾਂ ਉਹਨਾਂ ਦੇ ਹੋਸ਼ ਨਾਲੋ ਤੁਸੀਂ ਆਏ ਛੱਡੋ ਤੁਸੀਂ ਤਾਂ ਸ਼ਰਾਬ ਨਸ਼ਾ ਕਰਦੇ ਨਹੀਂ ਤੁਸੀਂ ਕੀ ਕਰਦੇ ਹੋ ਹੁਣ ਸਰਵ ਨਸ਼ਾ ਛੱਡਣੇ ਹੀ ਸਿੱਖੀ ਦੀ ਹੈ ਕੀ ਨਸ਼ੇ ਛੱਡਦੇ ਨੇ ਹੀ ਸਿੱਖੀ ਹੈ ਸਵਾਲ ਹੈ ਹੁਣ ਕੀ ਭੈਦ ਨਸ਼ੇ ਨਸ਼ਾ ਛੱਡਦੇ ਨੇ ਕਿਰਪਾਨ ਪਾ ਲੈਣੀ ਕੇਸ ਰੱਖ ਲੈਣਾ ਬਾਣੀ ਪੜ੍ਹ ਲੈਣੀ ਹੀ ਸਿੱਖੀ ਹੈ ਇਹ ਸਿੱਖੀ ਇੱਥੇ ਹੀ ਬਸ ਰਹੀ ਹੈ ਤੋਂ ਤਾਂ ਸਟਾਰਟ ਹੁੰਦੀ ਆ ਜੋ ਇਹ ਤਾਂ ਦਾ ਸਟਾਰਟ ਹੁੰਦੀ ਹੈ ਟਾਰਗੇਟ ਕੀ ਹੈ ਟਾਰਗੇਟ ਕੱਲ ਆਇਆ ਸੀ ਐਸਾ ਜਿਹੜਾ ਪਰਮੇਸ਼ਰ ਉਹਦੀ ਪ੍ਰਾਪਤੀ ਕਿਵੇਂ ਹੋਵੇ ਜਿਹਦਾ ਨਕਸ਼ਾ ਦੱਸ ਰਹੇ ਨੇ ਨਕਰਾ ਉਹਦਾ ਨਾ ਕੰਮ ਹੈ ਉਹਦੀ ਪ੍ਰਾਪਤੀ ਕਿਵੇਂ ਹੋਵੇ ਤੇ ਟਾਰਗੇਟ ਸੀ ਪ੍ਰਾਪਤੀ ਤੋਂ ਛੱਡੀ ਬੈਠੇ ਆਦੀ ਦੇਵ ਕੋ ਸੋ ਕੈਸ ਪਾਈ ਹੈ ਆਦੀ ਦੇਵ ਹੈ ਜਿਹੜਾ ਸੋ ਕੈਸੇ ਪਾਈਏ ਉਹਨੂੰ ਜੇਰਾ ਐਸਾ ਆਦਤ ਦੇਵ ਹੈ ਉਹਨੂੰ ਉਹਦੀ ਪ੍ਰਾਪਤੀ ਕਿਵੇਂ ਹੋਵੇ ਕਰਦਾ ਜੋ ਆਇਆ ਸੀ ਉਹਦਾਂ ਨੂੰ ਕਿਹੜੀ ਗਾਹ ਨੂੰ ਕਿਹੜੀ ਤਰੇ ਨਸ਼ਾ ਵਾਲੂ ਕਿ ਉਂਗਲੀ ਕਰਨਾ ਕਿ ਕਿ ਸਾਡੇ ਵਾਲੂ ਕੋਈ ਉਂਗਲੀ ਨਾ ਕਰ ਦਵੇ ਆਪਣਾ ਕੰਮ ਛੱਡ ਦਿੱਤਾ ਨਾ ਇਹਨਾਂ ਨੇ ਜਿੱਦਿੜੇ ਆਪਣਾ ਕੰਮ ਛੱਡਿਆ ਹੈ ਦੂਏ ਵਾਲੂ ਉਂਗਲੇ ਕਿਵੇਂ ਕਰ ਸਕਦਾ ਉਹ ਵੀ ਛੱਡ ਦੇਣਗੇ ਜੇ ਨਸ਼ੇ ਚੜ ਛੱਡ ਵੀ ਦੇਣ ਫੇਰ ਕੀ ਕਰਨ ਕੋਣਾ ਤੁਹਾਨੂੰ ਫੇਰ ਪੁੱਛਾਂਗੇ ਹੁਣ ਕੀ ਕਰੀਏ ਭਾਈ ਹੁਣ ਕੀ ਕਰੀਏ ਜੇ ساری ਦੁਨੀਆ ਇਸ਼ਾਰਾ ਦੇ ਮੈਂ ਫੌਜੀ ਤੇ ਮਰ ਜਾਣਗੇ ਉੱਤੇ ਬੈਠੇ ਨਾ ਦੁਈ ਹੈ ਨਾ ਦਰੋਹ ਹੈ ਨਾ ਦੁਈ ਹੈ ਨਾ ਦਰੋਹ ਹੈ ਕਾਲ ਹੈ ਨਬਾਲ ਹੈ ਦੁਇ ਬਣੀ ਹੈ ਤੇ ਦ્વੈਦਵਨੀ ਹੈ ਦ੍ਰੋਹਣੀ ਹੈ ਤੇ ਦ੍ਰੋਹ ਕਿਸ ਨਾਲ ਮਤਰਾ ਦਗਾਵਨੀ ਕਰਤਾ ਦ੍ਰੋਹ ਹੁੰਦਾ ਦਗਾ ਕਾਲ ਹੈ ਨਬਾਲ ਹੈ ਤਾਂ ਕਾਲ ਹੈ ਦ੍ਰੋਹ ਦਵਾਰੀ ਉਹਦਾ ਤ੍ਰੋਹ ਦਾ ਦਗਾ ਦ੍ਰੋਹ ਦਾ ਦਦੇ ਨਾਲ ਦ੍ਰੋਹ ਦਾ ਬਿਦ੍ਰੋਹ ਕਰਨਾ حکم دی خلافت کر لو کوئی نجااحت کم کرے विरोध کرود کر تاں خود دا برود کر لو کال ہے نبال ہے کال ہے نبال ہے نبال کے چھوٹا چھوٹا بچہ ਉਦਿਆਲ ਸਰੂਪ ਹੋਦਾ ਐ ਉਹ ਜਾਈ ਰਹਿੰਦਾ ਦਿਆਲ ਤਾਂ ਉਹਦੇ ਅੰਦਰੋਂ ਜਾਦੀ ਹੋਈ ਦੀ ਇਹ ਨਹੀਂ ਵੀ ਕਹਿੰਦਾ ਕਰੋਚ ਆ ਗਿਆ ਕਦੇ ਮੂਡ ਮੂਲ ਨਹੀਂ ਬਦਲਦਾ ਦਿਆਲ ਸਾਡਾ ਮੂਡ ਬਣਿਆ ਰਹਿੰਦੇ ਸਦੀਪ ਦਿਆਲ ਰੂਪ ਆ ਹੈ ਆ ਹੈ ਆ ਹੈ ਆ ਹੈ ਅਗੰਝ ਹੈ ਆ ਹੈ ਆ ਹੈ ਆ ਹੈ ਅਗੰਝ ਹੈ ਤੇ ਤੋੜਿਆ ਜਾ ਸਕਦਾ ਤੈਨੂੰ ਪੰਜ ਹੈ ਨਹੀਂ ਬਣਿਆ ਜਾ ਸਕਦਾ ਤੈਨੂੰ ਪਰਮ ਹੈ ਆ ਪੂਰਤ ਹੈ ਕਿਉਂਕਿ ਤੇਰੇ ਚ ਪਰਮਾਇ ਨਹੀਂ ਪਰਮ ਦਾ ਘੜ ਟੁੱਟਦਾ ਹੁੰਦਾ ਜੇ ਪਰਮ ਹੋਵੇ ਪਰਮ ਹੈ ਹੋਰੀ ਟੁੱਟੂਗੀ ਆ ਪੂਰਤ ਹੈ ਆ ਛੇਦ ਛੇਦ ਹੈ ਸਦਾ ਅਗੰਝ ਗੰਝ ਗੰਝ ਹੈ ਐਸੇ ਕਰਕੇ ਦੋ ਛੇਦ ਹੈ ਛੇਦ ਹੈ ਸਦਾ ਛੇਦ ਕਰ ਦਿੰਨਾ ਪਰਬ ਜਿੱਥੇ ਹੁੰਦਾ ਉਹਨੂੰ ਸ਼ਹਿਦ ਕਰ ਤੂੰ ਤਾਂ ਪਰਮ ਕੱਟਣ ਵਾਸਤੇ ਬਣਿਆ ਹੋਇਆ ਹੈਂ ਅਗੰਜ ਗੰਜ ਗੰਜ ਕੱਟਣ ਵਾਸਤੇ ਬਣਿਆ ਹੋਇਆ ਹੈਂ ਅਗੰਜ ਗੰਜ ਹੈਂ ਅਗੰਜ ਗੰਜ ਗੰਜ ਜਿਹੜੇ ਅਗੰਜ ਨੇ ਅਗੰਜ ਨੇ ਅਗੰਜ ਹੁੰਦਾ ਖਜ਼ਾਨੇ ਨੂੰ ਵੀ ਕਹਿੰਦੇ ਨੇ ਗੰਜ ਗੰਜ ਖਜ਼ਾਨੇ ਨੂੰ ਕਹਿੰਦੇ ਨੇ ਜਿਨ੍ਹਾਂ ਕੋਲ ਨਹੀਂ ਨਾ ਹੈ ਨਾਮ ਦਾ ਖਜ਼ਾਨਾ ਗਿਆਨ ਦਾ ਉਹਨਾਂ ਵਾਸਤੇ ਤੂੰ ਖਜ਼ਾਨਾ ਹੈ ਗਾਂ ਦਾ ਖਜ਼ਾਨਾ ਗੁਣਾਂ ਦਾ ਖਜ਼ਾਨਾ ਗੁਣ ਔਰ ਗਾਂ ਦਾ ਖਜ਼ਾਨਾ ਤੋਂ ਗੁਣਾਂ ਦਾ ਖੈਨਾ ਔਰ ਗਾਂ ਦਾ ਖਜ਼ਾਨਾ ਤੋਂ ਜਿਹੜੇ ਲੋਕ ਨੇ ਉਹਨਾਂ ਵਾਸਤੇ ਜਿਨ੍ਹਾਂ ਕੋਲ ਹੈ ਨਹੀਂ ਨਾ ਜਿਹੜੇ ਜਿਹਨਾਂ ਆਪਾਂ ਕਹੀਏ ਵੀ ਹੋ ਰੰਕ ਨੇ ਗਿਆਨ ਤੋਂ ਸਖਣੇ ਰੰਕ ਦੇ ਜਿਹੜੇ ਉਹਨਾਂ ਵਾਸਤੇ ਗੁਣਾ ਔਰ ਗਿਆਨ ਦਾ ਖਜ਼ਾਨਾ ਹੈ ਗੁੜਵੀ ਤੇ ਤੋਂ ਲੈਣਾ ਜਿੰਨਾ ਵਰਜੀ ਗਿਆਨ ਵੀ ਲੈਣਾ। ਆਪੂਤ ਆਪੇਖ ਹੈ ਬੜੀ ਐਂਖ ਜਾਂ ਨਾਲੀ ਜਿਹੇ ਜਹਾਂ ਸੰਸਾਰ ਦੇਖ ਜਾਂਦੇ ਨੇ। ਸੰਸਾਰ ਦੇ ਜਿਹੜੇ ਦੌਲਤ ਸੁਥਾਰੀ ਦੌਲਤ ਨਹੀਂ ਹੈ। ਗਾਂਧੀ ਦੌਲਤ ਹੈ। ਨਾਭਦੀ ਦੌਲਤ ਹੈ। ਨਾਉਤਾਨ। ਆਪੂਤ ਆਪੇਖ ਹੈ। ਆਪੂਤ ਹੈ। ਆਪੂਤ ਆਪੇਖ ਹੈ। ਆਪੂਤ ਕਹਿੰਦੇ ਨੇ। ਭਾਇਆ ਤਾਂ ਹੈ ਦੀ। ਅਚਰਜ ਰੂਪ ਹੈ ਤੇ ਅਚਰਜ ਵਸਤੂ ਹਾਂ ਤੋ ਅਚਰਜ ਵਸਤੂ ਤਾਂ ਹੈ ਪਰ ਜਦ ਪਤਾ ਲੱਗਦਾ ਚਾਰਜ ਹੋ ਜਾਂਦਾ ਵੀ ਇਹ ਜੀ ਵੀ ਵਸਤੂ ਹਦੀ ਹੋਵੇ ਸੰਸਾਰ ਤੱਕ ਨਹੀਂ ਜੀ ਅਚਰਜ ਰੂਪ ਆਪੇਖ ਹੈ ਬਲੀ ਆਪੇਖ ਹੈ ਬਲੀ ਆਪੇਖ ਵੀ ਫਿਰ ਵੀ ਬਹੁਤ ਬਲਵਾਨ ਹੈ ਸਰੀਰ ਦਾ ਹੁੰਦੇ ਹੋਇਆ ਵੀ ਬਹੁਤ ਬਲੀ ਹੈ ਤੇ ਜਨਾ ਸ਼ਕਤੀ ਨਹੀਂ ਕਿਸੇ ਚ ਉਹ ਨੱਪਾ ਨਾ ਕਾਇਨਾਤ ਵੀ ਸਰੀਰ ਹੂ ਤਾਂ ਹੀ ਬਲੀ ਹੋਊ ਬਿਨਾ ਯਰੀਰ ਤੇ ਬਲੀ ਹੂ ਤੂੰ ਅਰੂਪ ਰਾਗ ਰੰਗ ਹੈ ਓ ਕੀ ਹੈ ਬਲੀ ਬੁੱਧ ਬਾਲਾ ਤੇਰੇ ਚ ਗਿਆਨ ਦੀ ਸ਼ਕਤੀ ਹੈ ਤੇਰੇ ਅਰੂਪ ਰਾਗ ਰੰਗ ਹੈ ਅਰੂਪ ਰਾਗ ਰੰਗ ਹੈ ਸੰਸਾਰੀ ਰੂਪ ਨਹੀਂ ਹੈ ਕੋਈ ਤੇਰਾ ਰਾਗ ਨਹੀਂ ਹੈ ਕੋ ਰਗ ਨਹੀਂ ਹੈ ਅਰੂਪ ਰਾਗ ਰੰਗ ਹੈ ਹਰ ਆਗਰਾਮ ਦੇ ਰੂਪ ਤੋਂ ਸਖਣਾ ਨਾ ਦਵੇਖ ਹੈ ਨਾ ਭੇਖ ਹੈ ਨਾ ਦਵੇਖ ਹੈ ਨਾ ਭੇਖ ਹੈ ਨਾ ਕਾਮ ਗ੍ਰੋਧ ਕਰਵਾ ਤੇਰੇ ਵਾਸਤੇ ਆਪਣੇ ਨੇ ਨਾ ਕਾਮ ਗ੍ਰੋਧ ਕਰਮ ਹੈ ਨਾ ਕਾਮ ਗ੍ਰੋਧ ਦਾ ਕੋਈ ਕਰਮ ਐਸਾ ਕਰਮ ਕੋਈ ਨਹੀਂ ਹੈ ਜਿਹਦਾ ਕਾਮ ਗ੍ਰੋਧ ਬਦੇ ਨਾ ਹੁੰਦਾ ਆ ਜਿਹੜੀ ਹੁੰਦੀ ਹੈ ਸਿੱਧੀਆਂ ਕਾਮ ਗ੍ਰੋਧ ਦੇ ਤੇ ਤੈਨੂੰ ਸੱਦਿਆ ਕੋਈ ਕਰਮ ਨਹੀਂ ਆ ਤੂੰ ਜੋ ਕਾਮ ਨਾ ਕਰੋ ਬੜ ਜਾਂਦਾ ਹੈ ਉਹ ਕਲਪ੍ਰਿਕਸ਼ ਕੀ ਹੈ ਕਲਪ੍ਰਿਕ ਅਖੇ ਜਿਹੜੀ ਅੱਛਾ ਕਰੋ ਬੜ ਜਾਂਦੀ ਹੈ ਉਹ ਕਾਮ ਕਰੋਦੇ ਜਾਏ ਉਹ ਜਾਊਗਾ ਨਾ ਜਾਤ ਹੈ ਨਾ ਪਾਤ ਹੈ ਤੇਰੀ ਕੋਈ ਆਦਤ ਬਾਤ ਨਹੀਂ ਹੈ ਨਾ ਚਿੱਤਰ ਚਿਹਨ ਵਰਣ ਹੈ ਦਾ ਚਿੱਤਰਾ ਕੋਈ ਫੋਟੋ ਹੈ ਤੇਰੀ ਫੋਟੋ ਬਣਾ ਬੈਠੇ ਨੇ ਚਾਹੇ ਲੋਕ ਅਚੇਨ ਬੜਣਾ ਤੇ ਕੋਈ ਤੇਰਾ ਚਿਹਰਾ ਮੋੜਾ ਹੈ ਕੋਈ ਤੇਰਾ ਬੇਅੰਤ ਹੈ ਅਨੰਤ ਹੈ ਅਨੰਤ ਤੇਜ ਜਾਨੀ ਐ ਬੇਅੰਤ ਹੈ ਅੰਤ ਬਹੀਰ ਤੂੰ ਬੇਅੰਤ ਤੇਜ ਜਿਆਦੀ ਹੈ ਅਨੰਤ ਤੇਜ ਜਾਨੀ ਅਨੰਤ ਤੇਜ ਜਾਨੀ ਐ ਜਾਣਨਾ ਚਾਹੀਦਾ ਕਿ ਤੇਰਾ ਤੇਜ ਹੈ ਨਾ ਇੰਨਾ ਪ੍ਰਚੰਡ ਹੈ ਪਰ ਜਿਹਦਾ ਕਦੇ ਅੰਤ ਹੋ ਹੀ ਨਹੀਂ ਸਕਦਾ ਅੰਤ ਪਰ ਅੰਤ ਨਹੀਂ ਹੈ ਜਿਹੜਾ ਤੇਜ ਦਾ ਕਦੇ ਤੇਜ ਵੱਠਾ ਹੁੰਦਾ ਹੀ ਨਹੀਂ ਤੇਜ ਨਾਸ ਉਦਾ ਹੀ ਨਹੀਂ ਘਟਦਾ ਹੀ ਨਹੀਂ ਤੇਜ ਆਪੂਮ ਆ ਭੇਜ ਹੈ ਸਦਾ ਇਸ ਕਰਕੇ ਤੇਜ ਪ੍ਰਤਾਪ ਬੁਲਣਾ ਚਾਹੀਦਾ ਹਰੂ ਤੇਜ ਪ੍ਰਤਾਪ ਜਾਣੀ ਆ ਅਨੰਤ ਤੇਜ ਤੂੰ ਤੇਜ ਪ੍ਰਤਾਪ ਹੈ ਹੂੰ ਹੈ ਸਦਾ ਆਪੋਬ ਆ ਹੈ ਸਦਾ ਆ ਹੈ ਸਦਾ ਤੇਰਾ ਜਿਹੜਾ ਹੈ ਨਾ ਹਰਦਾਬ ਆ ਤਰਤੀਰੇ ਕਿਸੇ ਟੁਕੜੇ ਨਾਲ ਭਿਜਦਾਰੀਆ ਵੀ ਇੱਥੇ ਰਹਿਣਾ ਉੱਥੇ ਨਹੀਂ ਰਹਿਦਾ ਵੀ ਚੱਲ ਜੀ ਇੱਥੇ ਇੱਕ ਵਧੀਆ ਨੇ ਮੌਸਮ ਇੱਥੇ ਚੰਗਾ ਹੈ ਨਦੀਆਂ ਨਾਲੇ ਨੇ ਇੱਥੇ ਹੀ ਬਣਾ ਲੀਆ ਅਸ਼ਰਫ ਜੋ ਬਣਾਉਦੇ ਰਹੇ ਨੇ ਲੋਕ ਇਹ ਜਾ ਨਹੀਂ ਆਤੇ ਨਾ ਨਹੀਂ ਕਦੇ ਵੀ ਉਹ ਕਿਤੇ ਨਹੀਂ ਭਿਜਦਾ ਸਭ ਕੁ ਦਾ ਟਾਇਆ ਬਣਾਇਆ ਹੋਇਆ ਕਿਤੇ ਖਾਸ ਦੁਕਾਨਾਂ ਨਹੀਂ ਬਣਾਉਂਦਾ ਤੂੰ ਇਹ ਤਾਂ ਭੇਜੇ ਵੇ ਉਹ ਭੇਜਿਆ ਹੈ ਸਦਾ ਵਿਆਹ ਜਗਾ ਚ ਦੀ ਲੱਗੀ ਜੀ ਇੱਥੇ ਬਣਾ ਲੋ ਤੇ ਪ੍ਰਭਾਵ ਨਹੀਂ ਪੈਦਾ ਕਿਸੇ ਦਾ ਤੈਨੂੰ ਅੱਛੇ ਜਤੇ ਜਾਣਾ ਚਾਹੀਦਾ ਕਿਸੇ ਵੀ ਜਾਤ ਵਿੱਚ ਵੀ ਨਹੀਂ ਭੇਜਦਾ ਤੂੰ ਕਿਸੇ ਚ ਵੀ ਐ ਜਾ ਮਰਾਦ ਵੀ ਵਰਗਾ ਇਸ ਵਧੀਆ ਮੈਂ ਇਹੀ ਧਾਰਨ ਕਰਨਾ ਇਹ ਵੀ ਤਾਂ ਮਾਇਆ ਹੀ ਸ੍ਰੀ ਤੂੰ ਤਾਂ ਤੇਜ ਪ੍ਰਤਾਪ ਜੋਤ ਹੈਂ ਜੋਤ ਸਰੂਪ ਹੈ ਨਾ ਆਦ ਹੈ ਨਾ ਬਿਆਦ ਹੈ ਆਗਾਦ ਰੂਪ ਲੇਖੀ ਹੈ ਆਦ ਬਿਆਦ ਤੇ ਪਰੇ ਤੂੰ ਆਦ ਬਿਆਦ ਤੇਰੇ ਵਿੱਚ ਨਹੀਂ ਤੂੰ ਆਦ ਬਿਆਦ ਹੈ ਨਾ ਆਦ ਬਿਆਦ ਤਾਂ ਤੇ ਉਲਟਾ ਹੈ ਤੇਰੀ ਗਾਇਰ ਤੈਨੂੰ ਛੱਡਦੀ ਆਦ ਬਿਆਦ ਜੱਪੜ ਜਾਂਦੀ ਹੈ ਤੂੰ ਆਦ ਬਿਆਦ ਕਿੱਥੇ ਆਲਵਿਆ ਤਾਂ ਤਾਂ ਚ ਬੜਦੀ ਐ ਹਰ ਵਿਸਰਤ ਸਦਾ ਖੁਆਰੀ ਇਹ ਬਿਯਾਰ ਕੀ ਐ ਪਰਮੇਸ਼ਰ ਭੁੱਲੇ ਸਭੇ ਰੋਗ ਉਹ ਤੈਨੂੰ ਭੁੱਲ ਕੇ ਰੋਗ ਦਾ ਵਿਆਪਦਾ ਨਾ ਤੂੰ ਕਿੱਥੇ ਐ ਤੇਰਾ ਲਾੜ ਛੋੜ ਜਿਵੇਂ ਸਾਰੇ ਰੋਗ ਵਿਆਪ ਜਾਂਦੇ ਆਗਾਦ ਰੂਪ ਲੇਖੀ ਐ ਇਸ ਕਰਕੇ ਤੂੰ ਤਾਂ ਆਗਾਦ ਰੂਪ ਹੈ ਬੁੱਧੀ ਤੋਂ ਪਰੇ ਦਾ ਹੀ ਰੂਪ ਹੈ ਕੋਈ ਉਰਖੇ ਬੁੱਧੀ ਤੋਂ ਪਰੇ ਨਾਲ ਦਸੀ ਜਾਂਦੇ ਨਾਲੇ ਅਗਾਧ ਰੂਪ ਕਹੀ ਜਾਂਦੇ ਹੁਣ ਜਿਹਨਾਂ ਨੂੰ ਦੱਸਦੇ ਨੇ ਉਹਨਾਂ ਦੀ ਸਮਝ ਜਿੰਨਾ ਆ ਰਿਹਾ ਉਹ ਜਿਹੜੇ ਇਹਨਾਂ ਨੂੰ ਦੱਸ ਰਹੇ ਨੇ ਉਹਨਾਂ ਦੀ ਸਮਝ ਤੋਂ ਪਰੇ ਆ ਜਾਂਦੀ ਉਹਨਾਂ ਬਾਅਦ ਅਗਾਧ ਨਾਲੇ ਦੇਖ ਕੇ ਦੱਸੀ ਜਾਂਦੇ ਨਾਲੇ ਅਗਾਧ ਰੂਪ ਭਾਈ ਹਾਲੇ ਤੁਸੀਂ ਅਗਾਧ ਰੂਪੇ ਬੰਨ ਲੋ ਐ ਮੰਨ ਲੋ ਸਾਡੀ ਬੁੱਧੀ ਤੋਂ ਪਰੇ ਆਲੇ ਇਹ ਮੰਨ ਲੋ ਪਰ ਹੈ ਇਹ ਆ ਜੂਗਾ ਸਮਝ ਹੌਲੀ ਹੌਲੀ ਮੰਨ ਕੇ ਚਲੋ ਇਹ ਇਹ ਜਾ ਹੁੰਦਾ ਪਰ ਆਦ ਦੂਜੇ ਪਾਸੇ ਟੁੱਟ ਗਏ ਨਾ ਝੂਠੇ ਪਾਸੇ ਦਾ ਤੋੜਦੇ ਨਾ ਸਾਰਿਆਂ ਚਾ ਝੂਠੇ ਪਾਸੇ ਛੱਡ ਦੋਗੇ ਸੱਚ ਆਪੇ ਸਭ ਕੁਝ ਆਜੂਗਾ ਝੂੜ ਨੂੰ ਛੱਡ ਦਿਓ ਸੱਚ ਆਪੇ ਸਮਝ ਆਜੂਗਾ ਅਦੋਖ ਹੈ ਅਦਾਗ ਹੈ ਅਛੈ ਪ੍ਰਤਾਪ ਦੇਖੀ ਹੈ ਅਦੋਖ ਹੈ ਕੋਈ ਤੇਰੇ ਦੋਖ ਨਹੀਂ ਕਬੀ ਰਹੀ ਹੈ ਉਗੜ ਲਈ ਹੈ ਅਦਾਗ ਹੈ ਦਾ ਕੋਈ ਹੈ ਨਹੀਂ ਜੇ ਦਾਗ ਉਗੜਦਾ ਲੱਗਣ ਜਾਦਵੀ ਲੱਗਣ ਉਗੜੇ ਨਹੀਂ ਦਾਗ ਬਣੀ ਐ ਅਛਾਇ ਪ੍ਰਤਾਪ ਪੇਖੀ ਐ ਤੇਰਾ ਪ੍ਰਤਾਪ ਅਛਾਇਆ ਅਛਾਇਆ ਜਿਹੜਾ ਛੈ ਦੀ ਜੀਤੇ ਛਾਮਾਣੀ ਪੈਦੀ ਪਰ ਛਾਮਾ ਪੈਂਦਾ ਕਿਸੇ ਦਾ ਅਛਾਇ ਪ੍ਰਤਾਪ ਪੇਖੀ ਐ ਪੇਖੀ ਐ ਜੀਨੇ ਵੀ ਪੇਖਿਆ ਔਰ ਇਹੀ ਕਹੈ ਵੀ ਉਹਦਾ ਪ੍ਰਤਾਪ ਅਛਾਇ ਨਾ ਕਰਮ ਹੈ ਨਾ ਭਰਮ ਹੈ ਨਾ ਧਰਮ ਕੋ ਨਾ ਕਰਮਾ ਨਾ ਧਰਮਾ ਨਾ ਪ੍ਰਭੂ ਕੋ ਪ੍ਰਭਾ ਧਰਮ ਕੋ ਪ੍ਰਭਾ ਧਰਮ ਦਾ ਪ੍ਰਭਾਅ ਨਹੀਂ ਪੈਂਦਾ ਤੇਰੇ ਤੇ ਧਰਮ ਦਾ ਤੇਰੇ ਤੇ ਕੀ ਪ੍ਰਭਾਅ ਪਊਗਾ ਉਹ ਤਾਂ ਥੋੜੇ ਗਿਆਨ ਤੇ ਧਰਮ ਦਾ ਪ੍ਰਭਾਅ ਪੈਂਦਾ ਸੂਰਜ ਤੇ ਕਣੀ ਲਾੜ ਦਾ ਪ੍ਰਭਾਅ ਪੈ ਤੂੰ ਜ਼ੂਰ ਜਾ ਤੇਰੇ ਤੇ ਕਣੀ ਜੋਤ ਦਾ ਪ੍ਰਭਾਅ ਪੈ ਧਰਮ ਦਾ ਪ੍ਰਭਾਅ ਤਾਂ ਜੋਤ ਹੁੰਦੀ ਹੈ ਛੋਟੀ ਜੋਤ ਹੁੰਦੀ ਹੈ ਸੂਰਜ ਤੋਂ ਨਾ ਜੰਤਰ ਹੈ ਨਾ ਤੰਤਰ ਹੈ ਨਾ ਮੰਤਰ ਕੋਰ ਲਾਉ ਹੈ ਨਾ ਜੰਤਰ ਹੈ ਨਾ ਮੁੱਤਰ ਹੈ ਨਾ ਤੰਤਰ ਕੋ ਰੋਮ ਤੰਤਰ ਦਾ ਕੋਈ ਵੀ ਚਰਲਾਵਡ ਨਹੀਂ ਹੈ ਤੇਰੇ ਚ ਕਿਸ ਨੂੰ ਕੋਈ ਜੀ ਦੀ ਚੁਟਕੀ ਗੱਲ ਨਹੀਂ ਨਾ ਛੜ ਹੈ ਨਾ ਛਦਰ ਹੈ ਨਾ ਛੜ ਹੈ ਛਰੂਪ ਨਾ ਛਦਰ ਕੋ ਨਾ ਤੇਰੇ ਚ ਕੋਈ ਕਬੀ ਹੈ ਛਦਰ ਹੈ ਨਾ ਛਦਰ ਦਾ ਕੋਈ ਸਰੂਪ ਹੈ ਤੂੰ ਅਪੰਗ ਹੈ ਅਲੰਗ ਹੈ ਪਪਾ ਕਹ ਹੈ ਨਾਮ ਕਹ ਹੈ ਨਾਮ ਕਹਨਾਂ ਨੇ ਆਪ ਦਾ ਹੀਰ ਕੋਈ ਅੰਗ ਨਹੀਂ ਤੇਰਾ ਅਗ ਪੈਰ ਸਰੀਰ ਨਹੀਂ ਹੈ ਅਗੰਜ ਸੀ ਬਬੂਤ ਹੈ ਹੈ ਜਿਹਦਾ ਜਿਹਨੂੰ ਅਸੀਂ ਕੱਟ ਨਹੀਂ ਸਕਦੇ ਤੋੜ ਨਹੀਂ ਸਕਦੇ ਨਾਸ ਬਰੀ ਕਰ ਸਕਦੇ ਨਾ ਕੱਟ ਸਕਦੇ ਆ ਨਾ ਤੋੜ ਸਕਦੇ ਆ ਨਾ ਉਹਦਾ ਨਾਸ ਕਰ ਸਕਦੇ ਐਸੀ ਬਬੂਤ ਨਾ ਕਾਮ ਹੈ ਨਾ ਕ੍ਰੋਧ ਹੈ ਨਾ ਲੋਭ ਉਹ ਕਾਰ ਹੈ ਨਾ ਕਾਮ ਹੈ ਨਾ ਕ੍ਰੋਧ ਹੈ ਨਾ ਲੋਭ ਉਹ ਕਾਰ ਕੋਈ ਕਾਰ ਨਹੀਂ ਐਸਾ ਕੋਈ ਕੰਮ ਨਹੀਂ ਹੈ ਜਿਹਦੇ ਕਰਦੇ ਆਂ ਅਸੀਂ ਸਾਰਾ ਨਾ ਆਦ ਹੈ ਨਾ ਗਾਦ ਹੈ ਨਾ ਵਿਆਦ ਕੋ ਵਿਚਾਰ ਹੈ ਨਾ ਆਦ ਹੈ ਨਾ ਗਾਦ ਹੈ ਨਾ ਵਿਆਦ ਕੋ ਵਿਚਾਰ ਹੈ ਨਾ ਵਿਆਦ ਕੋ ਵਿਚਾਰ ਹੈ ਆ ਇਹ ਜਿਹੜੇ ਔਗਣ ਨੇ ਨਾ ਤਾਂ ਪਹਿਲਾਂ ਪਹਿਲਾਂ ਹੀ ਔਗਣ ਸੀ ਤੇਰੇ 'ਚ ਕੋਈ ਨਾ ਵਧਿਆ ਹੀ ਹੈ ਕੋਈ ਫਿਰ ਵਿਆਹ ਨਾ ਔਗਣ ਔਗਣ ਪਹਿਲਾਂ ਹੁੰਦੇ ਨੇ ਤਾਂ ਹੀ ਵਧਦੇ ਨੇ ਐਸਾ ਕੁਛ ਨਹੀਂ ਹੈ ਤੇਰੇ 'ਚ ਕਦੇ ਔਗਣ ਤੇਰੇ ਵਿੱਚ ਔਗਣ ਨਹੀਂ ਵਧਣਾ ਕਿਥੋਂ ਦੇ ਨਾ ਵਿਆਹ ਦਾ ਕੋਈ ਵਿਚਾਰ ਹੈ ਨਾ ਵਧਣ ਦਾ ਵਿਚਾਰ ਹੈ ਕੋਈ ਉਹਨਾਂ ਦਾ ਜੇ ਬਿਮਾਰੀ ਹੋਣੀ ਬਿਮਾਰੀਓ ਵਧਦੀ ਹੁੰਦੀ ਹੈ ਨਾ ਰੰਗ raag roop hai na roop rekh raar hai naraag rang da roop hai sataraag rang da koi roop hai tu na roop na roop rekh raar hai na roop rekh na koi roop rekh de jhagda hai raat jhagde nu kivein na koi roop rekh da jhagda tera ve nahi ji eh ja ni eh ja je mai apka kehna photo aa di ji eh ji eh ja ve ਨਾ ਹਾਉ ਹੈ ਨਾ ਪਾਉ ਹੈ ਨਾ ਦਾਉ ਕੋ ਪ੍ਰਕਾਰ ਹੈ ਨਾ ਹਾਉ ਪਾਉ ਹੈ ਤੇਰੇ ਹਾ ਪਾਉ ਹੁੰਦਾ ਕਿਸੇ ਨੂੰ ਪ੍ਰਭਾਵ ਕਰਨਾ ਦੂਜੇ ਨੂੰ ਪ੍ਰਭਾਵ ਕਰਨਾ ਡਰਾਉਣਾ ਪਾਉ ਹਨ ਬਿਆਨ ਕਿਸੇ ਨੂੰ ਨਾ ਦਾਉ ਕੋ ਪ੍ਰਕਾਰ ਹੈ ਨਿਗਾਲੇ ਰੋਕ ਨਹੀਂ ਆਪਾਂ ਢਾਕੇ ਚੱਕਦੇ ਇੱਕ ਵਾਰ ਕਿਸੇ ਵੇਲੇ ਅਸੀਂ ਉਹਦੇ ਨਾਲ ਘੂਰ ਕੇ ਚੱਕਦੇ ਆ ਕਿਸੇ ਨਾਲ mohabbat ਨਾਲ ਚੱਕਦੇ ਆ ਹਾਉ ਪਾਉ ਰੇ ਸਾਡੇ ਐਸਾ ਕੁਝ ਨਹੀਂ ਕਰਦਾ ਤੂੰ ਹਾਉ ਪਾਉ ਨਾ ਦਾਅ ਕੋ ਪ੍ਰਕਾਰ ਹੈ ਨਾ ਕੋਈ ਦਾਅ ਖੇਡਦਾ ਨਾ ਦਾਅ ਦਾ ਕਰੇ ਸੇ ਖੇਡਦਾ ਦਾਅ ਦਾ ਦੇਵਤਾ ਖੇਡਦੇ ਨੇ ਨੂੰ ਹੋਉਂਦੇ ਦਫਾਉਣ ਨਾ ਵਾ ਘਟਣੇ ਜਾਣਦੇ ਨੇ ਉਹ ਤਾਂ ਆਪਣੇ ਬਸ ਫਿਰ ਵਿਦਾਂਚੇ ਆ ਜਾਂਦੇ ਨੇ ਵੀ ਆ ਜਾਓ ਵੀ ਤੁਸੀਂ ਬਥੇਰਾ ਤੁਹਾਨੂੰ ਦੋ ਦੂ ਕਰ ਲੈ ਉਣਾ ਹੀ ਦਵਾਂ ਨਾ ਨਾ ਗਜਾਤਪੀ ਨਰਾਦਪੀ ਕ੍ਰੰਤ ਸੇਵ ਹੈ ਸਦਾ ਆ ਦੇਖ ਗਜਾਤਪੀ ਇੱਥੇ ਆ ਕੇ ਬਚਾ ਗਿਆ ਸਾਰਿਆਂ ਨੂੰ ਸਾਰਿਆਂ ਨੂੰ ਬਚਾ ਗਿਆ ਗਜਾਤਪੀ ਨਰਾਦਪੀ ਕਰਨਤ ਸੇਵ ਹੈ ਸਦਾ ਗਜਾਤਪੀ ਆ ਗਿਆ ਉਹਨਾਂ ਦਾ ਗਣੇਸ਼ ਮੈਂ ਨਾ ਗਣੇਸ਼ੇ ਪ੍ਰਥਮ ਬਣਾਉਂਗਾ ਉਹ ਗਾਇਦਾ ਹੈ ਨਾ ਸਰੀਰ ਹਾਥੀ ਦਾ ਲੱਗਿਆ ਹੋਇਆ ਹਾ ਹਾਥੀ ਦਾ ਸਰੀਰ ਨਾ ਉਹਦਾ ਸਰ ਉਹ ਗਾਇਦਾ ਭੀ ਇਹ ਹੋਰਿਆ ਕਰਕੇ ਅਰਥ ਜਾਣ ਕੇ ਇਹ ਜਿਹੜਾ ਚਾਰੇ ਕੋਥੋਂ ਰਗੜਦੇ ਸਾਰੇ ਨਰਾਦ ਭੀ ਨਰਾਦ ਭੀ ਨਰਾਦ ਭੀ ਸਮਝ ਲੋ ਇੰਦਰ ਲੋਗ ਹੈ ਨਾ ਇੰਦਰ ਰਾਜਾ ਨਾ ਗ੍ਰੰਥ ਸੇਵ ਹੈ ਸਦਾ ਗ੍ਰੰਥ ਸੇਵ ਹੈ ਸਦਾ ਸਾਰੇ ਤੇਰੀ ਹਮੇਸ਼ਾ ਸੇਵਾ ਕਰਦੇ ਨੇ ਸਤ ਸੁਤੀ ਤਪਸਪਤੀ ਬਨਸਪਤੀ ਜਬ ਸਦਾ ਆਰੇ ਸੈ ਸੋਤੀ ਸੈ ਸੁਤੀ ਵਿਸ਼ਨੂ ਵਿਸ਼ਨੂ ਦਾ ਸਭ ਸੁਭਾਅ ਹੈ ਸ਼ੀਤਲ ਸੁਭਾਅ ਵਾਲਾ ਤਪਸਪਤੀ ਤਪਸਵਤੀ ਸ਼ਿਵ ਬਨਸਪਤੀ ਜਬ ਸਦਾ ਬਨਸਪਤੀ ਆ ਜਾਣੇ ਹੋਰ ਨਾਲ ਸਾਰੀ ਜਨਤਾ ਜਬ ਸਦਾ ਤੈਨੂੰ ਸਾਰੇ ਜਪਦੇ ਨੇ ਇਕ ਕੋਲਾ ਜਿਹਾ ਰਾਰੇ ਲੈ ਲੈ ਅਗਸਤ ਆਦ ਜੇ ਵੱਡੇ ਆਦ ਜੇ ਵੱਡੇ ਅਗਸਤ ਵਰਗੇ ਜਿਹਨੇ ਵੱਡੇ ਵੱਡੇ ਹੋਏ ਨੇ ਨਾ ਅਗਸਤ muni ਪੀ ਲਿਆ ਸੀ ਅਗਸਤ muni ਸਮੁੰਦਰ ਸਾਰਾ ਪੀ ਲਿਆ ਸੀ ਅਗਸਤ muni ਜਿਹੜੇ ਵੱਡੇ ਵੱਡੇ ਤਪਸਵੀ ਹੋਏ ਨੇ ਅਗਸਤ muni ਵਰਗੇ ਵੱਡੇ ਤਪਸਪਤੀ ਵਿਸੇਖੀ ਐ ਵਿਸ਼ੇਸ਼ ਕਰਕੇ ਤਪੱਸਿਆ ਕਰਨ ਵਾਲੇ ਬਿਆੰਤ ਬਿਆੰਤ ਬਿਆੰਤ ਕੋ ਕ੍ਰੰਤ ਪਾਠ ਪੇਖਿਆ ਉਹ ਵੀ ਤੈਨੂੰ ਬਿਆੰਤ ਬਿਆੰਤ ਕਰਦੇ ਹੀ ਪਾਠ ਦੇਖੇ ਗਏ ਨੇ ਇਹ ਕਹਿੰਦਾ ਰਹੇ ਨੇ ਬਿਆੰਤਾ ਬਿਆੰਤਾ ਇਹ ਪਾਠ ਉਹਨਾਂ ਦਾ ਕਰਦੇ ਦੇਖਿਆ ਅਸੀਂ ਉਹਨਾਂ ਨੂੰ ਬਿਆੰਤ ਬਿਆੰਤ ਬਿਆੰਤ ਕੋ ਕ੍ਰੰਤ ਪਾਠ ਪੇਖਿਆ ਬਿਆੰਤ ਬਿਆੰਤ ਨੂੰ ਬਿਆੰਤ ਕਹਿੰਦੇ ਪਾਠ ਕਰਦੇ ਰਹੇ ਨੇ ਉਹ ਅਗਾਧ ਆਦ ਦੀ ਦੇਵਕੀ ਅਨਾਦ ਬਾਤਮਾਨੀ ਆ ਅਗਾਧ ਆਦ ਦੇਵਕੀ ਅਨਾਦ ਬਾਤਮਾਨੀ ਆ ਅਨਾਦ ਬਾਤਮਾਨੀ ਆ ਜਿਹੜਾ ਦੇਵ ਹੈ ਨਾ ਬੁੱਧੀ ਤੋਂ ਭਰੇ ਵਾਲਾ ਉਹਦੀ ਗੱਲ ਕੀ ਹੈ ਉਹਦੇ ਅਨਾਦ ਹੈ ਬਸ ਅਨਾਦ ਬਾਤਮਾਨੀ ਆ ਅਨਾਦ ਬਾਤਮਾਨੀ ਆ ਹੈਗਾ ਜੇ ਆਦ ਕਹਿੰਦੇ ਆਦ ਤਾਂ ਸ੍ਰਿਸ਼ਟੀ ਦਾ ਉਹਦਾ ਨਹੀਂ ਆਦ ਹੈ ਹੈ ਆਦਿ ਸ੍ਰਿਸ਼ਟੀ ਦਾ ਆਦ ਹੈ ਉਹਦਾ ਆਦ ਨਹੀਂ ਹੈ ਉਹ ਅਨਦੀ ਹੈ ਉਹਨਾਂ ਆਦਿ ਕਹਿ ਸਕਦੇ ਹਾਂ ਅਸੀਂ ਨਾ ਜਾਤ ਪਾਤ ਮੰਤਰ ਮਿੱਤਰ ਸੰ ਛਤਰ ਸਨੇ ਜਾਨੀਆਂ ਜਾਤ ਪਾਤ ਹੈ ਨਾ ਕੋਈ ਮਿੱਤਰ ਖਾਸ ਨੇ ਉਹਦਾ ਜਿਵੇਂ ਉਹਦਾ ਸਿਗਾਣਾ ਆਪਣੇ ਕ੍ਰਿਸ਼ਨ ਦਾ ਉਹਦੇ ਨਾਲ ਮਿੱਤਰ ਦੱਸਣੇ ਉਮਰੀਆ ਦਾ ਵਿੱਤਰਾਂ ਦਾ ਸਨੇਹ ਹੁੰਦਾ ਹੀ ਆ ਸਦਾ ਮੈਂ ਦਾ ਠੀਕਾ ਹੀ ਨਾ ਮਿੱਤਰ ਹੈ ਮਿੱਤਰ ਛਤਰ ਸਨੇਹ ਹੈ ਜਾਨੀ ਅਡਾ ਛਤਰੂ ਨੂੰ ਵਿਤਰ ਹੈ ਕੋਈ ਨਾ ਸਨੇਹ ਉਹਦੇ ਚ ਉਹਦੇ ਚ ਨਹੀਂ ਹੁੰਦਾ ਜੇ ਕਰੇ ਜਾਂਦਾ ਵਿੱਚ ਸਨੇਹ ਤਾਂ ਕਰੇ ਜਾਂਦਾ ਫਿਰ ਆਮ ਆਦਮੀ ਹੈ ਸਦਾ ਇਹ ਗੋਲ ਕਰਿਸ਼ਨ ਦੇ ਵਿੱਚ ਨਹੀਂ ਹੈ ਇਹ ਪਰ ਪਕਵਾ ਇਸ ਕਰਕੇ ਉਹਨਾਂ ਨੇ 24 ਉਤਾਰਾਂ ਜੀ ਕਰਿਸ਼ਨ ਨੂੰ ਹੀ ਲਿਆ ਇਸ ਕਰਕੇ ਆਮਚੰਦਰ ਨੂੰ 24 ਉਤਾਰਾਂ ਜੀ ਨਹੀਂ ਲਿਆ ਹੋਇਆ ਆ ਮੀਟਰ ਜਿਹੜਾ ਨਾ ਜਿਹੜੇ ਮੀਟਰ ਤੇ ਖਰੇ ਉਤਰੇ ਨੇ ਉਹੀ 10 ਅਵਤਾਰ ਨੇ ਮੀਟਰ ਜਿਉ ਆ ਦੇ ਤਾ ਹੁਣ ਕਿੱਥੇ ਕੀ ਲਿਖਿਆ ਹੋਇਆ ਉਹਦੇ ਨਾਲ ਕਿਵੇਂ ਆਪਣੇ ਦੱਸ ਕਿਵੇਂ ਆਪਣੇ ਨੇ 10 ਕਿਵੇਂ ਪਾਸ ਕੀਤੇ ਬਾਕੀ 14 ਕਿਉਂ ਫੇਲ ਕੀਤੇ ਆ ਮੀਟਰ ਐ ਮੀਟਰ ਤਾਂ ਅੱਗੇ ਫੇਲ ਹੋ ਜਾਣੇ ਨੇ ਚਾਦੋ ਫੇਲ ਹੋ ਜਾਣੇ ਬਿਸ਼ਰੂ ਜਦ ਫੇਲ ਹੈ ਬਿਸ਼ਰੂ ਅਵਤਾਰ ਫੇਲ ਨੇ ਮਹਾਦੇਵ ਫੇਲੇ ਮਹਾਦੇਵ ਉਹ ਜਿਹੜੇ ਸ਼ਿਵ ਦੇ ਅਵਤਾਰ ਨੂੰ ਪਰਮੇਸ਼ਰ ਦਾ ਨੋਸ਼ਾ ਹੈ ਸ਼ਿਵਸ਼ਕਤੀ ਆਪ ਆਪੇ ਕੇ ਕਰਤਾ ਆਪੇ ਕੋ ਕਰਤਾ ਹੈ ਉਹ ਸ਼ਿਵ ਨੂੰ ਮਹਾਦੇਵ ਉਹਨੂੰ ਸ਼ਿਵ ਬੁਲਦੇ ਓਤੇ ਮਹਾਦੇਵ ਦਾ ਕੋਈ ਰੌਲਾ ਨਹੀਂ ਸਦੀਵ ਸਰਬ ਲੋਕ ਕੇ ਕਿਰਪਾਲ ਖਿਆਲ ਮੈਂ ਰਹੇ ਸਦੀਵ ਸਰਬ ਲੋਕ ਕੇ ਕਿਰਪਾਲ ਖਿਆਲ ਮੈਂ ਰਹੇ ਉਹ ਕਿਰਪਾਲ ਐਸਾ ਹੈ ਸਦਾ ਇਹ ਸਾਰੇ ਲੋਕਾਂ ਦੇ ਖਿਆਲ ਵਿੱਚ ਰਹਿੰਦਾ ਐਸਾ ਕਿਰਪਾਲੂ ਹੈ ਸਾਰੇ ਲੋਕਾਂ ਦਾ ਧਿਆਨ ਉਧਰ ਲੈਂਦਾ ਉਹਨਾਂ ਨੂੰ ਜੁੜਿਆ ਰਹਿੰਦੇ ਤਰੰਤ ਤਰੰਤ ਦਰੋਹ ਦੇਖੇ ਅਨੰਤ ਭਾਤ ਸੋਧ ਹੈ ਤਰੰਤ ਦਰੋਹ ਦੇਖੇ ਦਰੋਹ ਦੇਖੇ ਅਨੰਤ ਸੋਧ ਹੈ ਜਿਹੜੇ ਇਹ ਹਿਰਦੇ ਵਿੱਚ अनेका ਪ੍ਰਕਾਰ ਦੇ ਸਾਡੇ ਅਵਗੋਲ ਦੇ ਤੋਖ ਨੇ ਦਰੋਹ ਦਰੋਹ ਦੇਖੇ ਦਰੋਹ ਦੇ ਅੰਦਰ ਹਿਰਦੇ ਨੂੰ ਦੇਖੀ ਗੁਪਤ ਬਾਹਲੀ ਦੇ ਹੀ ਦਰੋਹ ਅੰਤਰੀ ਦੇ ਹੀ ਦੇ ਜਿਹੜੇ ਰੋਗ ਨੇ ਦਰੋਹ ਨੇ ਗੁਕਸ ਨੇ ਅਨੇਕ ਭਾਂਤ ਨੂੰ ਸਾੜਦਾ ਰਹਿੰਦਾ ਹਨਨ ਅਨੰਤ ਭਾਂਤ ਸੋਦਾ ਹੈ ਜੈਨਾ ਸਾੜਦਾ ਰਹਿੰਦਾ ਦੁੱਖ ਦੇ ਕੇ ਹਿਰਦੇ ਚੋਂ ਸਾੜੇ ਉਹ ਸਾੜਦਾ ਦੁਖਦਾਰੂ ਹੈ ਜਿਵੇਂ ਲੋਹਾ ਪੱਠੀ ਚ ਪਾਈਦਾ ਨਾ ਉਹਦੇ ਉਹਨੂੰ ਸ਼ੁੱਧ ਕਰੀਦਾ ਐ ਸਾਨੂੰ ਆ ਪੱਠੀ ਜਿਹੜੀ ਬਣਾਈ ਆ ਨਾ ਇਹ ਦੁਗ दारू ਦੇ ਕਈ ਅਨੇਕ ਭਾਂਤਨਾ ਸਾਡੇ ਉਹ ਜਿਹੜੇ ਨੁਕਸਨ ਔਗੜ ਦੇ ਸਾੜਦਾ ਰਹਿੰਦਾ ਅਨੰਤ ਪਾਂਤ ਸੋ ਦਹ ਹੈ ਦਹ ਤਹਿਨ ਕਰਦਾ ਰਹਿੰਦਾ ਤਉ ਪ੍ਰਸਾਦ ਰੁਵਾਲ ਛੰਦ ਰੂਪ ਰੰਗ ਨਾ ਰੇਖ ਰੰਗ ਨਾ ਜਨਮ ਮਰਨ ਬਿਹੀਨ ਰੂਪ ਰੰਗ ਰੂਪ ਰਾਗ ਨਾ ਰੇਖ ਰੰਗ ਨਾ ਜਨਮ ਮਰਨ ਬਿਹੀਨ ਰੂਪ ਰਾਗ ਨਾ ਰੇਖ ਰੰਗ ਨਾ ਜਾਨਵਰ ਮਨ ਬਿਹੇਰ ਜਾਨਵਰ ਮਨ ਬਿਹੇਰ ਉੱਪਰ ਕੋਈ ਰੇਖ ਨਹੀਂ ਕੋਈ ਰਾਗ ਨਹੀਂ ਕੋਈ ਰੰਗ ਨਹੀਂ ਕੋਈ ਰਗ ਨਹੀਂ ਜਾਨਵਰ ਮਨ ਨਹੀਂ ਇਸ ਕਰਕੇ ਜਦ ਇਹ ਚੀਜ਼ਾਂ ਨਹੀਂ ਹੁੰਦੀ ਤਾਂ ਜਰਮਨਲ ਤੇ ਬਿਹੇਰ ਜਿਹਦੇ ਵਿੱਚ ਇਹ ਚਾਰੇ ਉਗੜਨਾ ਹੋਣਾ ਉਹ ਜਾਨਵਰ ਮਨ ਬਿਹੇਰ ਹੁੰਦਾ ਜਿਹਦੇ ਚਾਰਾਂ ਚੋਂ ਇੱਕ ਵੀ ਹੋਵੇ ਉਹ ਨਾਲ ਦੇ ਹੋਣਗੇ ਹੋਣਗੇ ਫਿਰ ਇਹ ਚਾਰਾਂ ਜੋ ਇੱਕ ਕਹਤ ਨੇ ਚਾਰੇ ਨੇ ਫਿਰ ਜਨਮ ਬਣੂ ਚਾ ਜਨਮ ਬਣੂ ਬਹੀਰ ਜਨਮ ਬਣ ਬਹੀਰ ਕੌਣ ਹੁੰਦਾ ਹੈ ਨਾਨਕ ਜਨਮ ਬਣੂ ਬਹੀਰ ਨਹੀਂ ਹੈ ਇਸ ਕਰਕੇ ਨਾਨਕ ਗੁਰਕਾਰ ਨਹੀਂ ਹੈ ਗੁਰਕਾਰ ਹੋ ਗਿਆ ਸੀ ਨਾਨਕ ਹੁਣ ਨਾਨਕ ਗੁਰਕਾਰ ਹੈ ਨਾਨਕ ਜਿਨਾ ਜਨ ਸਰੀਰ ਤੇ ਉਹਨਾਂ ਚ ਗੁਰਕਾਰ ਨਹੀਂ ਦੀ ਐਸ ਹੋ ਗੁਰਕਾਰ ਉੱਥੇ ਸਾਰੇ ਲੋਕਾਰੇ ਸੱਚ ਖੰਡਵਸ ਨਰੰਕਾਰ ਨਰੰਕਾਰ ਹੋ ਕੇ ਸੱਚ ਖੰਡਵਸੂਗਾ ਦੁਆ ਲਾਸਰੀ ਤੱਕਦਾ ਪਰ ਉੱਥੇ ਕਨਾਨਕ ਉੱਥੇ ਦਾ ਕਰੋੜੇ ਨਾਨਕ ਬੈਠੇ ਉਹ ਪੰਜ ਤਾਂ ਸਾਡੇ ਪਿੱਛੇ ਚਲੇ ਗਏ ਨਾ ਉੱਥੇ ਸਿੱਧੇ ਨਾਨਕ ਨਾਮ ਰਖਾ ਕੇ ਪੰਜ ਪਿੱਛੇ ਗਏ ਰਹੀ ਨਾ ਛੇ ਛੇ ਉਰਵਾ ਦੀ ਬਾਣੀ ਦੀ ਹੈ ਪਹਿਲਾਂ ਨਾਨਕਾਂ ਦੇ ਪੰਜ ਪਿਛੋਂ ਜਿਹੜੇ ਗਏ ਨੇ ਉਹ ਵੀ ਤਾਂ ਨਾਨਕ ਨੇ ਓਏ ਨਾਨਕ ਨੂੰ ਕਿਤੇ ਹਾਈਲਾਈਟ ਹੋ ਰਿਹਾ ਕੁਛ ਨਾ ਕਰਦੇ ਨਾ ਤਾਂ ਉਹਨਾਂ ਨੇ ਨੌਨ ਨੌ ਰੱਖਿਆ ਸੀ ਪਰ ਇਰਾਨੇ ਇੱਕ ਨਹੀਂ ਇਹਨਾਂ ਦੇ ਸਭ ਨੂੰ ਚਾਹੀਦੀ ਗੱਲ ਕੀ ਹੈ ਉਹ ਸਾਰੇ ਨਾਨਕਾਂ ਨੇ ਜਿਹੜੇ ਉੱਥੇ ਬੈਠੇ ਨੇ ਸਾਰੇ ਰਵਦਾਸ ਨੇ ਜਿਹੜੇ ਉੱਥੇ ਬੈਠੇ ਨੇ ਸਾਰੇ RAMਦਾਸ ਨੇ ਜਿਹੜੇ ਉੱਥੇ ਬੈਠੇ ਨੇ ਇਹ ਤਾਂ ਗੁਰਬਾਚ ਕਲਪਸ ਨੇ ਸਾਰੇ ਦੇ ਨਾਨਕ ਵਾਲੇ ਗੁਰਨੇ ਤਹ ਪਾਰਲੀਮੈਂਟ ਹੈ ਜਿਹੜਾ ਪਾਸ ਹੋ ਗਿਆ ਚਲੇ ਜਾਂਦਾ ਤੇ ਬੈਹ ਜਾਂਦਾ ਜਾ ਕੇ ਸਾਰਿਆਂ ਦੀ ਗੱਲ ਇੱਕ ਹੈ ਆਦੀਨਾਥ ਅਗਾਧਪੁਰਖ ਸੋ ਧਰਮ ਕਰਮ ਪ੍ਰਵੀਨ ਆ ਐਸਾ ਕੌਣ ਹੈ ਐਸਾ ਆਦੀਨਾਥ ਹੈ ਹੋਰ ਕੋਈ ਵੀ ਹੈ ਐਸਾ ਆਦੀਨਾਥ ਅਗਾਧਪੁਰਖ ਅਗਾਧਪੁਰਖ ਹੈ ਮੁਲਕੀ ਬੁੱਧੀ ਤੋਂ ਪਰੇ ਰਹਿਆ ਹੋਵੇ ਛੇ ਸੋ ਧਰਮ ਕਰਮ ਪ੍ਰਵੀਨ ਉਹ ਧਰਮ ਕਰਮ ਵਿੱਚ ਪ੍ਰਵੀਨ ਹੈ ਧਰਮ ਦੇ ਕਰਮ ਉਹ ਜਾਣਦਾ ਕੀ ਕਰਨਾ ਕੀ ਨਹੀਂ ਕਰਨਾ ਉਹ ਤਾਂ ਪੁੱਛ ਕੇ ਧਰਮ ਦੇ ਕਰਮ ਕਰੀ ਦੇ ਨੇ ਪਹਿਲਾਂ ਆਪਣੀ ਮਰਜ਼ੀ ਨਾਲ ਹੀ ਸ਼ੁਰੂ ਕਰੀ ਦੇ ਸਰਦਾਰ ਨੇ ਆਪਣੀ ਮਰਜ਼ੀ ਨਾਲ ਸ਼ੁਰੂ ਕਰ ਲਿਆ ਧਰਮ ਕਰਮ ਉਹਨੇ ਕਰ ਦੇਖੋ ਧਰਮ ਕਰਮ ਪ੍ਰਵੀਨ ਹੈ ਇੱਥੇ ਸਾਡੇ ਕਰਮ ਧਰਮ ਨੇ ਪਕੜ ਕਰਮ ਧਰਮ ਨੂੰ ਪਕੜ ਕੇ ਧਰਮ ਕਰਮ ਨੂੰ ਪਹਾਂੜ ਕੇ ਆਇਆ ਧਰਮ ਕਰਮ আর ਕਰਮ ਧਰਮ ਵਿੱਚ ਫਰਕ ਇੱਕ ਤਾਸੀ ਕਰ ਪਹਿਲਾਂ ਸ਼ੁਰੂ ਕਰ ਲੈ ਧਰਮ ਦਾ ਗਿਆਨ ਗਰੀ ਧਰਮ ਦੀ ਪ੍ਰਾਪਤੀ ਵਾਸਤੇ ਜਿਹੜਾ ਕਰਮ ਕੀਤੇ ਨੇ ਉਹ ਵਖੰਡ ਇੱਕ ਧਰਮ ਪਹਿਲਾਂ ਰੁਪਇਆ ਲਿਆ ਕਰਮ ਪਿੱਛੋ ਕਰਦੇ ਧਰਮ ਸਮਝ ਲਿਆ ਪਹਿਲਾਂ ਕਰਮ ਪਿੱਛੋ ਕੀਤਾ ਕਰਮ ਕੀ ਕੀਤਾ ਧਰਮ ਜਿਉ ਤੂੰ ਚਲਾਇ ਤੇ ਮੈਂ ਚੱਲਾਂ ਆ ਕਰਨਾ ਵਿੱਚੋਂ ਇਹ ਧਰਮ ਕਰਮ ਜਿਉ ਤੂੰ ਚਲਾਇ ਤੇ ਮੈਂ ਚੱਲਾਂ ਇਹ ਧਰਮ ਕਰਮ ਉਹ ਜਿਹੜੇ ਅਸੀਂ ਕਿਰਿਆ ਕਰਮ ਕਰ ਲਈ ਸ਼ੁਰੂ ਉਹ ਕਰਮ ਧਰਮ ਸੀ ਕਰਮ ਤੋਂ ਧਰਮ ਤੱਕ ਜਾਣ ਉਹ ਸਾਰੇ ਪਖੰਡ ਸੀ ਜਿਹੜਾ ਇਸ ਗੱਲ ਨੂੰ ਨਹੀਂ ਸਮਝਦਾ ਸਾਡੇ ਸਾਰੇ ਮੱਤਾਂ ਨੇ ਜਿਹਦੇ ਸੰਤ ਨੇ ਕਰਮ ਧਰਮ ਨੂੰ ਯੋਗ ਕੋਲ ਧਰਮ ਕਰਮ ਨਹੀਂ ਹੈ ਕਿਤੇ ਕੋਲ ਵੀ ਗੱਲੇ ਨਹੀਂ ਸਮਝੇ ਬਾਲਾ ਫੇਰਨ ਵਾਲਾ ਬਾਲਾ ਫੇਰਨ ਲਾਗੇ ਪ੍ਰਾਪਤੀ ਉਹ ਹੈ ਨਹੀਂ ਕੁਝ ਵੀ ਕਮੇਰ ਨਹੀਂ ਛੱਡੀ ਦੀ ਬਾਲ ਇਹ ਕੀ ਸੀ ਕਰਮ ਧਰਮ ਸੀ ਸਮਾਧੀ ਕਰਮ ਧਰਮ ਹੈ ਕੁਝ ਨਹੀਂ ਪ੍ਰਾਪਤੀ ਜਲਦ ਆ ਰਹੇ ਚਲੀ ਸੇ ਕਰਮ ਧਰਮ ਧਰਮ ਦੀ ਤਾਂ ਪ੍ਰਾਪਤੀ ਉਹ ਨਹੀਂ ਹੁੰਦੀ ਇਹ ਤਾਂ ਸੱਚ ਦੀ ਤਾਂ ਧਰਮ ਕੀ ਹੈ ਸੱਚ ਸੱਚ ਤੱਕ ਨਹੀਂ ਪਹੁੰਚਿਆ ਜਾ ਸਕਦਾ ਇਦਾਂ ਸੱਚੇ ਤੱਕ ਪਹੁੰਚਣ ਵਾਸਤੇ ਸੱਚੀ ਬਾਣੀ ਸੱਚਾ ਉਪਦੇਸ਼ ਚਾਹੀਦਾ ਹੈ ਸਾਚੇ ਸ਼ਬਦ ਬਿਨੂ ਮੁਕਤ ਨਾ ਕੋਈ ਕਿਸੇ ਨੂੰ ਮੁਕਤੀ ਨਹੀਂ ਮਿਲਦੀ ਸੱਚਾ ਉਪਦੇਸ਼ ਸਭ ਨੂੰ ਸੱਚਾ ਉਪਦੇਸ਼ ਗੁਰਬਾਣੀ ਹੈ ਔਰ ਕੁਝ ਨਹੀਂ ਹੈ ਗੁਰਬਾਣੀ ਨੂੰ ਸਮਝਣਾ ਜੋ ਗੁਰਬਾਣੀ ਕਹਿੰਦੀ ਉਹ ਕਰਨਾ ਇਹ ਹੈ ਧਰਮ ਕਰਮ ਧਰਮ ਨੇ ਜੋ ਕਰਮ ਦੱਸਿਆ ਉਹ ਕਰਨਾ ਉਹ ਹੈ ਕਰਮ ਧਰਮ ਕਰਮ ਕੁਝ ਕਰਕੇ ਸੋਚ ਕੇ ਜੇ ਤਪ ਕੇ ਉਹ ਕਰਨਾ ਵੀ ਧਰਮ ਦੀ ਪ੍ਰਾਪਤੀ ਹੋ ਜੂਗੀ ਉਹ ਗੱਲ ਉਹ ਤਾਂ ਜਿਹੇ ਕਰਮ ਨੇ ਉਹ ਆਦਮੀ ਦੇ ਲੈਵਲ ਦੇ ਸੋਚੇ ਹੋਏ ਕਰਮ ਨੇ ਉਹ ਇਸ ਕਰਕੇ ਮਨਕੀਆਂ ਵੱਤਾਂ ਨੇ ਜਿਹੜੇ ਕਰਮ ਸੋਚੇ ਨਾ ਮਰਿਆ ਦਾ ਜਿਨ ਜੈ ਜੀ ਸੋਚ ਲੈ ਕਰਮ ਉਹ ਜੀਵ ਦੀ ਬਰਿਆਦਾ ਬਣ ਗਈ ਜਿੰਨਾ ਜਰ ਇਹ ਦੋਹਾਂ ਗੱਲਾਂ ਦਾ ਨਹੀਂ ਪਤਾ ਲੱਗਦਾ ਗੁਰਬਾਣੀ ਦਾ ਧਰਮ ਕਰਮ ਨੂੰ ਬੋਲਦੀ ਆ ਕਰਮ ਧਰਮ ਨੂੰ ਬੋਲਦੀ ਹੋਈ ਦੀ ਕਰਮ ਧਰਮ ਪਖੰਡ ਜਾਂ ਦੀਸਾ ਤੈਨੂੰ ਜੱਪ ਜਾਗਾਤੀ ਲੂਟਾ ਇਹ ਵੀ ਪੜੀ ਜਾਂਦਾ ਨਾ ਕਰਮ ਧਰਮੇ ਜਾਂਦੇ ਜਾਂਦੇ ਨੇ ਤਸਬਜੀ ਨਹੀਂ ਗੱਲ ਗੱਲ ਕੀ ਹੈ ਹਾਂਜੀ ਜੰਤਰ ਮੰਤਰ ਜਾਖੋ ਆਦੀਪੁਰਖ ਅਪਾਰ ਅ ਜੰਤਰ ਮੰਤਰ ਤੰਤਰ ਤਿੰਨੇ ਚੱਲਦੇ ਨੇ ਸਿੱਖ ਕੁਝ ਹੁਣ થઈ ਉਲਵੀ ਚਲਦਾ ਰਹੇ ਸੰਤਾ ਚ ਜੰਤਰ ਮੰਤਰ ਤੰਤਰ ਨਾ ਜਾ ਕੋ ਆਦਪੁਰਖਾ ਪਾਰ ਆਦਪੁਰਖਾ ਪਾਰ ਉਹ ਆਦਪੁਰਖਾ ਪਾਰ ਹੈ ਜਿਹੜਾ ਜੰਤਰ ਮੰਤਰ ਤੰਤਰ ਤੇ ਪਰੇ ਹੈ ਉਹਦੇ ਤੇ ਚਲਦਾ ਹਸ ਤਕੀਡ ਵਿਖੇ ਬਸਾ ਸਭ ਠੌਰ ਮੈਂ ਮੇਰਾ ਧਾਰ ਬਸਾ ਛਾਤੀ ਲਾ ਕੇ ਚੀਟੀ ਤੇ ਸਾਰਿਆਂ ਦੇ ਵਿੱਚ ਬਸਦਾ ਉਹ ਸਭ ਠੌਰ ਮੈਂ ਮੇਰਾ ਹਰ ਜਗ੍ਹਾ ਬਸਦਾ ਡਰਾ ਲਗਾਤਾਰ ਬਸਦਾ ਹੈ ਕੋਈ ਅਧਾਰ ਨਹੀਂ ਉਹਦਾ ਦੇਰਾ ਦਾ ਆ ਉਹਨਵਾਦਾਰ ਦੀ ਲੋੜ ਈ ਹੈ ਕਿਸੇ ਅਧਾਰ ਦੀ ਲੋੜ ਈ ਹੈ ਉਹ ਨੂੰ ਉਹ ਆਪਣੀ ਸ਼ਕਤੀ ਨਾਲ ਬਸਦਾ ਹੈ ਕੀ ਆ ਉਹ ਸ਼ਬਦ ਰੂਪ ਵਿੱਚ ਬਸਦਾ ਹੁਕਮ ਰੂਪ ਵਿੱਚ ਬਸਦਾ ਸਾਡੇ ਦੇ ਅੰਦਰ ਪਿਆ ਪੱਕਾ ਅੰਤਰਾਤਮਾ ਦੀ ਆਵਾਜ਼ ਹੱਥ ਕੀਟ ਕੇ ਬਿਖੇ ਬਸੇ ਸਭ ਮੈਂ ਨਿਰਾਧ ਮੈਂ ਬੈਸੇ ਸਭੇ ਬਿਖੇ ਕੇ ਬਸ ਰਿਹਾ ਸਭ ਦੇ ਅੰਦਰ